ਆਰ ਪੀ ਰੇਡੀਓ 1550 ਏਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ 11:11 ਹੋਏ ਨੇ 3 ਮਾਰਚ ਦਾ ਦਿਨ ਹੈ ਵਰਾ 2017 ਦਾ ਸ਼ੁੱਕਰਵਾਰ ਹੈ 20 ਫਗਣ ਨਾਲ ਸਹਿਮਤ 548 ਨਿੱਗਾ ਹਾਰਦਿਕ ਸਵਾਗਤ ਹੈ ਅਹਲਨ ਵਸਹਲਨ ਹਰਜੀਤ ਸਿੰਘਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸ਼ੌਕ ਦੇ ਮਸਲਿਆਂ ਤੇ ਅੱਜ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਤੇ ਨਸ਼ਿਆਂ ਦੀ ਲੜਾਈ ਦੇ ਵਿੱਚ ਸਾਡੇ ਬੱਚੇ ਜਿਹੜੇ ਹੱਥੋਂ ਕਿਰ ਰਹੇ ਨੇ ਉਹਨਾਂ ਲਈ ਫੋਰਮ ਹੋ ਰਿਹਾ ਹੈ ਇੱਕ ਕਾਲ ਨੂੰ 9:30 ਵਜੇ ਲਾਈਬ੍ਰੇਰੀ ਦੇ ਵਿੱਚ ਗੁਰਦੁਆਰਾ ਸਾਹਿਬ ਉਸ ਦੀ ਜਾਣਕਾਰੀ 12:10 ਮਿੰਟ ਤੇ ਉਹ ਦੇਣਗੇ ਭਾਈਚਾਰੇ ਨੂੰ ਖੁੱਲਾ ਸੱਦਾ ਇਹਦੇ ਵਿੱਚ ਸੀਨੀਅਰ ਪੁਲਿਸ ਅਫੀਸਰ ਤੇ ਭਾਈਚਾਰੇ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀਰ ਨੇ ਭੈਣਾਂ ਨੇ ਜਾਂ ਬੱਚੇ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹ ਆਪਣੇ ਤਜਰਬੇ ਸਾਂਝੇ ਕਰਨਗੇ ਕਿ ਸਕੂਲਾਂ ਦੇ ਵਿੱਚ ਬਾਹਰ ਜ਼ਿੰਦਗੀ 'ਚ ਕਿਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤੇ ਕਿੱਥੋਂ ਕਿਹੜੀ ਗੱਲ ਉਹਨਾਂ ਨੂੰ ਖੁਣਦੀ ਹੈ ਇਓ ਸੋਬਾਹ ਦਾ ਖੁੱਲੀ ਵਿਚਾਰ ਚਰਚਾ ਹੋਵੇਗੀ ਇੱਕ ਅੱਜ ਰਵਾ ਰਖੜਾ ਮਾੜਾ ਜਿਹਾ ਕੰਮ 1 ਤੋਂ 2 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਤਜਰਬੇ ਕਰ ਰਹੇ ਨੇ ਉਹ ਕਾਇਮ ਹੋ ਜੋ ਲਿਖਤਮ ਲਿਖ ਕੇ ਜਦ ਪਾਉਂਦੇ ਹੁੰਦੇ ਚਿੱਠੀ ਜਦ ਫੌਜੀ ਦੀ ਚਿੱਠੀ ਆਉਂਦੀ ਕਿਵੇਂ ਕੋਈ ਪੜਦਾ ਬਾਹਰੋਂ ਗਰੀਬ ਦੇ ਵਿੱਚ ਸ਼ਿਪ ਤੇ ਗਿਆ ਪੁੱਤ ਜਦ ਬਾਪੂ ਨੂੰ ਚਿੱਠੀ ਘੱਲਦਾ ਤੇ ਬਾਪੂ ਤੋਂ ਚਿੱਠੀ ਉੱਠਦੀ ਨਾ ਉਹ ਕਹਿੰਦੇ ਫੇਰ ਕੋਈ ਪੜਾ ਲੱਭਿਆ ਜਾਂਦਾ ਕੋਲੇ ਬੇਬੇ ਬੈਠੀ ਹੁੰਦੀ ਕੋਲੇ ਬਾਪੂ ਬੈਠਾ ਹੁੰਦਾ ਕੋਲੇ ਸਰਦਾਰ ਨਹੀਂ ਬੈਠੀ ਹੁੰਦੀ ਤੇ ਫਿਰ ਕੁਝ ਗੱਲਾਂ ਉਹ ਸਾਂਝੀਆਂ ਕਿਵੇਂ ਲਿਖਦਾ ਨਾ ਉਹ ਲਿਖਤੀ ਆਪਣੀ ਘਰ ਵਾਲੀ ਦਾ ਤੇ ਉਹ ਉਹੀ ਚਿੱਠੀ ਦੇ ਵਿੱਚ ਪਿਆਰ ਦੀ ਇੱਕ ਲਾਈਨ ਹੁੰਦੀ ਉਹ ਚ ਬਾਪੂ ਦੀ ਗੱਲ ਹੁੰਦੀ ਉਹ ਚ ਬੇਬੇ ਦੀ ਭਾਣ ਜਿਹਾ ਭਤੀਜਿਆਂ ਦੀ ਸਾਰਾ ਕੁਝ ਲਿਆ ਹੁੰਦਾ ਜੇ ਚਿੱਠੀ ਮੁੱਕ ਜਾਂਦੀ ਫਿਰ ਬਾਹਰਲੀ ਜਿਹੜੀਆਂ ਕਾਤਰਾ ਹੁੰਦੀਆਂ ਉਹਦੇ ਤੇ ਚੱਲਦੀ ਗੱਲ ਜਿਹੜਾ ਮਹਿੰਗਾ ਲਫਾਫਾ ਹੁੰਦਾ ਪੰਜਾਬ ਦੇ ਵਿੱਚੋਂ ਬਾਹਰ ਨੂੰ ਭੇਜਣ ਵਾਲਾ ਫੇ ਉਹ ਜਿੱਥੋਂ ਮੋੜਦੇ ਹੁੰਦੇ ਐਥੋਂ ਮੋੜੋ ਐਥੋਂ ਮੋੜੋ ਐਥੋਂ ਮੋੜੋ ਉਹ ਮੋੜ ਨਾਲੀ ਚੀਜ਼ਾਂ ਤੇ ਵੀ ਲਿਖੇ ਇੱਕ ਗੁਪਤੀ ਚਿੱਠੀ ਹੁੰਦੀ ਸਾਰੀਆਂ ਚਿੱਠੀਆਂ ਦੀ ਅੱਜ ਗੱਲਬਾਤ ਹੋਏਗੀ 1843 247 1550 18442471550 ਉਹ ਨੀਰ ਨੰਬਰ ਹੈ ਸਿੱਧਾ ਪ੍ਰਸਾਨ ਤੁਸੀਂ ਸੁਣਦੇ ਹੋ ਜਿੱਥੇ ਵੀ ਬੈਠੇ ਹੋ ਦੁਨੀਆ ਦੇ ਵਿੱਚ ਧੰਨਵਾਦ ਹੈ ਤੁਹਾਡਾ ਬਹੁਤ ਪਿਆਰ ਕਰਦੇ ਹੋ ਤੇ ਨਾਲ ਹੀ ਐਪ ਡਾਊਨਲੋਡ ਕਰ ਲਿਓ ਜੇ ਨਹੀਂ ਕਿਤੇ ਚੱਲਦਾ ਤਾਂ ਐਪ ਨੂੰ ਨੱਪ ਕੇ ਸੁਣ ਸਕਦੇ ਹੋ ਨਹੀਂ ਤਾਂ ਪ੍ਰੋਗਰਾਮ ਖਬਰ ਤੇ ਵੀ ਪਾਇਆ ਜਾਂਦਾ ਲੋਕ ਸੱਤ ਦਾ YouTube ਦਾ ਚੈਨਲ ਹੈ ਉਹਦੇ ਤੇ ਵੀ ਪ੍ਰੋਗਰਾਮ ਛੇਤੀ ਪਾਇਆ ਕਰਨਗੇ ਤੁਸੀਂ ਮਿਸ ਕਰਦੇ ਰਹੇ ਕਿਉਂਕਿ ਇੱਕ ਆਦਤ ਪਈ ਹੁੰਦੀ ਹੈ ਤੇ ਉੱਥੇ ਲੱਭਦੇ ਆ ਮਨਜਿੰਦਰ ਗਿੱਲ ਗੋਲ ਕੋਸ ਤੋਂ ਕਹਿੰਦਾ ਭਾਈ ਜੀ ਪ੍ਰੋਗਰਾਮ ਇਹ ਨਹੀਂ ਲੱਭੇ ਸਭ ਸ਼ੁਰੂ ਦੇ ਵਿੱਚ ਜਦ ਆਸਟ੍ਰੇਲੀਆ ਦੇ ਪ੍ਰੋਗਰਾਮ ਸੁਣਣ ਲੱਗੇ ਮਨਜਿੰਦਰ ਗਿੱਲ ਦੀ ਪਹਿਲੇ ਨੰਬਰ ਦੀ ਜਗ੍ਹਾ ਫਿਰ ਹੌਲੀ ਹੌਲੀ ਹੌਲੀ ਪੰਜਾ ਚਾਰ ਸਾਲਾਂ ਚ ਟੱਬਰ ਬਹੁਤ ਵੱਡਾ ਹੈ ਇਹ ਰੱਬ ਸੁੱਖ ਰੱਖੇ ਇਸ ਗਰਮੀ ਦੇ ਵਿੱਚ ਵਿਜ਼ਿਟ ਕਰਨ ਦਾ ਪਲਾਨ ਹੈ ਆਸਟ੍ਰੇਲੀਆ ਦੇ ਵਿੱਚ ਤੇ ਬਹੁਤ ਵੱਡਾ ਭਾਈਚਾਰਾ ਉਸ ਸਮੇਂ ਜਦ ਵਾਰਸਾਂ ਦੀ 18442471550 krpradio.com ਤੇ ਸਿੱਧਾ ਪ੍ਰਸੰਤ ਨਿਮੀਡੋਲੋਜੀ ਦਾ ਲਿਖਿਆ ਨੰਬਰ 604 440 6462 ਮੈਨੇਜਰ ਸਾਹਿਬਾ ਜੀ info@krrradio.com ਉਹਨਾਂ ਦੀ ਈਮੇਲ ਹੈ ਤੇ ਹਰਜੀਤ ਸਿੰਘ ਗਿਲ ਦਾ ਫੇਸਬੁੱਕ ਦਾ ਤੇ ਅਕਾਊਂਟ ਜਿੱਥੇ ਤੁਹਾਡਾ ਸੁਖ ਸੁਨੇਹਾ ਆਉਂਦਾ ਹੈ ਤੇ ਨਾਲ ਨਾਲ ਹਰਜੀਤ@krrradio.com ਇਹ ਈਮੇਲ ਹੈ ਰਾਜ ਦਾ ਦਾ ਇੱਜ਼ਤਾਂ ਬਚਾਉਣ ਕਦੇ ਬਣ ਭਾਈ ਕਨਈਆ ਜਲ ਮੂੰਹ ਵਿੱਚ ਪਾਉਣ ਉਹਦੇ ਭਾਵੇਂ ਕੋਈ ਬੇਗਾਨਾ ਭੈਣ ਵੀਰ ਕਹਿੰਦੇ ਨੇ ਉਸ ਧਰਤੀ ਤੇ ਫਕਰ ਫਕੀਰ ਰਹਿੰਦੇ ਨੇ ਭਾਵੇਂ ਪਤਾ ਨਹੀਂ ਉਹ ਰੋਟੀ ਰਾਤ ਵਾਲੀ ਕਿੱਥੋਂ ਆਉਣੀ ਦੀ ਫੇਰ ਵੀ ਜਨौरा ਨੂੰ ਹੈ ਪਾਉਣੀ ਜਿੱਥੇ ਲੌਣ ਇਹ ਸ਼ਵੀਲਾ ਰਾਹ ਗੀਰ ਨੇ ਉੱਥੇ ਸੱਚੀ ਹੋਈ ਫਕਰ ਫਕੀਰ ਰਹਿੰਦੇ ਗੱਲਾਂ ਤਾਰਿਆਂ ਨਾਲ ਕਰਦੇ ਨੇ ਰਾਤ ਨੂੰ ਮੰਗੜ ਭਲਾ ਸਰਵਤ ਦਾ ਹਰ ਅੰਮ੍ਰਿਤ ਵੇਲੇ ਰਾਹ ਦਿਖਾ ਗਿਆ ਨਾਨਕੀ ਵੀਰ ਕਹਿੰਦੇ ਨੇ ਉਸ ਧਰਤੀ ਫਕੀਰ ਰਹਿੰਦੇ ਨੇ ਮਾਰ ਵੈਰੀ ਬੜੀ ਮਾਰੀ ਕੇ ਨਾ ਜੰਮੇ ਦੁੱਲਾ ਜਿਉਣਾ ਉਹ ਮਾਰ ਵੈਰੀ ਬੜੀ ਮਾਰੀ ਕੇ ਨਾ ਜੰਮੇ ਦੁੱਲਾ ਜਿਉਣਾ ਪਰ ਚੱਲ ਕੇ ਵੀ ਦੁੱਖ ਲੋਕ ਸਿੱਖੇ ਮਸਕਰਾਉਣਾ ਸਰੀਰ ਮਰ ਜਾਵੇ ਮਰੇ ਨਾ ਜਮੀਰ ਕਹਿੰਦੇ ਨੇ ਸਰੀਰ ਮਰ ਜਾਵੇ ਮਰੇ ਨਾ ਜ਼ਮੀਰ ਕਹਿੰਦੇ ਨੇ ਜਿੱਥੇ ਸੱਚਿਓਂ ਹੀ ਫਕਰ ਫਕੀਰ ਰਹਿੰਦੇ ਨੇ ਉਸ ਧਰਤੀ ਨੂੰ ਬੱਲਿਆ ਪੰਜਾਬ ਕਹਿੰਦੇ ਨੇ ਉਸ ਧਰਤੀ ਨੂੰ ਬੱਲਿਆ ਪੰਜਾਬ ਕਹਿੰਦੇ ਨੇ ਰਵੀਗੜ ਵਾਲਾ ਲਮਗੀਰ ਹੂੰ ਕਾਟ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਪੰਜਾਬ ਦੇ ਵੱਲ ਨਿਗਾਹਾਂ ਤੁਹਾਡੀਆਂ ਲੱਗੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਹੋ ਕੇ ਹਟੀਆਂ ਜਿੱਤ ਹਾਰ ਲਿਖੀ ਪਈ ਐ ਮਸ਼ੀਨਾ ਚ ਬੰਦ ਐ ਮਸ਼ੀਨਾ ਤੇ ਠੀਕਰੀ ਪਹਿਰਾ ਆਮ ਆਦਮੀ ਪਾਰਟੀ ਦੇ ਬੰਦੇ ਦੇਣ ਲੱਗੇ ਹੋਏ ਐ ਗੱਲਾਂ ਇੱਥੇ ਬਡਾਲਾ ਬਡਾਲਾ ਜੀ ਉਹਨੇ ਜੀ ਐ ਕਹਿਤਾ ਉਹਨੇ ਜੀ ਐਸਜੀਪੀਸੀ ਦੇ ਪ੍ਰਧਾਨ ਨੂੰ ਆ ਕਹਿਤਾ ਜੀ ਉਹਨੇ 77 ਦੀ ਤਰਾਹ ਦਾ ਕਹਿਤਾ ਜੀ ਉਹ ਹੁਣ ਕੱਢਤਾ ਹੁਣ ਉਹ ਆਨੰਦਪੁਰ ਸਾਹਿਬ ਕੱਠ ਕਰੀ ਬੈਠਾ ਵੇਖਿਆ ਕਿੱਥੇ ਉਹ ਕੋਫਟ ਕੀਤੀ ਜਾ ਕੇ ਜਸਵੰਤਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਮਿੰਤਾ ਕਰਦੇ ਰਹੇ ਮੈਨੂੰ 10-11 ਸੀਟਾਂ ਦੇ ਦਿਓ ਤੁਸੀਂ ਬਾਕੀ ਦੀਆਂ ਲੈ ਲਿਓ ਵਡਾ ਲਾਣਾ ਮੰਨਿਆ ਕਿਉਂਕਿ ਥਾਨੇ ਨੂੰ ਤੁਰਿਆ ਫਿਰਦਾ ਇਹਦੇ ਤੇ ਟੇਕ ਨਹੀਂ ਕਰ ਸਕਦੇ ਤੁਸੀਂ ਗੱਲਾਂ ਮਾੜੀਆਂ ਚੰਗੀਆਂ ਇਨਸਾਨ ਦੇ ਵਿੱਚ ਨੇ ਕੱਲ ਦੀ ਇੱਕ ਵੀਡੀਓ ਭਗਵੰਤ ਮਾਨ ਦੀ ਫਿਰ ਰਹੀ ਹੈ ਜਿਸ ਤੇ ਬੜੀਆਂ ਗੱਲਾਂ ਹੁੰਦੀਆਂ ਪਰ ਗੱਲ ਇੱਕ ਸੁਣ ਲਿਓ ਜ਼ਿੰਦਗੀ ਦੇ ਵਿੱਚ ਕੋਈ ਬਾਜ਼ ਨਿਕਲ ਕੇ ਆਪਣਾ ਰੰਗਤ ਖਾਨ ਦਾ ਕੋਈ ਕਮਰੇ ਦੇ ਅੰਦਰ ਰਖਾ ਦਿੰਦਾ ਉਸ ਦਾ ਤੋਰਾ ਵੇਖ ਕੇ ਲੋਕ ਮਜ਼ਾਕ ਕਰਦੇ ਪਰ ਜਿਹੜੇ ਰਾਤ ਨੂੰ ਕੁੰਡੇ ਲਾ ਕੇ ਪੀਂਦੇ ਐ ਦੁੱਖ ਉਹ ਵੀ ਇੰਨੀ ਆ ਜਿਹੜੇ ਸਟੇਜ ਤੇ ਬੈਠੇ ਚਾਹ ਦੇ ਨਾਲ ਮੂੰਹ ਚ ਪਾ ਕੇ ਯੂਟਿਊਬਰ ਤੇ ਫੋਟੋਆਂ ਬਣੀਆਂ ਉਹਨਾਂ ਨੂੰ ਵੀ ਵੇਖ ਲਓ ਜਿਹੜੇ ਬੰਬਾਂ ਦੇ ਨਾਲ ਸੜਕਾਂ ਤੋੜਦੇ ਐ ਤੇ ਪਾਣੀ 'ਚ ਬੱਸਾਂ ਚਲਾਉਂਦੇ ਐ ਕਦੇ ਉਹਨਾਂ ਨੂੰ ਵੀ ਪੁੱਛ ਲਵੀ ਇਹਦੇ ਵੀ ਮੀਟਰ ਲਾ ਕੇ ਦੇਖ ਲਓ ਇਹਦੇ 'ਚ ਕਿੱਥੇ ਕੀ ਕਹਾਣੀ ਬੋਲਦੀ ਐ ਪਤਾ ਹੀ ਨਹੀਂ ਲੱਗਦਾ ਕਦੇ ਬਾਪੂ ਨੂੰ ਆਪਣੇ ਬਾਪ ਸਮਾਨ ਕਹਿੰਦਾ ਕਦੇ ਬਦਸੂਰਤ ਕਹਿੰਦਾ ਦਰਬਾਰ ਸਾਹਿਬ ਨੂੰ ਕਦੇ ਕੁਛ ਕਹਿੰਦਾ ਠੀਕ ਜਹਰ ਹੈ ਦੇ ਖੇਲ ਨੇ ਤੇ ਉਹਦੇ ਤੇ ਸੀਐਮ ਸ਼ਿਪ ਦੇ ਵਿੱਚ ਗੱਲ ਵੀ ਉਹੀ ਫਸੀ ਹੋਈ ਹੈ ਸਹੀ ਵਾਰ ਚੀਜ਼ਾਂ ਵਿਤੋਂ ਬਾਹਰ ਹੁੰਦੀਆਂ ਪਰ ਬਿਬਕੇ ਪਾਰਲੀਮੈਂਟ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਬੰਗਾਰ ਕੇ ਲੋਕਾਂ ਨੂੰ ਕਹਿਣਾ ਤੁਸੀਂ ਦੇਖੋ ਤਾਂ ਸਹੀ ਸੁਨਾਮ ਦੇ ਨੇੜੇ ਇੱਕ ਗਰੀਬ ਜਿਹਾ ਨੋਰਮਲ ਪਰਿਵਾਰ ਤੇ ਇੱਕ ਮਾਸਟਰ ਦਾ ਮੁੰਡਾ ਤੇ ਜਲਾਲਾਬਾਦ ਜਾ ਕੇ ਬਾਦਲਾਂ ਤੇ ਰੱਖ ਦਿੰਦੇ ਆ ਅਗਲੇ ਐਡੇ ਵੱਡੇ ਵੱਡੇ ਬੰਦਿਆਂ ਦੇ ਕੋਲ ਜਿਨ੍ਹਾਂ ਦੇ ਕੋਲ ਬੋਰੀਆਂ ਚ ਨੋਟ ਨਹੀਂ ਡਾਲਰ ਭਰੇ ਹੋਣ ਪਰ ਦੱਸ ਉਸਨੇ ਕਿ ਕਹਾਣੀਆਂ ਕੀ ਨੇ ਵਿਦਵਤਾ ਔਗਣ ਗੁਣ ਇਸ ਸਾਰੇ ਮਨੁੱਖਾਂ ਚ ਦੇ ਨੇ ਕਈ ਮਾਰੀ ਕਿਸਮਤ ਨੂੰ ਸਾਹਮਣੇ ਆ ਜਾਂਦੇ ਨੇ ਕਈਆਂ ਦੇ ਔਗਣ ਸਾਹਮਣੇ ਨਹੀਂ ਆਉਂਦੇ ਮੈਂ ਮੈਂਬਰ ਵੇਖੇ ਜਿਹੜੇ ਆਥਲ ਨੂੰ ਵਾਹ ਗਰੂਬਾ ਹੁੰਦੀ ਫਦੀਆ ਉੱਥੇ ਇੱਕ ਨਹੀਂ ਹੈ ਬਥੇਰੇ ਫੜੇ ਆ ਇਹ ਜਿਹੜੀ ਗੱਲ ਹੈ ਉਹਦੇ ਚ ਔਗਣ ਹੈ ਪਰ ਜਿਹੜੀ ਤੁਹਾਡੀਆਂ ਮੰਗਾ ਉਹਨਾਂ ਦੀ ਤਾਂ ਗੱਲ ਕਰਦਾ ਹਲੇ ਵੀ ਹਾਰ ਜਿੱਤ ਹੈ ਜਿਹੜੀ ਉੱਪਰਾਂ ਬੈਠੀ ਹੈ ਤਾਂ ਹੀ ਉਸ ਪਾਰਟੀ ਨੂੰ ਲੋਕ ਪਿਆਰ ਕਰਦੇ 35 35 34 34 ਸਾਲ ਮਾੜੇ ਗਰੀਬਾਂ ਦੇ ਢਾਰਿਆਂ ਚ ਵਿਧਵਾਵਾਂ ਕਲੋਨੀਆਂ ਚ ਬੈਠੇ ਲੋਕਾਂ ਦੇ ਕੇਸ ਨੇ ਤਾਂ ਲੋਕ ਮੱਥੇ ਠੇਕਦੇ ਐ ਪਿੱਛੇ ਕੰਮ ਹੈ ਸੁਪਰੀਮ ਕੋਰਟ ਦੇ ਇੱਕ ਬੈਂਚ ਦੇ ਸਾਹਮਣੇ ਆਖਰੀ ਹੀਅਰਿੰਗ ਤੇ ਪੇਸ਼ ਹੋਣ ਦਾ 15 15 18 18 ਲੱਖਾਂ ਜੇਤਲੀ ਛੇਤਲੀ ਹੋਣੀ ਲੈਂਦੇ ਐ ਤੇ ਉਹੀ ਸਮੇ ਆਪਣੀ ਜ਼ਿੰਦਗੀ ਚੜ੍ਹਦੀ ਜਵਾਨੀ ਦੇ ਵਿੱਚ ਗਰੀਬਾਂ ਦੇ ਲੇਖੇ ਲਾਈ ਤਾਂ ਲੋਕ ਮਾਨ ਕਰਦੇ ਆ ਤਾਂ ਅੱਜ ਗੱਲਾਂ ਚੱਲਦੀਆਂ ਉੱਥੇ ਦੇ ਵਿੱਚ ਜਿਹਨੇ ਕੁਝ ਕਰਨਾ ਉਹਦੀਆਂ ਗੱਲਾਂ ਚੱਲਣੀ ਹੈ ਠੀਕ ਹੈ ਪੰਜਾਬ ਛੁਟਕੀ ਨਹੀਂ ਹੈ ਜਿਹੜਾ ਕੋਈ ਦੋ ਲੱਖ ਕਰੋੜ ਦਾ ਕਰਜ਼ਾ ਇਸ ਸਮੇਂ ਪੰਜਾਬ ਦੇ ਸਰਦਾਰਾ ਸਿੰਘ ਜੋਹਲ ਦੀ ਮੈਂ ਗੱਲ-ਗੱਲ ਸੁਣ ਰਿਹਾ ਸਾਂ ਦੋ ਲੱਖ ਕਰੋੜ ਦਾ ਕਰਜ਼ਾ ਕਿਸੇ ਨੇ ਉਹ ਕਰਜ਼ੇ ਦੇ ਵਿੱਚੋਂ ਛੁਟਕੀ ਨਾਲ ਨਹੀਂ ਕਰ ਦੇਣਾ ਪਰ ਲੋਕਾਂ ਨੂੰ ਸਾਨਾ ਆ ਜਵੇ ਵੀਆਈਪੀ ਕਲਚਰ ਪੁਲਸ ਦੇ ਡੰਡੇ ਤਹਿਸੀਲਦਾਰਾਂ ਦੀਆਂ ਰਜਿਸਟਰੀਆਂ ਦੀ ਦਰਸ਼ ਆਮ ਲੋਕ ਸਹੀ ਹੋ ਜਾਣ ਉਦੋਂ ਤੋਂ ਹੀ ਕਰਜ਼ਾ ਤਾਂ ਰਹਿਣਾ ਹੀ ਹੈ ਦੁਨੀਆ ਦੇ ਵਿੱਚ ਇਹ ਕਰਜ਼ਾ ਸਾਰਿਆਂ ਦੇਸ਼ਾਂ 'ਚ ਇਹ ਕਰਜ਼ਾ 66 66 65 70 ਬਿਲੀਅਨ ਦੇ ਗਾਂਹ ਦੇ ਕੰਟ੍ਰੈਕਟ ਕਰੀ ਬੈਠੇ ਆ ਵੀ ਜੇ ਸਰਕਾਰ ਹਿੱਲ ਜ਼ਿੰਦਗੀ ਦੇ ਵਿੱਚ ਆਰਾਮ ਹੋ ਜਾਏ ਇਹ ਵਿੱਚੇ ਪੰਜਾਬ ਦਾ ਭਲਾ ਹੋਣਾ ਸ਼ੁਰੂ ਹੋ ਜਾਣਾ ਪਰ ਨੂੰ ਪਰਾ ਕਰਕੇ ਜੇ ਪੰਜਾਬ ਦੇ ਲੋਕ ਆਪਣੀ ਹੋਣੀ ਖੁਦ ਨਿਯਤ ਕਰਨ ਲੱਗਣਗੇ ਤਾਂ ਪੰਜਾਬ ਬਚਦਾ ਜਿਹਦੀ ਦਿਨ ਰਾਤ ਆਪਾਂ ਗੱਲ ਕਰਦੇ ਵਪਾਰ ਖੰਦੇਸ਼ ਬੈਠੇ ਹੋ ਧੰਨਵਾਦ ਤੇ ਅੱਜ ਦਾ ਦਿਨ ਜਿਹੜਾ ਸ਼ੁੱਕਰਵਾਰ ਕੇ ਪਰਮਿੰਦਰ ਦਾ ਹੁੰਦਾ ਪਰਮਿੰਦਰ ਠਿੰਦ ਉਹ ਨਹੀਂ ਮੇਰੇ ਨਾਲ ਨੇ ਭਾਜੀ ਤੇ ਸਤਿ ਤੇ ਸਾਰੇ ਆ ਮਾਰਚ ਆ ਗਿਆ ਤੇ ਨਵਾਂ ਕੀ ਹੈ ਚੀਜ਼ਾਂ ਸੁਰੱਖਿਆ ਦੇ ਚੱਲ ਰਹੀਆਂ ਜਿਹੜੀ ਫਾਈਨ ਕੀਤਾ ਗਿਆ ਮੈਨੂਅਲ ਬੈਂਕ ਨੂੰ ਹਾਂ ਉਹ ਕੱਲ ਦੀ ਪਾਸੋਂ ਦੀ ਖਬਰ ਹੈ ਨਹੀਂ ਸਰ ਤੋਂ ਤੇ ਆਹ ਇੱਕ ਤਾਂ ਬਹੁਤ ਸੁਰਖੀਆਂ ਹੈ ਵਾਕਈ ਜਦੋਂ ਵੱਡੇ ਜਿੰਨੇ ਵੀ ادارے ਨੇ ਜਿੰਨੇ ਵੀ ਵੱਡੇ ਬੈਂਕ ਕੈਨੇਡੀਅਨ ਕਰਕੇ ਸਰਚ ਕਰਦੇ ਹੋ ਉਹਨਾਂ ਨੂੰ ਕਿੰਨੇ ਫਾਈਨ ਹੋਏ ਨੇ ਬਿਲੀਅਨਸ ਆ ਬਿਲੀਅਨਸ ਉਹਨਾਂ ਡਾਲਰ ਰ ਫਾਈਨ ਨੇ ਜਿੰਨੇ ਵੀ ਚੁੰਡੀ ਵੱਡ ਹੋਈ ਉਹਨਾਂ ਮਿਲੀਅਨ ڈالر ਕੋਈ ਫਰਕ ਨਹੀਂ ਪੈਂਦਾ ਪਰ ਇਹ ਵੀ ਆਪ ਦਾ ਜੋ ਕੰਮ ਉਹਨਾਂ ਨੇ ਕਰਨਾ ਉਹ ਕਰ ਹੀ ਜਾਂਦੇ ਨੇ ਤੇ ਜਿੱਦਾਂ ਉਹਨਾਂ ਨੇ ਪੈਸੇ ਬਣਾਉਣੇ ਪੜੇ ਇਹ ਵੀ ਪੰਗਰੋਂ ਪੈਂਦਾ ਜਦੋਂ ਤੁਹਾਡੇ ਦੇ ਮੇਰੇ ਵਰਗਾ ਇੱਕ ਆਮ ਇਨਸਾਨ ਨੂੰ ਕੋਈ ਗਲਤੀ ਕਰਦਾ ਉਦੋਂ ਉਹਨੂੰ ਛੱਡਦੇ ਨਹੀਂ ਉਹ ਉਹ ਕਹਿੰਦੇ ਉਦੋਂ ਤਾਂ ਲਾਇਸੈਂਸ ਬੰਦ ਕਰ ਦਿੰਦੇ ਪਰ ਬੈਂਕ ਬੰਦ ਨਹੀਂ ਹੁੰਦੇ ਪਰ ਇਹ ਵੀ ਹੁਣ ਗਲਤੀਆਂ ਕਰਦੇ ਨੇ ਨਾਲ-ਨਾਲ ਹੀ ਇੱਕ ਬੈਂਕ ਨੇ ਵੀ ਇਦਾਂ ਹੀ ਕੀਤੀ ਇੱਕ ਐਡਵਾਈਜ਼ਰ ਉਹਨਾਂ ਦੇ ਬੈਂਕ ਦੇ ਵਿੱਚ ਇੱਕ ਕਪਲ ਸੀਗਾ ਉਹਨਾਂ ਨੂੰ ਗਲਤ ਰਾਏ ਦੇ ਕੇ ਆਪਣਾ ਜਿਹੜਾ ਦਾ ਨੁਕਸਾਨ ਕਰਾਤਾ ਬੈਂਕ ਪਹਿਲਾਂ ਦਿੰਦਾ ਨਹੀਂ ਜੀਆ ਫਿਰ ਉਹਨਾਂ ਨੇ ਹੇ ਮਾਨਯਾ ਬੀਟਾ ਜਿਹੜਾ ਸਾਡੀ ਗਲਤੀ ਹੋਈ ਹੈ ਸਾਡੇ ਐਡਵਾਈਜ਼ਰ ਨੇ ਗਲਤ ਸਲਾਹ ਦੇ ਕੇ ਤੁਹਾਨੂੰ 50000 ਦਾ ਜਿਹੜਾ ਨੁਕਸਾਨ ਹੁੰਦੀਆਂ ਨੇ ਆਪਾਂ ਹਮੇਸ਼ਾ ਹੀ ਸੋਚਦੇ ਹਾਂ ਆਪਣੇ ਦਿਮਾਗ 'ਚ ਨੇ ਉਹ ਸਾਰੇ ਸਹੀ ਨੇ ਪਰ ਉੱਥੇ ਕੰਮ ਕਰਨ ਵਾਲੇ ਇਨਸਾਨ ਇਹ ਤੁਹਾਡੇ ਮੇਰੇ ਵਰਗੇ ਪਰ ਉੱਥੇ ਵੀ ਗਲਤੀਆਂ ਹੋ ਜਾਂਦੀਆਂ ਜੀ ਇਸੇ ਹਿਸਾਬ ਅੱਛਾ ਆਰਆਰਐਸਪੀ ਦਾ ਸੀਜ਼ਨ ਕਿਵੇਂ ਆ ਲੋਕ ਪੈਸੇ ਹੈਗੇ ਲੋਕ ਕੋਲ ਜਨਰਲ ਦਾ ਜਿਹੜੇ ਵੱਟ ਟੈਕਸ ਬ੍ਰੈਕਟ ਚਾਉਂਦੇ ਜਿਨ੍ਹਾਂ ਨੂੰ ਵੱਟ ਤਨਖਾਹ ਉਹ ਤਾਂ ਫਿਰ ਟੈਕਸ ਬੈਂਡ ਦੀ ਜਗ੍ਹਾ ਕਹਿੰਦੇ ਆਰਆਰਐਸਪੀ ਦੇ ਮੈਂ ਤਾਂ ਇਹ ਹੋਗੇ ਇਹ ਸਾਰੇ ਕੰਮ ਕਰਦੇ ਨੇ ਪਰ ਵਾਕਿਆ ਹੀ ਜਿਹੜੇ ਆਰਆਰਐਸਪੀ ਹੈ ਵੀ ਹਰੇਕ ਵਾਸਤੇ ਨਹੀਂ ਠੁਕਦੀ ਪਰ ਹਰੇਕ ਵਾਸਤੇ ਨਹੀਂ ਹੈਗੀ ਬਿਲਕੁਲ ਤੁਹਾਡੀਆਂ ਜ਼ਰੂਰਤਾਂ ਦੇ ਅਸਾਰ ਨਾਲ ਨੇ ਪਰ ਮੈਂ ਇਹ ਵੀ ਦੇਖਿਆ ਲੋਕੀ ਨੂੰ ਜੋ ਚੀਜ਼ ਲੈਣੀ ਹੈ ਲੋਨ ਤੇ ਤੇ ਯਾਰ ਇਸੀ ਮਿਲਦੀ ਉਹ ਲੈ ਕੇ ਵੀ ਕੰਟਰੀਬਿਊਸ਼ਨ ਕਰਦੇ ਨੇ ਆਪਦੀ ਇਨਕਮ ਬਿਲਕੁਲ ਕਈਆਂ ਨੂੰ ਫਾਇਦਾ ਹੁੰਦਾ ਹੈ ਕਈ ਹਰੇਕ ਦੋਏ ਪੱਖੀ ਲੋਕ ਨੇ ਕੋਈ ਨੇ ਅੱਜ ਨੇ ਜੇ ਲੋ ਅਸੀਂ ਕਢਾਣੇ ਨੇ ਇਹ ਨਾ ਹੋਵੇ ਜਦੋਂ ਅੱਜ ਪਾ ਦਈਏ ਰਮਣੀ ਤੇ ਸਾਡੀ ਲੌਕ ਹੋ ਗਈ 65 ਸਾਲ ਤੱਕ ਜਿਆ ਉਦੋਂ ਪਹਿਲਾਂ ਕਢਾਵਾਂਗੇ ਤਾਂ ਵਾਕਿਆ ਹੀ ਸਾਰੀ ਚੀਜ਼ ਜਿਹੜੀ ਗਰੋ ਹੋਊਗੀ ਵੀ ਟੈਕਸ ਪਣਾਇਆ ਤੇ ਹਰੇਕ ਸਾਧਾਨ ਖਾਨ ਹਰ ਇੱਕ ਚੀਜ਼ ਪਰ ਡਿਪੈਂਡ ਹੈ ਤੁਹਾਡੀਆਂ ਜ਼ਰੂਰਤਾਂ ਕੀ ਨੇ ਨਾਲੇ ਹੁਣ ਇਹੀ ਹੈ ਹਾਰਵੈਸਟ ਸੀਜ਼ਨ ਦਾ ਚਲੋ ਓਵਰ ਹੋ ਗਿਆ ਹੈ ਬੇਜਾ ਕਹਿੰਦੇ ਡੈਡਲਾਈਨ ਸੀਗੀ ਪਰ ਮੈਂ ਇਹੀ ਕਹਿੰਦਾ ਜਿਨ੍ਹਾਂ ਨੇ ਹੁਣ ਇੱਕ ਇਹੀ ਟਿਪਸ ਐਂਡਰੀ ਸੈਂਪਲ ਹੁਣ ਜੇ ਆਪਾਂ ਨੂੰ ਪਤਾ ਹੈ ਯਾਰ ਐਸਟੀਪੌਂਡ 2017 ਚ ਲੈਣੀ ਹੈ ਹੁਣੇ ਹੀ ਉਹਦੀ ਕੰਟਰੀਬਿਊਸ਼ਨ ਤੁਸੀਂ ਮੰਥਲੀ ਪੈਕ ਸੈਟ ਕਰ ਸਕਦੇ ਹੋ ਵੀ ਤੇ ਆਪਣੇ ਪੈਸੇ ਬਾਚ ਉਹ ਵਧਨੇ ਸ਼ੁਰੂ ਹੋ ਜਾਣੇ ਨਾਲ ਜਦ ਤੱਕ ਐਂਡ ਤੱਕ ਆਪਾਂ ਆਪਣੀ ਕੰਟਰੀਬਿਊਸ਼ਨ ਕਰਨੀ ਹੈ ਇਸ ਕਰਕੇ ਪੈਕ ਸੈਟ ਅਪ ਕਰ ਸਕਦੇ ਹੋ ਅੱਛਾ ਇਹਦੇ ਨਾਲ ਇੱਕ ਸਵਾਲ ਹੋਰ ਆ ਵੀ ਆਰਈਐਸਪੀ ਜਿਹੜੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਉਹ ਵੀ ਆਪਾਂ ਕਰਦੇ ਹਾਂ ਬਿਲਕੁਲ ਜੀ ਆਪਾਂ ਵੀ ਕਰਦੇ ਆ ਜੀ ਬਿਲਕੁਲ ਕਿਸੇ ਨੇ ਅ ਬੱਚਿਆਂ ਦਾ ਕੋਈ ਵੀ ਨਾ ਬਿਲਕੁਲ ਆ ਅ ਬੈਂਕ ਵੀ ਕਰਦੇ ਨੇ ਇੰਸ਼ੂਰੈਂਸ ਕੰਪਨੀਆਂ ਵੀ ਕਰਦੇ ਆ ਤੇ ਬਹੁਤ ਹੀ ਨਾਲੇ ਹੋਰ ਜਿਹੜੇ ਪ੍ਰਾਈਵੇਟ ਜਿਹੜਾ ਪਲਾਨ ਹੈ ਉਹ ਤਾਂ ਗਵਰਨਮੈਂਟ ਦਾ ਹੈਗਾ ਜੀ ਜੋ ਵੀ ਹੈਗਾ ਕਿਉਂਕਿ ਜਿਹੜੀ ਬਿਲਕੁਲ ਉਹਨਾਂ ਨੇ ਦੇਣੀ ਹੈ ਸਾਡੇ ਗਵਰਨਮੈਂਟ ਦੇ ਉਸ ਹਿਸਾਬ ਨਾਲ ਹੈਗੀ ਹੈ ਪਰ ਬਾਕੀ ਜਿਹੜੇ ਪਲਾਨਸ ਐਂਸ਼ੂਰੈਂਸ ਕੰਪਨੀਆਂ ਵੀ ਕਰਦੀਆਂ ਨੇ ਬੈਂਕ ਵੀ ਕਰਦੇ ਆ ਉਹਨਾਂ ਚ ਵੀ ਦੋ ਦੋ ਤਰੀਕੇ ਦੇ پلان ਐ ਤੁਸੀਂ ਗਰੰਟੀ ਵਾਲੇ ਪ੍ਰੋਡਕਟਸ ਨੇ ਜਾਂ ਤੁਸੀਂ ਇਨਵੈਸਟਮੈਂਟ ਵਾਲੇ ਪ੍ਰੋਡਕਟਸ ਨੇ ਪਰ ਉਹਨਾਂ 'ਚ ਕਈਆਂ 'ਤੇ ਗਰੰਟੀ ਹੈਗੀ ਮਨੀ ਦੀ ਕਈਆਂ 'ਚ ਨਹੀਂ ਹੈਗੀ ਪਰ ਇਹ ਬਿਲਕੁਲ ਤੁਸੀਂ ਮੈਂ ਪਿਛਲੇ ਦਿਨੀ ਹੁਣ ਕਿਸੇ 'ਤੇ ਚ ਗਿਆ ਹੈ ਚਲੋ ਤੁਸੀਂ ਉਸ ਬਸੇ ਨਾਲ ਹੱਲ ਤੋਰ ਲਈ ਪਰ ਉਹ ਵੀ ਕਹਿੰਦੇ ਵੀ ਕਹਿੰਦੇ ਵੀ ਅਸੀਂ ਲੜ ਲੜ ਕੇ ਪੈਂਦੇ ਲਾਇਏ ਜੀ ਜਦੋਂ ਅਸੀਂ ਆਪ ਨਿਆਣੇ ਨੇ ਪੜਿਆ ਵੀ ਫਿਰ ਵੀ ਉਹ ਕੇ ਪੈਸੇ ਲੈ ਤੇ ਬਿਲਕੁਲ ਇਦਾਂ ਹੋ ਜਾਂਦਾ ਕਈ ਸੋਚ ਵਿਚਾਰ ਕੇ ਜਿਹੜਾ ਵੀ ਤੁਸੀਂ ਇਹ ਨਾ ਹੋਵੇ ਆਪਾਂ ਪੈਸੇ ਮਿਲਦੇ ਨੇ ਨਹੀਂ ਤਾਂ ਆਪਦੇ ਪਾਏ ਨੇ ਉਹ ਜੇ ਗਰੋ ਹੋਗੇ ਤਾਂ ਹੋਗੇ ਨਹੀਂ ਤਾਂ ਲੱਗ ਜਾਂਦੀ ਕਈ ਵਾਰੀ ਕਿਉਂਕਿ ਜੇ ਹੁਣ ਮਨੀ ਮੈਨੇਜ ਕਰਣੀ ਨੇ ਜਿੰਨਾਂ ਨਾਲ ਆਪਾਂ आरईएसपी क्रवाने क्योंकि उन्होंने भी चार्जेस पौने हैं इस करके सो समझ के वो भी कर दिया जी बिल्कुल जेके जरूरत है बाकी ਅਸੀਂ ਕਿਉਂ ਨਾ ਵੀ ਸਾਡੇ ਜਿੰਨੇ ਵੀ ਹੈਗੇ ਨੇ ਅਮਪਲੋਏ ਉਹਨਾਂ ਨੂੰ ਖੁਸ਼ ਕੀਤਾ ਜਾਵੇ ਨਾਲੇ ਹੁਣ ਐਡ ਹੋ ਗਿਆ ਜਿਹੜਾ ਐਮਐਸਪੀ ਹੁਣ ਜਿਹੜਾ ਉਹਨੇ ਕਟਾਤੀ ਉਸ ਕਰਕੇ ਆ ਵੀ ਜਿੰਨੇ ਵੀ ਜਿਹੜੇ ਏਮਪਲੋਇਰ ਨੇ ਪੈਸੇ ਬਚਣ ਲੱਗੇ ਉਹ ਵੀ ਕਹਿੰਦੇ ਵੀ ਹੁਣ ਜਾਂ ਤਾਂ ਅਸੀਂ ਗਰੁੱਪ ਪਲਾਨ ਛੋੜ ਪਾ ਦਈਏ ਤੇ ਜਾਂ ਫਿਰ ਹੁਣ ਜਿਹੜੇ ਜਿੰਨਾ ਆਪਦੇ ਬੱਚੇ ਨੂੰ ਆਪ ਦਾ ਗਰੁੱਪ ਪਲਾਨ ਆਪ ਵੀ ਲੈ ਸਕਦੇ ਨੇ ਇਸ ਕਰਕੇ ਹੁਣ ਗਰੁੱਪ ਪਲਾਨ ਦਾ ਜਿਹੜਾ ਮੇਨ ਹੈਗਾ ਵੀ ਜਿਹੜੀਆਂ ਦਵਾਈਆਂ ਤੁਸੀਂ ਹੁਣ ਖਾ ਰਹੇ ਹੋ ਉਹ ਵੀ ਤੁਹਾਡੇ ਗਰੁੱਪ ਪਲਾਨ ਚ ਚਾਹੀਦਾ ਜਿੰਨੀਆਂ ਤੁਸੀਂ ਦਵਾਈਆਂ ਸਾਰਾ ਕੁਝ ਆਪਸ਼ਨ ਅਵੇਲੇਬਲ ਆਉਂਦੇ ਤੁਹਾਡੀ travel insurance cover on the again 90 year 90 again 7 din again jado ni prescription ne jado karo character ne naw di naal hi ho company options dendi ane ਤੇ کافی ਸਾਰਾ ਹੋ ਸਕਦਾ ਜਿਹੜੇ ਆਪਲੇ ਇਸ ਇਸ ਚੀਜ਼ ਬਾਰੇ ਵਿਚਾਰ ਇਨਫੋਰਮੇਸ਼ਨ ਚਾਹੀਦੀ ਉਸ ਨਾਲ ਕੰਟੈਕਟ ਕਰ ਸਕਦੇ ਜਿਹੜਾ ਐਮਐਸਪੀ ਸਰਕਾਰਾਂ ਕਹਿੰਦੀਆਂ ਕਢਾਉਣ ਨੂੰ ਉਹਦੀ ਗੱਲ ਕਰਦੇ ਉਹਦੀ এমপ্লয়ার ਨੂੰ ਦਾ ਫਾਇਦਾ ਹੋਣਾ এমপ্লয়ার ਵੀ এমএসপি ਦਿੰਦੇ ਆ ਦੇਖਾ ਗਰੁੱਪ ਪਲਾਨ ਆ এমএসপি ਵੀ ਕਦੇ ਪੇ ਕਰਦੇ ਆ ਹਾਂਜੀ ਬਿਲਕੁਲ ਜਿੱਥੇ ਪੈਸੇ ਲਾਉਣੇ ਨੇ ਕਿਉਂਕਿ ਹੁਣ ਜੇ ਆਮ ਬੰਦਾ ਆ ਜੇ ਮਰਛਾ ਪੈਸੇ ਆਉਦੇ ਨਾ ਮੇਰੇ ਘਟ ਗਏ ਮੈਂ ਕਿਤੇ ਹੋਰ ਲਾ ਸਕਦਾ ਮੈਨੂੰ ਪਤਾ ਵੀ ਮੇਰੇ ਮ ਲੋ ਦੀ ਬਚਿਆ ਤੇ ਹਰੇਕ ਮਹੀਨੇ ਨੇ ਚੁਆਇਸ ਕਰ ਸਕਾਂਗੇ 604 828 7213 ਇਹ ਫੋਨ ਨੰਬਰ ਹੈ ਦੇ ਨੇ ਇੱਥੇ ਪਿਛਲੇ 5-4 ਕੋਈ ਵੀ ਅੱਜ ਤੱਕ ਇਹ ਜੀ ਕੰਪਲੇਨ ਨਹੀਂ ਕੁਛ ਕਿਹਾ ਹੋਵੇ ਕੁਛ ਕੀਤਾ ਹੋਵੇ ਕਲੀਅਰ ਜਿਹੜੀ ਡੀਲਿੰਗ ਆ ਉਹਦੇ ਚ ਸਤਕਾਰ ਮਿਲਦਾ ਤੇ ਤਰੱਕੀਆਂ ਤੁਹਾਡੀਆਂ ਤੁਹਾਡੇ ਸਾਹਮਣੇ ਨੇ ਜਿਹੜਾ ਕੰਮ ਹੋ ਰਿਹਾ ਉਹ ਖੱਟ ਦੇ ਨਾਲ ਨਹੀਂ ਤਾਂ ਆਪਣੇ ਸ਼ਹਿਰ ਦੇ ਤੇ ਦੇ ਰਾਹ ਜੇ ਤੁਸੀਂ ਨੇ ਵਪਾਰਕ ਸਟੇਸ਼ਨ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਦੇ ਅੱਛਾ ਜੀ ਇੱਕ ਅਕਸਰ ਆਪਾਂ ਘਰਾਂ ਦੇ ਵਿੱਚ ਗੱਲਾਂ ਕਰਦੇ ਆ ਉੱਥੇ ਪਾਣੀ ਦੂਸ਼ਿਤ ਹੋ ਜੀ ਉੱਥੇ ਹਵਾ ਮਾੜੀ ਐ ਤੇ ਪੰਜਾਬ ਚ ਕੈਂਸਰ ਬਹੁਤ ਹੋ ਰਿਹਾ ਇੱਥੇ ਵੀ ਕੈਂਸਰ ਬਹੁਤ ਹੋ ਰਿਹਾ ਜੀ ਕੁਝ ਨਵੇਂ ਅੰਕੜੇ ਆਏ ਬਿਲਕੁਲ ਭਾਈ ਜ ਤੁਸੀਂ ਨੇ ਅ ਅਫੀਸ਼ਲ ਦੇ ਜਿਹੜੇ ਕੈਨੇਡੀਅਨ ਕੈਂਸਰ ਸੁਸਾਇਟੀ ਨੇ ਐਸਟੀਮੇਟ ਕੀਤਾ ਮੋਰ ਦੈਨ ਬੰਦੇ ਨੇ ਜਿਹੜੇ ਡਾਇਗਨੋਸਡ ਕੈਂਸਰ ਹੋਣਗੇ ਸਾਲ ਦੇ ਵਿੱਚ ਭਾਈ ਜਣ ਸਿਰਫ ਮੇਲ ਨੇ ਤੇ ਉਹਨਾਂ ਚ 40000 ਜਿਹੜੇ ਨੇ ਆਲਮੋਸਟ 40% ਨੇ ਇਸ ਬਿਮਾਰੀ ਉਹਨਾਂ ਨਾਲ ਹੀ ਉਹਨਾਂ ਨੇ ਜਿਹੜੇ 90000 ਇਹ ਲੇਡੀਜ਼ ਨੂੰ ਹੋਊਗੀ ਕੈਂਸਰ ਤੇ ਕੱਲੀ ਕੈਂਸਰ ਹੀ ਕੈਂਸਰ ਹੈ ਬਾਕੀ ਜਿਹੜੀਆਂ ਹੋਰ ਬਿਮਾਰੀਆਂ ਦਾ ਛੱਡੋ ਜੀ ਜਿਹੜੀਆਂ ਹੈ ਨਹੀਂ ਇਹਨੇ ਇਹ ਸਿਰਫ ਕੈਂਸਰ ਦੇ ਆਕੜੇ ਨੇ ਉਦੋਂ ਬਾਅਦ ਇਹ ਦੇਖਿਆ ਐਵਰੇਜ 555 ਕੈਨੇਡੀਅਨਰ ਵੀ ਡਾਇਗਨੋਸਡ ਡੇ 155 ਕੈਨੇਡੀਅਨ एवरीडे ਡਾਇਗਨੋਸ ਹੋਣਗੇ ਕੈਂਸਰ ਦੇ ਨਾਲ ਪਰ ਇਹ ਵੀ ਵਾਕਿਆ ਹੀ ਇਹ ਇਹਨਾਂ ਮੁਲਕਾਂ 'ਚ ਜਨਾਬ ਕਹਿੰਦੇ ਆ ਤੇ ਇਹ ਬਿਮਾਰੀਆਂ ਬਹੁਤ ਨੇ ਕਿਉਂਕਿ ਵਾਤਾਵਰਣ ਦਾ ਵੀ ਹੈਗਾ ਫਰਕ ਪਰ ਇਹ ਉਸ ਹਾਵਨ ਜਿੱਦਾਂ ਬਿਮਾਰੀਆਂ ਵਧ ਰੀਆਂ ਨੇ ਕਿਉਂਕਿ ਇਹਨਾਂ ਕੋਲੇ ਇਲਾਜ ਵੀ ਹੈਗੇ ਨੇ ਇਲਾਜ ਵੀ ਹੈਗੇ ਨੇ ਕਿਉਂਕਿ ਮੋਸਟਲੀ ਇਹ ਹਰੇਕ ਬੰਦੇ ਨੂੰ ਇਹ ਕੁਛ ਨਾ ਕੁਛ ਹੋਵੇ ਆਲਮੋਸਟ ਬੰਦਾ ਬਾਕੀ ਜਾਂਦਾ ਹੁਣ ਜਿਹੜੇ ਸਰਵਾਈਵਲ ਰੇਟ ਆਲਮੋਸਟ 70% ਹੈਗਾ ਪਰ ਜਿਹੜੀ ਕਰੋਪੀ ਆ ਜਾਂਦੀ ਹੈ ਉਸ ਕਰਕੇ ਇਹਨਾਂ ਫਿਰ ਇੰਸ਼ੂਰੈਂਸ ਪੇਸਟ ਹੁੰਦੀ ਉਹ ਕਰੀ ਨਿਕਲ ਗਈ ਤੇ ਆਪਣੀ ਪੇਸਟ ਨਿਕਲ ਗਈ ਦੁਬਾਰਾ ਨਹੀਂ ਪੈਣੀ ਹੁਣ ਇਹ ਵੀ ਗੱਲ ਇੱਕ ਵਾਰੀ ਜਿਹੜੀ ਚੀਜ਼ ਹੋ ਉਹ ਫਿਰ ਠੀਕ ਤਾਂ ਹੋ ਰੋਗ ਗਲੋ ਨਹੀਂ ਬਣ ਜਿਹੜਾ ਫਾਈਨੈਂਸ਼ੀਅਲ ਮੈਟਰ ਜਿਹੜੇ ਹੈਗੇ ਚੀਜ਼ ਉਹਦੇ ਨਾਲ ਹੀ ਠੀਕ ਹੋਣੀ ਹੈ ਜੀ ਤੇ ਜੇ ਤੁਹਾਡੀ ਐਟਲੀਸ ਮਾੜੀ ਮੋਟੀ ਇੰਸ਼ੂਰੈਂਸ ਕਰਾਈ ਹੁਣ ਬੰਦੇ ਨੂੰ ਮੇਨ ਜਿਹੜਾ ਦੇਖਦੇ ਆ ਕੈਂਸਰ ਤੇ ਹਾਰਟ ਅਟੈਕ ਸਭ ਜ਼ਿਆਦਾ ਹੁੰਦਾ ਜੀ ਸਿਰਫ ਤੁਸੀਂ ਆਹੀ ਚੀਜ਼ਾਂ ਕੱਲੀਆਂ ਕਵਰ ਕਰ ਸਕਦੇ ਆ ਕੈਂਸਰ ਕੱਲਾ ਦੇ ਹਾਰਟ ਅਟੈਕ ਆਉਂਦੀਆਂ ਅਪਰੂਵ ਹੋਣ ਦੀ ਬਾੜੀਆਂ ਇਸ਼ੂ ਨਹੀਂ ਹੈਗੇ ਕਿਉਂਕਿ ਸਿੰਪਲ ਹੈ ਜਿਹਨੂੰ ਕੈਂਸਰ ਨਹੀਂ ਹੋਇਆ ਉਹ ਅਪਰੂਵ ਹੀ ਅਪਰੂਵ ਹੈ ਹੁਣ ਇਹ ਵੀ ਐਟਲਿਸ ਬੰਦਾ اچھا ਕ੍ਰਿਟੀਕਲ ਜੇ ਕੋਈ ਕੋਈ ਸਟੈਂਡਰਡ ਜੀ ਬਿਲਕੁਲ ਕੋਈ ਕੰਪਨੀ ਬਿਮਾਰੀਆਂ ਦਿੰਦੀ ਕਲੀ ਕੈਂਸਰ ਦੀ ਹੈਗੀ ਹੈ ਨਾਲ ਜੇ ਅਸੀਂ ਕੋਈ ਆਪਸ਼ਨ ਐਡ ਕਰਨੇ ਆ ਹਾਰਟ ਅਟੈਕ ਜਾਂ ਉਹ ਚੀਜ਼ਾਂ ਆਪਾਂ ਆਪਾਂ ਐਡ ਕਰ ਸਕਦੇ ਆ ਡਾਲਰ ਹੈਗੇ ਨੇ ਮੈਕਸਮਮ ਹੁਣ ਇਹ 26 ਦੀ ਕਵਰੇਜ ਹੁੰਦੀ ਹੈ ਤੇ ਆਹ ਆਪਸ਼ਨ ਅਵੇਲੇਬਲ ਹੈੀਆਂ ਜੀ ਭਾਈ ਅੱਛਾ ਮਨ ਲੋ ਵੀ ਕ੍ਰਿਟੀਕਲ ਇੰਸ਼ੋਰੈਂਸ ਕਰਾਈ ਹੋਇਆ ਮੇਰੀ ਉਹਦੀ ਐਵਰੇਜ ਅਮਾਉਂਟ ਕੀ ਦੀ ਕਰਾਉਂਦੇ ਆ ਹਾਂਜੀ ਉਹ ਹਰੇਕ ਦੀ ਜਿੱਦਾਂ ਆਪਾਂ ਨੀਡ ਦੇ ਕੋਈ ਵੀ ਮੇਜਰ ਬਿਮਾਰੀ ਹੋ ਜਾਂਦੀ ਹੈ ਕੋਈ ਕੈਂਸਰ ਕੋ ਕਿਡਨੀ ਫੇਲਿਅਰ ਹੈ ਲੰਗਰ ਉਹਦੇ ਚ ਵੀ ਕਈ ਵਾਰੀ ਕਲਾਜ਼ਿਕ ਆ ਬਹੁਤ ਵੱਡੀ ਚੀਜ਼ ਹੈ ਯਾਨੀ ਅਨ ਲੋਕਾਂ ਨੂੰ ਪਤਾ ਬਿਲਕੁਲ ਜੇ ਕਿਸੇ ਨੂੰ ਕੋਈ ਹਾਰ ਅਟੈਕ ਹੋ ਗਿਆ ਬੰਦਾ ਸਰਵਾਈਵ ਕਰ ਰਹਾ ਜੇ ਡੈਥ ਹੋ ਗਈ ਤੁਸੀਂ ਡੈਥ ਬੈਨਫੀਟ ਵਾਲਾ ਰਾਈਡਰ ਤੁਹਾਨੂੰ ਤੁਸੀਂ ਕਿ ਕਿਰਟੀਕਲ ਐਲਾਈਸ ਤੇ ਪੈਸੇ ਨਹੀਂ ਦਲਨੇ ਤੇ ਇਹ ਵੀ ਚੀਜ਼ ਹੈਗੀ ਜੀ ਬਹੁਤ ਵਿੱਚ ਜਿਹੜੀ ਇੰਪੋਰਟੈਂਟ ਜਿਹੜੀ ਹੈਗੀ ਹੈ ਓਕੇ ਤੇ ਫੇਜ਼ ਮਲੋ ਵੀ ਕੈਂਸਰ ਹੋ ਗਿਆ ਜੀ ਡਾਇਗਨੋਸ ਹੋ ਗਿਆ ਉਹਦਾ ਪ੍ਰੋਸੈਸ ਕੀਮੋ ਜੇ ਉਹ ਬੜਾ ਲੰਮਾ ਜੇ ਬੋਨ ਮੈਰੋ ਹੋਇਆ ਟ੍ਰਾਂਸਪਲੈਂਟ ਹੋਣਾ ਸਾਲ ਦੋ ਸਾਲ ਤਿੰਨ ਸਾਲ ਲੱਗ ਜਾਂਦੇ ਜੀ ਉਹਦਾ ਫਿਰ ਮੰਥਲੀ ਜਿਹੜੀ ਮਨੀ ਸੈੱਟ ਆ ਕੋਈ ਮਨੀ ਜਿਹੜੀ ਮਿਲਦੀ ਹੈ ਉਹ ਡਿਸੇਬਿਲਿਟੀ ਦੀ ਜਾਂ ਦੀ ਜਾਂ ਕਰਵਾਈ ਹੈ ਤੁਹਾਨੂੰ ਲੰਬਸਮ ਪੈਸੇ ਮਿਲ ਗਏ ਪੈਸੇ ਦੇ ਦੇਣੇ ਨੇ ਤੁਹਾਡੀ ਚੁਆਇਸ ਤੇ ਡਾਕਟਰ ਉਹਦੇ ਨਾਲੇ ਉਹਨਾਂ ਨੇ ਇਹ ਵੀ ਇੱਕ ਕਈ ਕੰਪਨੀਆਂ ਕੋਲੇ ਫੀਚਰ ਆਇਆ ਗਿਆ ਸਰ ਸਾਹਿਬ ਉਹ ਦੱਸਦੇ ਨੇ ਇਸ ਚੀਜ਼ ਦਾ ਜਿਹੜੀ ਇਲਾਜ ਅਫਰੀਕਾ ਚ ਹੈ ਇਲਾਜ ਕਰਾਉਣਾ ਹੈ ਨਹੀਂ ਕਰਾਉਣਾ ਜੀ ਅੱਛਾ ਅਮ ਲਾਈਫ ਇਨਸ਼ੋਰੈਂਸ ਤੇ ਉਹਦੇ ਨਾਲ ਜਿਹੜੀ ਪੈਸੇ ਤੁਹਾਨੂੰ ਤੇ ਉਹੀ ਬਿਮਾਰੀ ਤੁਹਾਡੀ ਮੌਤ ਦਾ ਕਾਰਨ ਬਣਦੀ ਹੈ ਫਿਰ ਉਹਦੇ ਚ ਕੋਈ ਟੈਕਨੀਕਲਟੀ ਤਾਂ ਨਹੀਂ ਆਉਂਦੀ ਵੀ ਤੇ ਬੈਂਕਾਂ ਕਹਿੰਦੇ ਨੂੰ ਤੇ ਇਹਨੂੰ ਜਦੋਂ ਕਿਉਂਕਿ ਜਿਹੜੀ ਕ੍ਰਿਟੀਕਲ ਆ ਉਹਦਾ ਨਾਮ ਕ੍ਰਿਟੀਕਲ ਹੈ ਜੇ ਕੋਈ ਕ੍ਰਿਟੀਕਲ ਬਿਮਾਰੀ ਹੋਊਗੀ ਤਾਂ ਹੈ ਆ ਤੁਹਾਨੂੰ ਪੈਸੇ ਮਿਲਣਗੇ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਆਪਣਾ ਕਿਉਂਕਿ ਜਿੰਨੀਆਂ ਵੀ ਇਹ ਪ੍ਰੋਡਕਟਸ ਹੈਗੇ ਨੇ ਅੰਡਰ ਰਾਈਟਨ ਹੈ ਅੰਡਰ ਰਾਈਟਨ ਦਾ ਮਤਲਬ ਇਹ ਪਹਿਲਾਂ ਹੀ ਉਹਨਾਂ ਨੇ ਆਪਾਂ ਆ ਆਫਰ ਲਈ ਹੀ ਐਪਲੀਕੇਸ਼ਨ ਲਈ ਫਿਰ ਕਰਕੇ ਫਿਰ ਉਹਨਾਂ ਨੇ ਆਫਰ ਆਪਣੀ ਸ਼ੈਫਟ ਕੀਤੀ ਫਿਰ ਆਪਾਂ ਓਕੇ ਕਰਤਾ ਸਾਰਾ ਕੋਈ ਕੰਟਰੈਕਟ ਬਣ ਗਿਆ ਉਸ ਚ ਕੋਈ ਚੱਕਰ ਨਹੀਂ ਹੈਗਾ ਜਦੋਂ ਆਪਣੀਆਂ ਕੋਈ ਨਾਨ ਮੈਡੀਕਲ ਨੇ ਨਾਨ ਮੈਡੀਕਲ ਚ ਕੰਪਨੀ ਬਿਲਕੁਲ ਇਨਵੋਲ ਨਹੀਂ ਹੈਗੀ ਐਡਵਾਈਜ਼ਰ ਤੇ ਆਪਾਂ ਜੇ ਤੁਸੀਂ ਕੋਈ ਨਾਨ ਮੈਡੀਕਲ ਪਾਲਸੀ ਲੈਣੇ ਆਪਾਂ ਇੱਥੇ ਸਾਰਾ ਕੁਝ ਮੈਂ ਕਹਿੰਦਾ ਬਾਈ ਅਥਰਟੀ ਪੌਸੀ ਦਾ ਆਪਾਂ ਕਰ ਦੇਣੀ ਕੋਈ ਕੋ ਹਾਂ ਵੀ ਕਹਿੰਦਾ ਮੈਂ ਨੋ ਕਰਤੀ ਮੈਂ ਕੋਈ ਗੱਲ ਨਹੀਂ ਬਾਈ ਇਹ ਠੀਕ ਹੈ ਕੱਚਾ ਕੱਤ ਲੈਂਦੇ ਆ ਸਾਲ ਦੇ ਵਿੱਚ ਫਿਰ ਜਿਨੇ ਹੁਣ 5 ਲੱਖ ਦੇਣ ਵਾਲਾ ਕਹਿੰਦਾ ਵੀ 5000 ਲਾਵੇ ਇਨਫੋਰਮੇਸ਼ਨ ਸਾਰੀ ਚੈੱਕ ਕਰੋ ਵਾਕੇ ਡਾਕਟਰ ਨੂੰ ਇਨਫੋਰਮੇਸ਼ਨ ਮੰਗਾਓ ਉਦੋਂ ਫਿਰ ਉਹ ਚੱਕਰ ਪੈ ਜਾਂਦਾ ਕਹਿੰਦੇ ਚੀਜ਼ ਸੀ ਇੱਥੇ ਸਾਰਾ ਕੁਝ ਨੋ ਨੋ ਬਿਤੇ ਦੇ ਆ ਚੀਜ਼ਾਂ ਵਾਸਤੇ ਬੰਦਾ ਡਾਕਟਰ ਕੋਲੇ ਗਿਆ ਉਦੋਂ ਫਿਰ ਆ ਫਿਰ ਆਪਾਂ ਨੂੰ ਕੋਈ ਚਿੰਤਾ ਨਹੀਂ ਇੱਕ ਨਾਲੇ ਕੰਪਨੀਆਂ ਤਾਂ ਨਹੀਂ ਭੱਜ ਪਰ ਇੱਥੇ ਜਿੰਨੀਆਂ ਵੀ ਨੇ ਨਾ ਬੈਂਕ ਨਾ ਕੋਈ ਇੰਸ਼ੋਰੈਂਸ ਕੰਪਨੀ ਹਾਲੇ ਤੱਕ ਕੋਈ ਬੈਂਕਰਪਟ ਨਹੀਂ ਕੈਨੇਡਾ ਦੇ ਵਿੱਚ ਜੀ ਤੇ ਬੈਗਨ ਆ ਵੀ ਉਹ ਤੋਂ ਬਾਅਦ ਨੇ ਕਿਉਂਕਿ ਨੇ ਕਿਉਂਕਿ ਨੇ ਇਹਨਾਂ ਡਾਲਰ ਦੇਣੇ ਨੇ ਤੇ ਜੇਬ ਦੇ ਵਿੱਚ ਇਹਨਾਂ ਕੋਲ 5 ਡਾਲਰ ਚਾਹੀਦੇ ਨੇ ਇਸ ਕਰਕੇ ਵੀ ਉਹਨਾਂ ਨੂੰ ਮਾਨੀਟਰ ਕਰਦੇ ਰਹਿੰਦੇ ਨੇ ਇਸ ਕਰਕੇ ਜਦੋਂ ਉਹ ਇੰਬੈਲੈਂਸ ਹੋ ਸਕਦਾ ਉਹਨਾਂ ਨੂੰ ਕਹਿ ਸਕਦੇ ਤੁਸੀਂ ਪ੍ਰੋਡਕਟ ਨਹੀਂ ਵੇਚ ਸਕਦੇ ਤਰਾਪ ਦਾ ਜਿਹੜਾ ਇਹ ਸਾਰਾ ਸਿਸਟਮ ਸਹੀ ਕਰੋ ਉਦਾਂ ਹੀ ਜੇ ਉਹ ਲੈ ਮਾਨੀਟਰ ਨਹੀਂ ਆਈ ਮਾਨੀ ਰ ਹੌਂ ਕਰਨੀ ਹੈ ਕੰਪਨੀ ਜਣਾ ਰਿਪੋਰਟ ਕਰਨੀ ਪੈਂਦੀ ਹੈ ਤੁਹਾਡਾ ਵੀ ਜੇ ਕੋਈ ਕਲਾਇੰਟ ਤੁਹਾਡੇ ਕੋਲ ਆਉਂਦਾ ਤੁਸੀਂ ਰਿਪੋਰਟ ਕਰੋ ਹੁਣ ਬੈਂਕਾਂ ਵੀ ਨੇ ਰਿਪੋਰਟ ਕਰਦੇ ਹਰੇਕ ਬੰਦਾ ਲਾਲਚ ਕਈ ਵਾਰੀ ਆ ਜਾਂਦਾ ਇਸੇ ਕਰਕੇ ਫਾਈਨ ਹੁੰਦੇ ਨੇ ਉਹ ਤਾਂ ਨਿਕਲ ਜਾਂਦੇ ਆਮ ਬੰਦਾ ਵੇਲਾ ਛੋਟਾ ਹੈਗਾ ਰਵਾਈਜ਼ਰ ਤੇ ਔਖਾ ਹੋ ਜਾਂਦਾ ਰੋਹ ਹੋ ਜਾਂਦਾ ਰੋਹ ਫਿਰ ਤਾਂ ਅਗਲੇ ਔਖਾਂ ਚ ਵਾਦਾ ਆਉਂਦੇ ਕੀ ਬਿਲਕੁਲ ਬਿਲਕੁਲ ਤੇਰੇ ਕੋਲ ਹੈ ਵਪਾਰਕਸ ਦੇ ਚੋ ਬਾਅਦ ਫਿਰ ਸਾਮਪ ਕਰਦੇ ਆ ਪਰਮਿੰਦਰ ਸਿੰਘ ਠੰਡ ਮੇਰੇ ਨਾਲ ਨੇ 6041287213 6048287213 ਲਾਈਫ ਇਨਸ਼ੋਰੈਂਸ ਕ੍ਰਿਟੀਕਲ ਇਨਸ਼ੋਰੈਂਸ ਮਾਰਗੇਜ ਦੀ ਇਨਸ਼ੋਰੈਂਸ ਕਿਸੇ ਵੀ ਕਿਸਮ ਦੀ ਹੋਰ ਇਨਵੈਸਟਮੈਂਟ ਦੇ ਬਾਰੇ ਸਲਾਹ ਲੈਣੀ ਹੈ ਕੋਈ ਵਿਲ ਲਖਾਉਣੀ ਹੈ ਉਹਦੀ ਸਲਾਹ ਲੈਣੀ ਹੈ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਲੋਨ ਪ੍ਰੋਟੈਕਸ਼ਨ ਕੀ ਹੈ 604 428 7213 ਗੱਲਾਂ ਹੁੰਦੀਆਂ ਮੂੰਹ ਤੇ ਫੋਨ ਕਰਿਓ ਵਪਾਰਕ ਸੰਦੇਸ਼ ਪਰਮਿੰਦਰ ਸਿੰਘ ਜੀ ਤੇ ਮੇਰੇ ਨਾਲ ਨੇ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਤੇ ਅਖੀਰ ਦੇ ਵਿੱਚ ਜੀ ਆਪਣੇ ਕੋਲ ਡੇਢ ਮਿੰਟ ਦਾ ਸਮਾਂ ਹੈ ਹੋਰ ਚੈਡ ਆਨ ਕਰਨਾ ਚਾਹਉਂ ਤਾਂ ਕਰਨਾ ਚਾਹਉਂ ਹਾਂ ਜੀ ਬਿਲਕੁਲ ਜੀ ਇਹ ਹੀ ਅਮੇਸ਼ਾ ਇਹ ਕਹਿੰਦੇ ਕੋਈ ਵੀ ਚੀਜ਼ ਆਪਾਂ ਆਰਐਸਪੀ ਹੋਵੇ ਆਰਐਸਪੀ ਹੋਵੇ ਜਾਂ ਤੁਹਾਡੀ ਡਿਸੇਬਿਲਿਟੀ ਜਾਂ ਗਰੁੱਪ ਜਾਂ ਤੁਹਾਡੀ ਆਪ ਪਰਸਨਲ ਲਾਈਫ ਇੰਸ਼ੋਰੈਂਸ ਜਾਂ ਜਾਂ ਤੁਸੀਂ ਬਿਜ਼ਨਸ ਹੁੰਦੇ ਹੋ ਕਾਰਪੋਰੇਸ਼ਨ ਦੀ ਇੰਸ਼ੋਰੈਂਸ ਲੈਣਾ ਚਾਹੇ ਜਾਂ ਤੁਹਾਡੇ ਕਾਰਪੋਰੇਸ਼ਨ 'ਚ ਮਨੀ ਹੈ ਵੀ ਕਿਦਾਂ ਯੂਜ਼ ਕਰ ਸਕਦੇ ਹੋ ਤੁਸੀਂ ਸਾਰੀਆਂ ਆਪਸ਼ਨ ਬਾਇੰਸ ਐਗਰੀਮੈਂਟ ਹੈ ਇਹ ਆਪਾਂ ਬੈ ਕੇ ਵਿਚਾਰ ਕਰ ਸਕਦੇ ਹਾਂ ਕੋਈ ਜੀ ਤੁਹਾਡੇ ਵਾਸਤੇ ਟਕਵਾ ਪਲਾਨ ਹੋ ਸਕਦਾ ਹਮੇਸ਼ਾ ਹਾਜ਼ਰ ਆ ਜੀ ਬੀ ਬੀਸੀ ਜਿੱਥੇ ਵੀ ਅਲਬਰਟਾ ਜਿੱਥੇ ਵੀ ਇਹ ਬੀਏ ਐਨਏ ਵਿੱਚ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤੇ ਆਉਣਾ ਨਹੀਂ ਤੇ ਜਿੱਥੇ ਵੀ ਬੁਲਾਓਗੇ ਅਸੀਂ ਜਰੂਰ ਪਹੁੰਚਾਂਗੇ ਕੋਈ ਅਸੀਂ ਕੋਈ ਅਨ ਕੰਡੀਸ਼ਨ ਨਹੀਂ ਅਸੀਂ ਕੋਈ ਫੋਨ ਕਰਦੇ ਆ ਨਹੀਂ ਪਿਛੇ ਬੈਨੇ ਸਾਡਾ ਹੀ ਇੱਕ ਟੀਚਰ ਇਨਫੋਰਮੇਸ਼ਨ ਦੇਣੀ ਤੁਹਾਡਾ ਫੋਨ ਆਊਗਾ ਤੁਹਾਡਾ ਸਾਡਾ ਫੋਨ ਤਾਂ ਹੀ ਤੁਹਾਨੂੰ ਜਾਊਗਾ ਤੇ ਇਹ ਉਹ ਵੀ ਬਿਲਕੁਲ ਸਾਡੇ ਆਫਿਸ 'ਚ ਕਰੇ ਇੱਥੇ ਐਡਮਿੰਟਨ ਕਾਊਂਸਲ ਜਾਂ ਸਰਜ ਕਿਤੇ ਵੀ ਹਾਂ ਅਸੀਂ ਜਹਾਜ਼ 808 7213 ye alberta 5874387213 808 7213 थैंक यू बहुत सारे जी न मैं जेड़ा स्टाफ रखना जी दसया सी मैं ओहो हो गए याले और चाहिए बनते हां जी बिल्कुल जी बिल्कुल ਇਹ ਬੜੀ ਦਾ ਮਰਹਮਾ ਚਾਹੁੰਦਾ ਹੈ ਟ੍ਰੇਨਿੰਗ ਕਰਾਂਗੇ ਬਿਲਕੁਲ ਟ੍ਰੇਨਿੰਗ ਕਰਕੇ ਪਰ ਰਹਿਣਾ ਸਾਡੇ ਨਾਲ ਹੀ ਬਿਲਕੁਲ ਹਾਂ ਨਹੀਂ ਬਿਲਕੁਲ ਸੋ ਕਿਉਂਕਿ ਇਹ ਕੰਮ ਕਰਦਾ ਚਾਹੁੰਦਾ ਸੰਦੇਸ਼ਾ ਰਣ ਪੌਂਟ ਹੈਟ ਖਬਰਾਂ ਭਾਈਚਾਰੇ ਦੇ ਵਿੱਚ ਕੋਈ ਵੀ ਮਾੜੀ ਘਟਨਾ ਵਾਪਰਦੀ ਹੈ ਉਸ ਸਮੇਂ ਜਾ ਭਾਈਚਾਰੇ 'ਚ ਕੋਈ ਮੁਸ਼ਕਲ ਆ ਤਾਂ ਗੱਲਾਂ ਚੱਲਦੀਆਂ ਕਿ ਸਾਡੀ ਧਾਰਮਿਕ ਸਟੇਜ ਸਾਡੇ ਗੁਰਦੁਆਰੇ ਜਿੱਥੇ ਜਾ ਕੇ ਸੋਝੀ ਪਾਉਣੀ ਆ ਗੁਰੂ ਦੇ ਹੁਕਮ ਨੂੰ ਤੇ ਉਹੀ ਸੀ ਕਿ ਸਟੇਜ ਤੋਂ ਉਸ ਜਗ੍ਹਾ ਤੇ ਜਾ ਕੇ ਗੁਰੂ ਆਸ਼ੇ ਮੁਤਾਬਕ ਮੁਸ਼ਕਲਾਂ ਹੱਲ ਹੁੰਦੀ ਪਿਛਲੇ 2 ਸਾਲਾਂ ਤੋਂ ਭਾਈਚਾਰੇ ਦੇ ਵਿੱਚ ਜਿਹੜੀਆਂ ਸਾਡੇ ਨੌਜਵਾਨ ਬਚੇ ਗੋਲੀਆਂ ਦਾ ਵਟਾਂਦਰਾ ਕਰ ਰਹੇ ਨੇ ਤੇ ਮੌਤਾਂ ਹੋ ਰਹੀਆਂ ਨੇ ਇਸ ਦਾ ਜਿਹੜਾ ਇਨੀਸ਼ੀਏਟਿਵ ਕਮਿਊਨਿਟੀ ਲੀਡਰਸ ਨੇ ਜਾਂ ਕੰਮ ਕਰਨ ਨੇ ਬੈਂਕਟ ਹਾਲਾਂ ਦੇ ਵਿੱਚ ਮਿਲ ਕਰਕੇ ਇਸ ਤਰ੍ਹਾਂ ਦੋ ਮੀਟਿੰਗਾਂ ਸਰੀ ਦੇ ਵਿੱਚ ਵੀ ਹੋਈਆਂ ਦੁੱਖ ਨਿਵਾਰਨ ਦੇ ਵਿੱਚ ਐਪ ਇਸ ਸਮੇਂ ਬਹੁਤ ਚਰਚਾ ਚਾ ਉੱਥੇ ਬੱਚੇ ਸਾਡੇ ਕੋਈ ਵੀ ਬਾਹਰ ਲਾ ਆਪਣੇ ਬੱਚੇ ਨੇ ਸਾਰੇ ਇੱਕ ਜਗ੍ਹਾ ਤੇ ਬੈਠੇ ਆ ਕਿਸੇ ਦੇ ਮਾਰੇ ਬੰਦੇ ਦੇ ਹੱਥੀ ਛੜ ਕੇ ਸਾੜੇ ਕਮਾਂ ਚ ਪੈ ਗਏ ਉਸ ਦੇ ਲਈ ਇੱਕ ਸ਼ੁਰੂਆਤ ਕਰਨ ਦੇ ਲਈ ਸੰਗੀਤਦਰ ਦਰਬਾਰ ਸਾਹਿਬ ਦੇ ਮੁਖ ਸੇਵਾਦਾਰ ਨੇ ਉਹਨਾਂ ਨੇ ਬੀੜਾ ਤੇ ਉਹਨਾਂ ਦੇ ਨਾਲ ਦਿਆਂ ਬੀੜਾ ਚੁੱਕਿਆ ਤੇ ਭਾਈਚਾਰੇ ਦੇ ਚਿੰਤਕਾਂ ਨੇ ਉਹਨਾਂ ਨੂੰ ਕਿਹਾ ਤੇ ਉਹ ਇੱਕ ਮੀਟਿੰਗ ਆ ਜਿਹੜੀ ਕੱਲੋਂ ਹੋਰ ਜਾਰੇ ਮੀਟਿੰਗ ਆ ਤੋਂ ਅੱਗੇ ਵੀ ਗੱਲ ਚੱਲੇਗੀ ਸਰਜੀਤ ਸਿੰਘ ਸਰਾਏ ਮੇਰੇ ਨਾਲ ਨੇ ਉਸ ਮੀਟਿੰਗ ਚ ਕੀ ਹੋਏਗਾ ਕਿੰਨੇ ਵਜੇ ਸ਼ੁਰੂ ਹੋਣੀ ਆ ਕੌਣ ਕੌਣ ਉੱਚ ਪਹੁੰਚ ਰਹੇ ਹੈ ਦੱਸਣਗੇ ਸਰਜੀਤ ਸਿੰਘ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਅੱਛਾ ਭਾਈ ਸਾਹਿਬ ਦੱਸਿਓ ਜੀ ਇਸ ਜਿਹੜਾ ਤੁਹਾਡੇ ਸ਼ਹਿਰ ਦੇ ਵਿੱਚ ਕਿਉਂਕਿ ਬੱਚਿਆਂ ਦੇ ਨਾਲ ਤੁਸੀਂ ਪਹਿਲਾਂ ਤੋਂ ਹੀ ਅਕੈਡਮੀ ਤੋਂ ਲੈ ਕੇ ਛੋਟੇ ਬੱਚਿਆਂ ਤੁਸੀਂ ਪ੍ਰਚਾਰਕੋਂ ਕੰਮ ਦੇ ਪਰ ਬੱਚਿਆਂ ਦੇ ਨਾਲ ਤੁਹਾਡਾ ਬਹੁਤ ਵਾਸਤਾ ਰਿਹਾ ਹੈ ਛੋਟੇ ਛੋਟੇ ਬੱਚੇ ਜਿਹੜੇ ਅੱਜ ਵੱਡੇ ਗੁਰੂ ਆਸ਼ੇ ਮੁਤਾਬਕ ਉਹਨਾਂ ਵਧੀਆ ਜ਼ਿੰਦਗੀ ਉਹ ਅਮਲਤਾ ਉਹ ਖੁਦ ਕਰ ਰਹੇ ਨੇ ਪਰ ਰਾਹ ਦਿਖਾਉਣ ਦੇ ਲਈ ਕੋਈ ਵੀ ਮੈਂਟਰ ਰਾਹ ਦਸੇਰਾ ਕੋਈ ਚਾਹੀਦਾ ਤੁਸੀਂ ਕੰਮ ਕੀਤਾ ਇਸ ਬਾਰੇ ਲੋਕਾਂ ਨੂੰ ਸਭ ਪਤਾ ਹੈ ਹੋੜਾ ਗੁਰਦਵਾਰ ਸਾਹਿਬ ਦੇ ਮੁੱਖ ਸੇਵਾਦਾਰ ਹਾਂ ਤੇ ਇਸ ਤੁਹਾਡੇ ਸ਼ਹਿਰ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਜਾਂ ਹੋਰ ਵੀ ਕਮਿਊਨਿਟੀ ਸਰੀ ਦੇ ਵਿੱਚ ਵੀ ਪਿਛਲੇ ਸਾਲ ਬਹੁਤ ਹੋਈਆਂ ਉਹਦੇ ਸਬੰਧੀ ਇੱਕ ਮੀਟਿੰਗ ਰੱਖੀ ਹੈ ਉਹਦੀ ਪਿਛੋਕੜੀ ਕੀ ਹੈ ਹਾਂਜੀ ਭਾਈ ਸਾਹਿਬ ਜੀ ਉਹਦੀ ਪਿਛੋਕੜੀ ਇਦਾਂ ਕਿ ਜਦੋਂ 10 ਦੇ ਵਿੱਚ ਮੈਂ ਪਹਿਲੀ ਵਾਰ ਗੁਰਦਰਾ ਸਾਹਿਬ ਆਂਦੇ ਤੇ ਅੰਦੇ ਮੈਂ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਸੰਭਾਲੀ ਸੀ ਤੇ ਦੇਵਨੇਯਤ ਨਾਲ ਉਸੇ ਦਿਨ ਹੀ ਕੈਪਸਕੋਰਡ ਦੇ ਮੇਅਰ ਅਤੇ ਪੁਲਿਸ ચીਫ ਵੱਲੋਂ ਇੱਕ ਫਾਰਮ ਰੱਖਿਆ ਗਿਆ ਸੀ ਭਾਈਚਾਰਿਆਂ ਦਾ ਇਕੱਠ ਹੋਇਆ ਸੀ ਕਿ ਤੇ ਮੇਰੇ ਜਾਣਦਣ ਮੀਟਿੰਗ ਆਖਰੀ ਦੌਰ ਤੇ ਸੀ ਤੇ ਉੱਥੇ ਮੈਂ 7 ਮਿੰਟ ਦੀ ਸਪੀਚ ਦਿੱਤੀ ਸੀ ਜਿੱਥੇ ਸਾਰਾ ਪੁਲਿਸ ਡਿਪਾਰਟਮੈਂਟ ਤੇ ਜਿਨੇ ਕਾਉਂਸਲਰਸ ਹਨ ਮੇਅਰ ਸੀ ਤੇ ਵਾਕ-ਵਾਕ ਪਾਈ ਚਾਰਾਂ ਦੇ ਲੋਕ ਇਕੱਠੇ ਸਨ ਤੇ ਉਸ ਮੀਟਿੰਗ ਦੇ ਵਿੱਚ ਉਹ ਸੱਤ ਮਿੰਟ ਦੀ ਦੇ ਵਿੱਚ ਮੈਂ ਦੱਸਿਆ ਨਿਸ਼ਾਨੇ ਹੈਗੇ ਨੇ ਆਪਣੇ ਬੱਚਿਆਂ ਦੀ ਸੰਭਾਲ ਕਰਨੀ ਤੇ ਇਸ ਚੀਜ਼ ਨੂੰ ਮੈਂ ਵੱਧ ਤੋਂ ਵੱਧ ਇਸ ਨੂੰ ਪ੍ਰਸ਼ਾਸਨ ਨੂੰ ਸਪੋਰਟ ਵੀ ਦਵਾਂਗਾ ਤੇ ਕੁਝ ਅੰਦਰੂਨੀ ਸਾਡੇ ਕਲੇਸ਼ ਕਾਰਨ ਕਰਕੇ ਉਹ ਲੁਕੇ ਰਹੇ ਤੇ ਫਿਰ ਇਹ ਜਾਣਦਿਆਂ ਹੋયા ਕਿ ਜੇ ਜੇ ਮੀ ਪਿਆਰੀ ਆ ਤੇ ਇਸ ਕਾ ਨੂੰ ਆਪਾਂ ਹਟ ਲੈਣ ਦੀ ਫੇਰ ਹੀ ਹੁਣਗੇ ਵਧੀਏ ਬਾਹਰ ਨਿਕਲੀਏ ਸੋ ਕਾਫੀ ਸਮਾਂ ਵੇਟ ਵੀ ਕੀਤੀ ਆ ਪਰ ਇਹ ਇੰਨੀ ਜ਼ਰੂਰਤ ਪਹਿ ਚੁੱਕੀ ਆ ਹੁਣ ਸਾਡੇ ਭਾਈਚਾਰੇ ਦੇ ਅੰਦਰ ਕਿ ਇਹ ਆਪਣੇ ਨੇ ਸਾਡੇ ਜਿਹੜੀ ਟੈਂਡਰ ਏਜ ਜਿਹੜੀ ਬੜੀ ਨਾਜ਼ੁਕ ਉਮਰ ਦੇ ਵਿੱਚ ਇਹ ਇੱਕ ਜ਼ਿੰਦਗੀ ਤੇ ਗਲਤ ਫੈਸਲੇ ਲੈ ਲੈਂਦੇ ਆ ਤੇ ਇਹਨੂੰ ਹੁਣ ਸ਼ੁਰੂ ਕਰ ਰਹੇ ਆ ਜਿਹੜਾ ਕਿ ਦਵਾ ਦੱਸਿਆ ਵੀ ਜਾ ਰਿਹਾ ਕਿ ਸਮਰਟੀ ਸੇਫਟੀ ਮੀਟਿੰਗ ਦਾ ਨਾਮ ਰੱਖਿਆ ਹੋਇਆ ਕੱਲ ਨੂੰ ਮਾਰਚ 4 ਨੂੰ ਸ਼ਾਮ 6 ਵਜੇ ਗੁਰਦਰਾ ਸਾਹਿਬ ਕਲਗੀਦਰ ਦਰਬਾਰ ਦੀ ਲਾਇਬ੍ਰੇਰੀ ਅਗਲੀ ਜਿਹੜੀ ਮੀਟਿੰਗ ਆ ਰਹੀ ਹੈ 18 ਸਤੰਬਰ ਨੂੰ ਵੱਡੀ ਮੀਟਿੰਗ ਹੋਵੇਗੀ ਹੋਰ ਭਾਈਚਾਰੇ ਨੂੰ ਵੱਡੀ ਗਿਣਤੀ ਵਿੱਚ ਇਕੱਠਾ ਕੀਤਾ ਜਾਵੇਗਾ ਸਾਰਾ ਕੁਝ ਸਮੇਂ ਨੂੰ ਜਾਂਚਿਆ ਹੋਇਆ ਦੀ ਲੋੜ ਦੇ ਮੁਤਾਬਕ ਕੌਮ ਜਿਹੜੇ ਹਰਮੇਸ਼ਾ ਆਪਣੇ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੀ ਹੈ ਔਰ ਦੇ ਆਪ ਦੇ ਜਿਹੜੇ ਬੱਚੇ ਨੇ ਸਾਡੀ ਕੌਮ ਉਹ ਭੋਲੇ ਭਾ ਦੇ ਵਿੱਚ ਉਹ ਕਿਵੇਂ ਜ਼ਿੰਦਗੀ ਵਿੱਚ ਗਲਤ ਰਾਹਾਂ ਨੂੰ اختیار ਕਰਕੇ ਤੇ ਇੱਕ ਦੂਜੇ ਭਰਾਵਾਂ ਦੇ ਉੱਤੇ ਉਹ ਗੋੜੀਆਂ ਚਲਾ ਕੇ ਤੇ ਇੱਕ ਦੂਜੇ ਜਗੀਦੇਬ ਦੇ ਹੱਥ ਤੋਂ ਪਏ ਹੋਇਆ ਉਹ ਲੋੜ ਆ ਇਹਨਾਂ ਬੱਚਿਆਂ ਨੂੰ ਗਲ ਦੇ ਨਾਲ ਲਾਉਣ ਦੀ ਇਥੇ ਇਸ ਮੀਟਿੰਗ ਦੇ ਵਿੱਚ ਕਿਸੇ ਨੂੰ ਬਲੇਮ ਦੇ ਨਹੀਂ ਜਾ ਰਹੇ ਕਿ ਪੁਲਿਸ ਮਾਪਿਆਂ ਨੂੰ ਤੇ ਮਾਪੇ ਪੁਲਿਸ ਨੂੰ ਜਾਂ ਇੱਕ ਕਹੀਏ ਨਹੀਂ ਉਥੇ ਆਪਣੇ ਆਪਣੇ ਫਰਜ਼ ਸੰਭਾਲਣ ਦੀ ਗੱਲ ਹੋਗੀ ਕਿ ਕੇ ਉਹਦਾ ਸਰਲੇਖ ਦੀ ਮੀਟਿੰਗ ਲਿਖਿਆ ਕੇ ਬੈਠੀਏ ਤੇ ਕੋਈ ਸਾਰਥਕ ਹੱਲ ਲੱਭੀਏ ਤੇ ਆਪਣੇ ਫਰਜ਼ਾਂ ਨੂੰ ਪਛਾਣਦਿਆਂ ਹੋਇਆਂ ਇਹ ਜਿਹੜੀ ਪਹਿਲੀ ਰੱਖ ਰਹੇ ਹਾਂ ਜਿਹਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਆਪਣੇ ਦਿਲ ਦੇ ਵਿੱਚ ਦਰਦ ਰੱਖਦਾ ਕਾ ਉਸ ਮਾਦੀ ਦੀ ਤਸਵੀਰ ਸਾਹਮਣੇ ਲੈ ਕੇ ਆਈਏ ਜਿਹੜੀ ਮਾਂ ਨੇ ਜਨਮ ਦੇ ਕੇ ਕੀਤਾ ਤੇ ਅੱਜ ਉਹਦੀਆਂ ਸਾਹਮਣੇ ਗੋਲੀਆਂ ਵੱਜ ਰਹੀਆਂ ਨੇ ਸਾਡੇ ਇਨਾਂ ਬੱਚਿਆਂ ਤੇ ਇਹ ਇਹਦੇ ਵਾਸਤੇ ਅੱਜ ਮੈਂ ਤੁਹਾਨੂੰ ਵੀ ਇਸ ਈ ਦਾ ਮੈਂ ਧੰਨਵਾਦ ਕਰਦਾ ਤੁਸੀਂ ਮੈਨੂੰ ਕਮਿਊਨਿਟੀ ਦੇ ਰੂਬਰੂ ਕਰ ਰਹੇ ਹੋ ਕਿ ਉੱਥੇ ਹੋਰ ਕੀ ਕੀ ਵਿਚਾਰ ਜਾਣਾ ਹੈ ਬਾਰੇ ਮੈਂ ਹੋਰ ਤੁਹਾਨੂੰ ਕੁਝ ਦੱਸ ਸਕਾਂ ਜੀ ਉਹਦੇ ਵਿੱਚ ਬੇਨਤੀ ਕੀਤੀ ਹੋਈ ਆ ਕਿ ਪਹਿਲੀ ਮੀਟਿੰਗ ਦੇ ਵਿੱਚ ਜਿਹੜੇ ਮਾਪੇ ਨੇ ਜਿਹੜੇ ਯੂਥ ਹਨ ਉਹ ਆਉਣ ਜਿਹੜੇ ਆਪਣੇ ਦੇ ਭਾਈਚਾਰੇ ਦੇ ਆਗੂ ਨੇ ਆਓ ਮਿਲ ਕੇ ਫਿਰ ਤੇ ਜਿਹੜੀ ਅਗਲੀ ਵੱਡੀ ਮੀਟਿੰਗ 18 ਮਾਰਚ ਨੂੰ ਹੋਣੀ ਆ ਵੱਡੇ ਹਾਲ ਦੇ ਵਿੱਚ ਹੋਗੀ ਉਹਦੇ ਚ ਪੁਲਿਸ ਡਿਪਾਰਟਮੈਂਟ ਨੂੰ ਵੀ ਇੱਥੋਂ ਜਿਹੜੇ ਤਿੰਨੇ ਸਰਕਾਰਾਂ ਦੇ ਨੁਮਾਇੰਦੇ ਨੇ ਸਾਡੀ ਜਿਹੜੀ ਮਿਊਂਸਿਪੈਲਿਟੀ ਆ ਆ ਜਿਹੇ ਫੈਸਾ ਦੀ ਜਿਹ ਮਲ ਦੇ ਐਮ ਪੀ ਜਿਹੜੇ ਜਿਹੜੇ ਕਿਉਂਕਿ ਉਹ ਸਾਡੀ ਨੁਮਾਇੰਦਗੀ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੋਟ ਪਾ ਕੇ ਅੱਗੇ ਆਪਣੀ ਆਵਾਜ਼ ਪਹੁੰਚਾਉਣ ਦੇ ਵਾਸਤੇ ਭੇਜਦੇ ਆ ਤੇ ਉਹਨਾਂ ਦੇ ਕੋਲੋਂ ਵੀ ਸਾਰਾ ਕੁਝ ਪੁੱਛੀਏ ਕਿ ਇਸ ਸਿਲਸਿਲੇ ਦੇ ਵਿੱਚ ਆ ਕੀ ਗੱਲਬਾਤ ਚੱਲ ਰਹੀ ਆ ਹੋਰ ਕੀ ਕੀ ਕਰਨਾ ਚਾਹੀਦਾ ਹੈ ਇੱਕ ਬੇਨਤੀ ਤੇ ਸਾ ਕਰਨਾ ਚਾਹੁੰਦਾ ਹੋਰ ਤੇ ਇੱਕ ਵਾਰ ਕਿਉਂਕਿ ਮੈਂ ਕਮਿਊਨਿਟੀ ਵਿੱਚ ਲਿੰਕ ਤੇ ਆ ਮੇਰੇ ਮਾਪੇ ਆਣ ਕੇ ਮੇਰੇ ਨਾਲ ਦੁਖਾਂਤ ਆਪਣਾ ਸਾਂਝਾ ਕਰਦੇ ਆ ਆ ਉਸ ਨਿਹਾਇ ਦਿਨਾਂ ਜਿੱਥੇ ਕੁਝ ਮੈਨੂੰ ਪ੍ਰਤੀਤ ਹੋਇਆ ਮੈਂ ਆਪਣੀ ਗੱਲ ਉੱਥੇ ਰੱਖਾਂਗਾ ਔਰ ਉਹ ਜਿਹੜੀ ਗੱਲ ਕਿਥੇ ਲੋੜ ਆ ਕੀ ਕਰਨਾ ਚਾਹੀਦਾ ਹੈ ਕਿਉਂਕਿ ਜੀ ਗੱਲ ਦੱਸਨੀ ਚਾਹੁੰਦਾ ਹੈ ਕਈ ਵਾਰੀ ਖਿਆਦਿੰਦੇ ਆ ਕਾਨੂੰਨ ਇਹ ਸੌਫਟ ਨੇ ਉਹਦੇ ਕਰਕੇ ਨਹੀਂ ਅੱਗੇ ਕੁਝ ਵਧਿਆ ਜਾ ਰਿਹਾ ਮੈਂ ਬਹਿੰਤੀ ਕਰੂੰਗਾ ਜੇ ਕਾਨੂੰਨ ਸੌਫਟ ਨੇ ਆ ਉਹ ਵੀ ਆਪਾਂ ਮਿਲ ਕੇ ਹੀ ਆਪਾਂ ਸਾਰੇ ਹੱਲ ਕਰ ਸਕਦੇ ਆ ਜੇ ਅੱਜ ਇੱਕ ਮਾਂ ਦੀ ਗੋਦ ਖਾਲੀ ਹੋ ਰਹੀ ਆ ਤੇ ਉਸ ਮਾਂ ਨੇ ਮਾਂ ਇੱਕ ਇੱਕ ਤਰੀਕਾ اختیار ਛੋਟਾ ਜਿਹਾ ਬੱਚਾ ਆ ਉਹ ਉਹਨੂੰ ਨਹੀਂ ਸਮਝ ਹੈਗੀ ਕਿ ਆ ਜਿਹੜੀ ਅੱਗ ਵੱਲ ਮੈਂ ਵੱਧ ਰਿਹਾ ਆ ਚੁੱਲ੍ਹੇ ਵਿੱਚ ਅੱਗ ਵੱਲ ਗਈ ਆ ਬੜੀ ਚਮਕਦੀ ਆ ਉਹਨੂੰ ਉਹ ਬੱਚਾ ਜਿੱਦ ਕਰਕੇ ਉਹ ਅੱਗ ਨੂੰ ਫੜਨਾ ਚਾਹੁੰਦਾ ਮਾਂ ਸਿਆਣੀ ਆ ਮਾਣੋ ਪਤਾ ਕਿ ਇਹ ਬੱਚਾ ਹੱਲੇ ਸੰ ਬੇਸਮਝਿਆ ਜੇ ਮੈਂ ਇਹਨੂੰ ਅਲਾਉ ਕੀਤਾ ਕਿ ਇਹ ਸੋਹਣੀ ਕੇ ਫੜਨ ਦੀ ਕੋਸ਼ਿਸ਼ ਕਰਦਾ ਹੱਥ ਸਾੜੇਗਾ ਇਹਨੂੰ ਤੇ ਦੁੱਖ ਹੋਣਾ ਹੋਣਾ ਮੈਨੂੰ ਉਹ ਮਾਂ ਥੋੜੀ ਝਿੜਕ ਵੀ ਦਿੰਦੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮਾਂ ਕੰਨਾਂ ਤੇ ਦੋ ਛੱਡ ਵੀ ਦਿੰਦੀ ਆ ਇਸ ਕਰਕੇ ਨਹੀਂ ਬੁਰਾ ਚਿਤ ਵਰਈ ਆ ਵਾਟ ਐਵਰ ਵੇ ਉਹ ਮਾਂ ਚਾਹੁੰਦੀ ਆ ਕਿ ਉਹਦਾ ਬੱਚਾ ਸਹੀ ਸਲਾਮਤ ਰਹੇ ਅੱਜ ਲੋੜ ਐ ਸਾਨੂੰ ਇਹਨਾਂ ਸਾਡੇ ਆਪਣੇ ਬਚੇ ਨੇ ਸਾਡਾ ਆਪ ਦਾ ਖੂਨ ਐ ਸਾਡੀ ਕੌਮ ਦਾਤ ਵੇਖਿਆ ਇਹਨਾਂ ਦੇ ਮਾਲਕ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਅਸੀਂ ਕਿਸੇ ਦਾ ਦੁੱਖ ਦੇਖ ਅਸੀਂ ਜਾਨ ਨਹੀਂ ਸਾਹਦੇ ਤੇ ਸਾਡੇ ਘਰਾਂ ਚ ਦਿਖਾਂ ਤੇ ਇਹ ਵਾਪਰਿਆ ਇਹ ਇਹ ਕੁਝ ਮਕਸਦ ਨੇ ਜੀ ਮੀਟਿੰਗ ਸਾਡੀ ਰੱਖਣ ਦੇ ਹੂੰ ਤੇ ਆਪਣੇ ਕੋਲ ਹੋਰ 2-3 ਮਿੰਟ ਨੇ ਛੋਟੇ ਬੱਚਿਆਂ ਤੋਂ ਵੱਡੇ ਹੁੰਦੇ ਤੁਸੀਂ ਭਾਈ ਸਾਹਿਬ ਕੋਲੋਂ ਵੇਖੇ ਜਦ ਅਕੈਡਮੀ ਚ ਸੇਵਾ ਨੇ ਮਾਪਿਆਂ ਦੇ ਆਗਿਆ ਕਾਨਿੰਗ ਯੂਨੀਵਰਸਿਟੀਾਂ ਬਾਹਰ ਘਟਨਾਵਾਂ ਹੁੰਦੀਆਂ ਉਹਦੇ ਕਾਰਨ ਕੁਛ ਨਾ ਕੁਛ ਉਹ ਤੁਹਾਡੇ ਕੰਨ ਵਲੇ ਲਪਾਉਂਦੇ ਆ ਸਿਰਫ ਚੀਜ਼ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਹੁੰਦੀ ਆ ਉਹ ਅ ਇਸ ਉਮਰ ਦੇ ਵਿੱਚ ਇੱਕ ਇੱਕ ਦਾ ਕੀੜਾ ਜਿਹਾ ਇੱਕ ਹੁੰਦਾ ਜਿੱਕ ਤਾਂ ਆ ਉਹ ਕਿ ਆਪਣਾ ਕਿ ਮੇਰੀ ਕੋਈ ਹੋਂਦ ਹੈਗੀ ਆ ਮੈਂ ਵੀ ਕੁਝ ਹੈਗਾ ਆ ਸਿਰਫ ਇਹ ਇੱਕ ਮੇਨ ਚੀਜ਼ ਹੈਗੀ ਆ ਉਹ ਦੱਸਣਾ ਚਾਹੁੰਦੇ ਕਿ ਮੈਂ ਕੁਝ ਹੈਗਾ ਪਰ ਮੈਨੂੰ ਇਹ ਸਮਝਾਉਂਦਾ ਹੁੰਦਾ ਪੁੱਤ ਜਿਹੜੀ ਦੇਖੋ ਮਸ਼ਹੂਰ ਹੋਣ ਦੇ ਦੋ ਹੀ ਤਰੀਕੇ ਹੁੰਦੇ ਨੇ ਚਾਹੇ ਤੁਸੀਂ ਚੰਗੇ ਕੰਮ ਕਰਕੇ ਕਰ ਲੋ ਮਸ਼ਹੂਰ ਆਪਣੇ ਆਨੂੰ ਚਾਹੇ ਬੁਰੇ ਕੰਮ ਕਰਾ ਲੋ ਕਿਉਂਕਿ ਖਬਰਾਂ ਤੇ ਦੋਨਾਂ ਦੀ ਬਾਹਰ ਆਉਣੀਆ ਨੇ ਤੇ ਇੱਕ ਉਹ ਮਾਰਗ ਹੁੰਦਾ ਆ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਹ ਸਕਾਰਤਮਕ ਕਮ ਸ਼ੋਹਰੀ ਆ ਜਿਹਦੇ ਵਿੱਚ ਤੁਹਾਡੇ ਆਪ ਦੇ ਵੀ ਸਕੂਨ ਆ ਤੁਹਾਡੇ ਮੁਲਕ ਨੂੰ ਮਾਣ ਹੁੰਦਾ ਹੈ ਪਰ ਦੂਜੇ ਪਾਸੇ ਆਪਣੀਆਂ ਜ਼ਿੰਦਗੀਆਂ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਕੀ ਪਾਣਾ ਵਾਪਰ ਜਾਣਾ ਸਿਰਫ ਇਹ ਚੀਜ਼ ਉਹਨਾਂ ਦੇ ਅੰਦਰ ਹੈਗੀ ਆ ਕਿ ਉਹ ਆਪਣੇਆਂ ਨੂੰ ਕੁਝ ਬਾਣਨਾ ਚਾਹੁੰਦੇ ਬਾ ਆਪਣੀ ਇਮੇਜ ਕ੍ਰੀਏਟ ਕਰਨੀ ਚਾਹੁੰਦੇ ਆ ਉਹ ਆ ਪਰ ਉਹਨਾਂ ਦੇ ਪੋਜ਼ਿਟਿਵਲੀ ਤੇ ਉਹ ਬੜੀ ਚੰਗੀ ਗੱਲ ਹੋਗੀ ਆ ਦੂਜੀ ਟੂ ਰੇਸ ਅ ਲੋੜ ਆ ਕਿ ਉਹਨਾਂ ਬੱਚਿਆਂ ਸਮਝਾਉਣ ਦੇ ਵਾਸਤੇ ਕਿ ਤੁਸੀਂ ਆ ਮਾੜੇ ਹੱਟ ਰਸਤੇ ਤੋਂ ਹਟ ਕੇ ਆ ਚੰਗਾ ਰਸਤਾ ਕਰਦੇ ਆ ਨਾਲ ਆ ਦੀ ਚੀਜ਼ ਹੋਰ ਵੀ ਮੈਨੂੰ ਯਾਦ ਆ ਜਿਹੜੇ ਮੇਰੇ ਕੋਲ ਹੁਣ ਤੱਕ ਮੈਂ ਸੈਂਕੜੇ ਇੱਥੇ ਜਿਹੜੇ ਬੱਚਿਆਂ ਨੂੰ ਗੁਰੂ ਕਿਰਪਾ ਸਬਕਾ ਮੈਂ ਪੜਾ ਚੁੱਕਿਆ ਹਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇਨ ਤੱਕ ਉਹਨਾਂ ਨੂੰ ਕੋ ਸਟੇਜ ਤੇ ਜਾ ਕੇ ਕੁਝ ਬੋਲਣ ਤੱਕ ਮੈਂ ਆਪਣੀ ਸੇਵਾ ਨਿਭਾਈ ਆ ਨਿਕਾਜ ਇਨਸੀਡੈਂਟ ਸ਼ੇਅਰ ਕਰਦਾ ਆ ਕੁਝ ਸਮਾਂ ਪਹਿਲਾਂ ਤੱਕ ਤੁਸੀਂ ਕੇਸ ਕਰ ਸਾਹ ਜਿੱਥੇ ਦੀ ਸਿਰਜਣਾ ਹੋਈ ਸੀ ਮੈਨੂੰ ਤੋਂ ਖਬਰਾਂ ਮਿਲੀਆਂ ਕਿ ਜਿਹੜੇ ਤੁਹਾਡੀ ਅਕੈਡਮੀ ਦੇ ਜਿਹੜੇ ਬੱਚਿਆਂ ਦੀ ਲੱਥੀ ਤਸਵੀਰ ਉਹ ਮੇਰੇ ਅੱਤੇ ਤਸਵੀਰ ਸੀ ਛੋਟੇ ਛੋਟੇ ਬੱਚੇ ਨਿਕਲਿਆ ਸੀ ਮੈਂ ਬੜੇ ਚਾਵਾ ਦੇ ਨਾਲ ਬੱਚਿਆਂ ਨੂੰ ਦਸਤਾਰਾਂ ਬੰਨਦਾ ਹੁੰਦਾ ਸੀ ਸੋ ਬੱਚਿਆਂ ਨੂੰ ਬਣਾ ਕੇ ਖਾਲਸਾਈ ਬਾਣੇ ਦੇ ਜਾ ਕੇ ਤੇ ਵਾਇਰਲ ਕਾਪੀ ਤਸਵੀਰ ਹੋਈ ਤੇ ਉਹ ਵੱਡੇ ਸਾਰੇ ਹੋਲਡਿੰਗ ਬੋਰਡ ਤੇ ਤੱਕ ਤਸਵੀਰ ਕੇਸ ਖਾਦੇ ਸਾਜ ਜਿੱਥੇ ਤਾਣੂ ਚੜਦੀ ਹੈ ਪਹਾੜੀ ਉਹ ਤਸਵੀਰ ਲੱਗੀ ਹੋਈ ਸੀ ਬਹੁਤ ਸਾਰੇ ਜਿਹੜੇ ਕੋਈ ਇਥੋਂ ਆਪਣੇ ਜਾਣਦੇ ਸੀ ਮੈਂ ਦੱਸਦੇ ਹੁੰਦੇ ਸੀ ਇਹਨਾਂ ਬੱਚਿਆਂ ਦੀ ਤਸਵੀਰ ਉੱਥੇ ਲੱਗੀ ਹੋਈ ਆ ਮੈਂ ਦੁਖਾਂਤ ਵਾਲੀ ਗੱਲ ਇਹ ਆ ਕਿ ਪਿਛਲੇ ਹਫ਼ਤੇ ਵੀ ਜਦੋਂ ਮੈਂ ਦੇਖਿਆ ਮੇਰਾ ਬੱਚੇ ਅੱਜ ਵੀ ਰੋਲ ਮਾਡਲ ਵਾਂਗੂ ਕਮਿਊਨਿਟੀ ਦੇ ਵਿਚਰ ਰਹੇ ਨੇ ਆ ਦੁਖਾਂਤ ਵਾਲੀ ਗੱਲ ਹੈ ਕਿ ਦੇ ਵਿੱਚੋਂ ਦੋ ਬੱਚਿਆਂ ਨੂੰ ਜਦੋਂ ਮੈਂ ਉਹਨਾਂ ਦੀਆਂ ਦੇਖੀਆਂ ਤਸਵੀਰਾਂ ਅੱਜ ਉਹ ਦੋਨੋਂ ਬੱਚੇ ਸਿੱਖੀ ਤੋਂ ਦੂਰ ਹੋ ਕੇ ਇਹ ਇਸ ਨੂੰ ਕੇ ਕਾਫੀ ਅੱਗੇ ਲੰਘ ਚੁੱਕੇ ਨੇ ਉਹਨਾਂ ਨੂੰ ਮਿਲਿਆ ਵੀ ਆ ਮੈਂ ਫੁੱਤ ਨੇ ਛੱਡ ਦੋ ਇਹ ਨਾ ਨਾ ਇਸ ਰਾਹ ਨੂੰ ਉhtਿਆਰ ਕਰੋ ਛੱਡ ਦੋ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਪ੍ਰਤੀਤ ਹੁੰਦਾ ਉਹ ਕਾਫੀ ਅੱਗੇ ਗਲਤ ਰਾਹਾਂ ਤੇ ਤੁਰ ਚੁੱਕੇ ਨੇ ਫਿਰ ਵੀ ਮੇਰਾ ਯਤਨ ਜਾਰੀ ਆ ਕਿ ਉਹਨਾਂ ਨੂੰ ਅਜੇ ਵੀ ਮੈਂ ਕਹਿ ਸਕਾਂ ਮੈਂ ਉਹਨਾਂ ਨੂੰ ਮਿਲ ਕੇ ਕਹਿ ਸਕਾਂ ਕਿ ਨਹੀਂ ਪੁੱਤ ਆ ਜੋ ਦੁੱਲਿਆ ਵਿਗੜਿਆ ਸੀ ਸਾਰੇ ਰੱਖ ਕੇ ਤੁਹਾਨੂੰ ਘਰ ਦੇ ਨਾਲ ਲਾਉਂਦੇ ਆ ਸੋ ਚੀਜ਼ ਹੈ ਜਿਹੜੀ ਮੈਂ ਸਮਝਦਾ ਹਾਂ ਤੇ ਕਿੰਨੇ ਵਜੇ ਜੀ ਇਹ ਫੋਰਮ ਸ਼ੁਰੂ ਹੋ ਰਹਾ ਹੈ ਤੇ ਉਸ ਦੇ ਬਾਰੇ ਸਮਾਂ ਹੈ ਹਾਂਜੀ ਕੱਲ ਸ਼ਾਮ ਨੂੰ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵਿਖੇ ਵੈਸੇ ਤੇ 6 ਵਜੇ ਸੇ ਸ਼ੁਰੂ ਕਰ ਦੇਣਾ ਪਰ ਮਿੰਟ ਪਹਿਲਾਂ ਅਸੀਂ ਰੱਖਿਆ ਹੈ ਕਿ ਆ ਜੇਨ ਸਾਰੇ ਬੇਨਤੀ ਆ ਕਿ ਸਾਰੇ ਧਿਆਨ ਕੇ ਸਾਜ ਤੇ ਆਸ ਕਰਦੇ ਕਿ ਘੰਟੇ ਦਾ ਪ੍ਰੋਗਰਾਮ ਇਹ ਹੋਵੇਗਾ ਅਸੀਂ ਮਜਬੂਰੀ ਜाहिर ਕਰਦੇ ਆ ਕਿ ਉਹ ਜਗਾ ਛੋਟੀ ਹੈ ਗੱਲ ਦੀ ਜਿਸ ਸ੍ਰੀ ਤੇ ਜਗਾ ਪਾਣ ਜਾਦੀ ਨਹੀਂ ਹੋਵੇਗੀ ਕੇ ਕਰਨਾ ਸ਼ੁਰੂਆਤ ਆ ਇੱਕ ਉੱਥੇ ਆ ਵਾਤਵਾਰ ਗੰਭੀਰ ਤਾਂ ਆਪਣੀ ਜਿਹੜੀ ਸ਼ੋਅ ਕਰਨ ਸਾਡੇ ਭਾਈਚਾਰੇ ਦੇ ਆਗੂ ਨੇ ਮਾਪੇ ਨੇ ਬੱਚੇ ਨੇ ਤੇ ਕੱਲ ਨੂੰ ਇੱਥੇ ਪਹੁੰਚ ਕੇ ਫਿਰ ਅਗਲਾ ਵੱਡਾ ਜਿਹੜਾ ਜਿਹੜਾ ਐਕਸ਼ਨ ਅਗੇ ਕੀ ਲੈਣਾ ਰਲ ਮਿਲ ਕੇ ਇਨਾਂ ਤੋਂ ਹੋਰ ਦੱਸਾਂ ਕਿ ਜਿਹੜੀ ਵੱਡੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਅਸੀਂ ਸਾਰੇ ਪੁਲਿਸ ਪਰ ਪ੍ਰਸ਼ਾਸਨ ਨੂੰ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਮਾਪਿਆਂ ਨੂੰ ਤੇ ਜਿਹੜੇ ਸਾਡੇ ਭਾਈਚਾਰੇ ਤੇ ਦੇ ਜ਼ਿੰਮੇਵਾਰੀਆਂ ਜੋ ਬਣਤੀਆਂ ਨੇ ਉੱਥੇ ਮੈਂ ਆਪਣੇ ਆਨ ਖੁਦ ਪੇਸ਼ ਕਰੂੰਗਾ ਕਿ ਐਜ਼ ਅ ਸੰਸਥਾ ਐਜ਼ ਇਕੋਟਾ ਕਲਗੀਧਰਬਾਰ ਅਸੀਂ ਆਪਣੇ ਬੱਚਿਆਂ ਵਾਸਤੇ ਕੀ ਕਰ ਸਕਦੇ ਆ ਸਾਡੇ ਤੇ ਹੋਰ ਜ਼ਿੰਮੇਵਾਰੀਆਂ ਪਰ ਆਈਚਾਰਾ ਕੀ ਸੋਚਦਾ ਕਿ ਸਾਡੇ ਤੋਂ ਕੀ ਹੋਰ ਆਸ ਕਰਦੇ ਨੇ ਕਿ ਇਹਨਾਂ ਬੱਚਿਆਂ ਦੀ ਸਾਰਤਿਕ ਸੰਭਾਲ ਦੇ ਵਾਸਤੇ ਅਸੀਂ ਹੋਰ ਕੀ ਕਰ ਸਕੀਏ ਬੇਨਤੀ ਲਿਆ ਤੇ ਕੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚੋ ਤੇ ਫਿਰ ਅਗਲੇ ਵੀਕ ਜਿਹੜੀ ਅਗਲੇ ਤੋਂ ਅਗਲੇ ਵੀਕ ਜਿਹੜੀ ਵੱਡਾ ਇਕੱਠ ਹੋਣਾ ਹੈ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਹੋਗਾ ਤੇ ਉਸ ਦੀ ਗੱਲ ਫਿਰ ਨੈਕਸਟ ਵੀਕ ਸ਼ੁਰੂ ਕਰਾਂਗੇ ਧੰਨਵਾਦ ਭਾਈ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹ ਵਾਹਿਗੁਰਜੀ ਕੀ ਫਤਿਹ ਜੀ ਵਪਾਰ ਖਸ ਦੇ ਖਬਰਾਂ ਦੀ ਸਾਝ ਪਾਉਣ ਤੋਂ ਪਹਿਲਾਂ ਇੱਕ ਕਾਲਰ ਗੱਲਬਾਤ ਕਰਨਾ ਚਾਹੁੰਦੇ ਨੇ ਸਾਹਿਬ ਜੀ ਲਾਈਨ ਨੰਬਰ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਜਗਿੰਦਰ ਸਿੰਘ ਚਾਹਲਿਆ ਆਪਣੇ ਮੈਂ ਸਾਹਿਬ ਦਰਬਾਰ ਦੇ ਰਿਕਾਰਡਿੰਗ ਨੇ ਕਾਫੀ ਅ ਸਰਜਿਸਿੰਗ ਨਾਲ ਨਹੀਂ ਕਾਫੀ ਇਹ ਨਾਲ ਗੱਦਹਣਾ ਇੱਕ ਪ੍ਰੋਗਰਾਮ ਹੈ ਨਾ ਸ਼੍ਰੀਕੀਤਾ ਵੀਰੇ ਆਪਣੇ ਬੱਚੇ ਬੱਚਾ ਇਸ ਦਾ ਡਰਗਸਟੋਰ ਨਾਲੇ ਅਮ ਹੋਜਰ ਬੱਦ ਆਪਣੀ ਆ ਆਪਣੀ ਇਮੀਡੀਟ ਦੀ ਹੈਗੀ ਹੈ ਕੋਈ ਵੀ ਡਰਗ ਇਸ਼ੂਸ ਆ ਗੈਂਗ ਇਸ਼ੂਸ ਆ ਆਪਾਂ ਨੂੰ ਜ਼ਿੰਮੇਵਾਰ ਆਪਾਂ ਨੂੰ ਪਾਣਾ ਚਾਹੀਦਾ ਆਪਣੇ ਪੇਰੈਂਟਸ ਉਹ ਮੂਕ ਗੱਡਰੋ ਮਾਰੋਜ਼ ਬਣਾ ਚਾਹੀਦਾ ਮੈਂਟਰ ਬਣਾ ਚਾਹੀਦਾ ਅਸੀਂ ਆ ਉਹ ਕਿਰਨ ਗੱਬਣਾ ਚਾਹੀਦਾ ਜਿਹੜਾ ਆਪਣੇ ਬੱਚਿਆਂ ਨੂੰ ਫਸ ਹੁੰਦੀ ਹੈ ਉਹਨਾਂ ਕੀ ਉਹਨਾਂ ਦੇ ਇਸ਼ੂਜ਼ ਕੀ ਆ ਨਾ ਤੇ ਜਦੋਂ ਆਪਾਂ ਇਹ ਨਾ ਮਾਹੌਲ ਆਪਣਾ ਪਹਿਨੋਂ ਆਪਾਂ ਸ਼ੁਰੂਆਤ ਇੱਥੋਂ ਕਰਾਂਗੇ ਘਰਾਂ ਤੋਂ ਫਿਰ ਜਿਹੜੇ ਜਿਹੜੇ ਕਮਿਊਨਿਟੀ ਇਸ਼ੂਜ਼ ਆ ਬਹੁਤ ਆਪਾਂ ਵੱਡੇ ਨਹੀਂ ਬਣਦੇ ਆਈ uh, Think ਜੇ ਆਪਾਂ ਸਪੈਂਡ ਟਾਈਮ ਹੋਰ ਸਪੈਂਡ ਕਰਿਆ ਕਰੀਏ ਬੱਚਿਆਂ ਨਾਲ ਔਰ ਸੋ ਆਮ ਕਰਦੇ ਬੱਚਿਆਂ ਨਾਲ ਲਿਮਿਟਡ ਹੈਗੀ ਆ ਟਾਈਮ ਨਹੀਂ ਸਪੈਂਡ ਕਰਦੇ ਨਾ ਬੱਚਿਆਂ ਨਾਲ ਜੀ ਇਸ਼ੂ ਜਿਹੜੇ ਆਪਣੇ ਇੱਥੋਂ ਸ਼ੁਰੂਆਤ ਹੁੰਦੇ ਆ ਜਦੋਂ ਆਪਾਂ ਕਮਿਊਨਿਟੀ ਕਮਿਊਨੀਕੇਸ਼ਨਸ ਕਰਦੇ ਬੱਚਿਆਂ ਨਾਲ ਅਮ ਆਲਸੋ ਅਮ ਯੂ ਨੋ ਆਪਾਂ ਇਸ ਸਪੋਰਟਸ ਐਕਟੀਵਿਟੀਜ਼ ਹੈਗੀਆਂ ਜਾਂ ਹੋਰ ਵੀ ਆਪਣੇ ਚੀਜ਼ਾਂ ਹੈਗੀਆਂ ਜਿਹੜੇ ਬੱਚਾ ਨੂੰ ਇੰਵੋਲਵ ਰੱਖਦੀਆਂ ਇਹ ਡਰਗਾਂ ਤੋਂ ਕਰਦੇ ਉਹੀ ਬੱਚੇ ਇਸ ਲਾਈਨ ਤੇ ਆ ਜਿਹੜੇ ਹਨਾ ਜਿਹੜੇ ਮਾਪੇ ਹਨਾ ਪਾਰਟਿਸਪੇਟ ਨਹੀਂ ਕਰਦੇ ਆਪਣੇ ਬੱਚਿਆਂ ਨਾਲ ਆਪਣੇ ਦੂਜੀ ਗੱਲ ਆਪਣੇ ਜਰੋਨ ਬੱਚੇ ਹੁਣ 14-15 ਸਾਲਾਂ ਦੇ ਹੁੰਦੇ ਹੋ ਜਾਂਦੇ ਉਦੋਂ ਤੋਂ ਸ਼ੁਰੂ ਹੁੰਦੀ ਹੈ ਪ੍ਰੋਬਲਮਸ ਕਿ ਆਪਨੇ ਗ੍ਰੋਇੰਗ ਹੋਣਾ ਚਾਹੀਦਾ ਆਪਣੇ ਬੱਚੇ ਕੀ ਕਰਦੇ ਆ ਆਲਸੋ ਯੂ ਬੱਚਿਆਂ ਨਾਲ ਰਹਿੰਦੇ ਆ ਜਿਸ ਦੇ ਫਰੈਂਡਲੀ ਨਾਮੇ ਬੱਚੇ ਬੱਚਿਆਂ ਦੇ ਫਰੈਂਡਲੀ ਬਣਦੇ ਆ ਉਹ ਕੌਣ ਆ ਉਹਨਾਂ ਨੂੰ ਤਾਂ ਤਾਂ ਇਨਬਾਈਟ ਨੂੰ ਬਚਾੜ ਉਹਨਾਂ ਨੂੰ ਪਤਾ ਹੋਵੇ ਤੁਹਾਡੇ ਪਤਾ ਬੱਚੇ ਆਪਣੇ ਤੁਹਾਡੇ ਬੱਚਾ ਆ ਆਲਸੋ ਅਕਾਉਂਟੇਬਿਲਟੀ ਹੈਗੀ ਆ ਬੱਚੇ ਬਾਹਰ ਜਾਂਦੇ ਆ ਰਾਤਾਂ ਨੂੰ ਜੀ ਅੱਧੀ ਰਾਤ ਬਾਹਰ ਜਾਂਦੇ ਤੁਸੀਂ ਅਕਾਉਂਟੇਬਲ ਬਣਾ ਕਿ ਜਾਂਦੇ ਕਿਹਦੇ ਕੋਲ ਜਾਂਦੇ ਆ ਜਦੋਂ ਇਸ ਉਮਰ ਦੇ ਬੱਚੇ 14 15 ਸਾਲਾਂ ਦੇ ਹੋ ਜਾਂਦੇ ਆ ਲੀਸਟ ਆਪਾਂ ਨੂੰ ਉਹਨਾਂ ਨੂੰ ਵੈਲਿਊ ਆਫ ਮਨੀ ਚਾਹੀਦੀ ਆ ਆਪਾਂ ਨੇ ਕਿਉਂ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਪੈਸਿਆਂ ਦਾ ਕੀਮਤ ਨਹੀਂ ਪਤਾ ਵੀ ਕਿੱਦਾਂ ਹੁੰਦੇ ਆ ਜੌਬਸ ਲੋ 14-15 ਸਾਲਾਂ ਦੇ ਬੱਚੇ ਨਾ ਟਰੱਗਾਂ ਤੋਂ ਨਾ ਸਾਡੇ ਗਾਂਵਾਂ ਤੋਂ ਤੇ ਆਪਣੀ ਜਿਹੜੀ ਸੱਚੀ ਸੁੱੱਚੀ ਹੈ ਆਪਣੀ ਗੁਰੂ ਨਾਨਕ ਦੇ ਮਹਾਰਾਜ ਨੇ ਸਿਖਾੜੀ ਆਪਾਂ ਕਰਨੀ ਉਹ ਸਿਖਾੜੀ ਆ ਬੱਚਿਆਂ ਨੂੰ ਇਹ ਮੇਰੇ ਆਪਣੇ ਤੇ ਆਉਤੋ ਅਮ ਨਾ ਸਮਝਦਾ ਆਪਣੇ ਮਾਪਿਆਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਬਾਏ ਕਰਨਾ ਹਜ਼ਾਰ ਦਾ ਅਧਿਕਾਰ ਲਾ ਦਿੰਦੇ ਤੇ ਉਹ ਬੱਚਾ ਫਿਰ ਉਹਨਾਂ ਨੇ ਕੰਮ ਹੁੰਦਾ ਨਹੀਂ ਉਹ ਸਮਝਦਾ ਪੈਸੇ ਫ੍ਰੀ ਆਉਂਦੇ ਆ ਤੇ ਉਹ ਜਿਹੜੀ ਏਨ ਕਰਨ ਦੀ ਕਿਰਤ ਕਰਨ ਦੀ ਆਪਾਂ ਜਿਹੜੀ ਗੁਨਾਹ ਹੈਗੇ ਆ ਉਹ ਨਹੀਂ ਆਪਾਂ ਸਿਖਾਉਦੇ ਬੱਚਿਆਂ ਨੂੰ ਸੋ ਇਹ ਚੀਜ਼ ਆਪਾਂ ਨੂੰ ਹੁਣ ਆਪਾਂ ਨੂੰ ਲਰਨ ਕਰਨ ਦੀ ਲੋੜ ਹੈਗੀ ਆ ਜਿਹੜੇ ਆਪਣੇ ਪੇਰੈਂਟਸ ਹੈਗੇ ਆ ਵੀ ਆਪਾਂ ਨੂੰ ਵੀ ਕੁਐਸਚਨ ਹੈ ਸਕੂਲ ਆ ਪੜਨਾ ਚਾਹੀਦਾ ਵੀ ਕਿੱਦਾਂ ਪੇਰੈਂਟਸ ਕਿੱਦਾਂ ਬਣੀ ਬਣੀਦਾ ਪੇਰੈਂਟਸ ਕਿੱਦਾਂ ਐਫੀਸ਼ੀਐਂਟ ਪੇਰੈਂਟਸ ਬਣੀਦਾ ਕਿਵੇਂ ਸ਼ੁਰੂਆਤ ਚੀਜ਼ ਆ ਇਹ ਕੇਵਲ ਤੇ ਕੇਵਲ ਮਾਪਿਆਂ ਤੋਂ ਪਹਿਲਾਂ ਸ਼ੁਰੂ ਹੋਣੀ ਆ ਆਪਾਂ ਜਿੰਨਾ ਮਰਜ਼ੀ ਪੁਲਿਸ ਬਣਿਆ ਨੂੰ ਆਪਾਂ ਅਟੈਂਪਟ ਕਰੀਏ ਵੀ ਕਿਸੇ ਨੂੰ ਸਾਡੀ ਹੈਲਪ ਕਰ ਦਿਓ ਜਾਂ ਹੋਰ ਕਮਿਊਨਿਟੀ ਜਾਣਕਾਰੀ ਆਪਾਂ ਹੀ ਜਾਣਦੇ ਹੁੰਦੇ ਆਪਣੇ ਠੀਕਾ ਵੀਰ ਵੱਡੇ ਹੋਏ ਹੋ ਤੁਹਾਨੂੰ ਪਤਾ ਹੈ ਮਾਪਿਆਂ ਦਾ ਵੀ ਇਹ ਵੀ ਕੋਈ ਤੰਬੂ ਰੂਲ ਨਹੀਂ ਹੈ ਕਿ ਮਾਪਿਆਂ ਨੂੰ ਹੀ ਸਾਰਾ ਪਤਾ ਤੇ ਮਾਪਿਆਂ ਦੀ ਵਜ੍ਹਾ ਕਰਕੇ ਬੱਚੇ ਖਰਾਬ ਹੁੰਦੇ ਆ ਓਬਵੀਅਸਲੀ ਜੇ ਦੇ ਵਿੱਚ ਦੋ ਹਜ਼ਾਰ ਦੀ ਆ ਕੋਈ ਦੀ ਆ ਤੇ ਬੱਚਾ ਨੇ ਜਾਣਾ ਚਾਹੁੰਦਾ ਜਿੰਮ ਤਾਂ ਉਹ ਮਾਪਿਆਂ ਦੀ ਬੱਚਾ ਖਰਾਬ ਹੋ ਜਾਊਗਾ ਪੱਕੀ ਕੋਈ ਰੂਲਿੰਗ ਨਹੀਂ ਕਿ ਗੱਲ ਗੜਬੜ ਹੁੰਦੀ ਕਿਵੇਂ ਯੈਸ ਸਭ ਤੋਂ ਵੱਡਾ ਰੋਲ ਮਾਡਲ ਪੇਰੈਂਟਸ ਨੇ ਕਰੇ ਪੇਰੈਂਟਸ ਨੂੰ ਦੇਖ ਕੇ ਬੱਚਾ ਰਾਹ اختیار ਕਰਦਾ ਪਰ ਇਸ ਨੂੰ ਸੋਚਣ ਲਈ ਇਸ ਨੂੰ ਗੁਰੂਤਬੰਦੀ ਕਰਨ ਦੇ ਲਈ ਇੱਕ ਫਾਰਮ ਰੱਖਿਆ ਗਿਆ ਕੱਲ ਨੂੰ 9:30 ਵਜੇ ਗੁਰੂ ਗ੍ਰੰਥ ਉਸ ਦੇਵ ਕਮੇਟੀ ਉਸ ਇਸ ਕਮੇਟੀ ਦਾ ਹਿੱਸਾ ਰਹੇ ਨੇ ਧੰਨਵਾਦ ਹੈ ਉਹਨਾਂ ਨੇ ਆਪਣੀ ਖੁੱਲ ਕੇ ਇਸ ਦੀ ਕੀਤੀ ਹੈ ਤੇ ਇੱਕ ਮੈਂ ਬੇਨਤੀ ਕਰਦਾ ਕਮੇਟੀ ਦੇ ਕੋਈ ਵੀ ਕਨਫਲਿਕਟ ਹੋ ਸਕਦੇ ਆ ਔਰ ਰਹੇ ਨੇ ਕਮੇਟੀਆਂ ਦੇ ਪਰ ਜਦ ਕੋਈ ਕਮੇਟੀ ਦਾ ਮੈਂਬਰ ਜਾਂ ਕਮੇਟੀ ਦਾ ਪ੍ਰਾਧਾਨ ਇਨੀਸ਼ੀਏਟਿਵ ਕੋਈ ਲੈਂਦਾ ਹੈ ਉਸ ਦੇ ਬਾਰੇ ਸੋਸ਼ਲ ਮੀਡੀਆ ਤੇ ਜਾਂ ਉਸ ਦੀ ਤੇ ਗਲਤ ਲਿਖਣਾ ਨੇ ਉਹ ਕਮਿਊਨਿਟੀ ਦੇ ਲਈ ਕੰਮ ਕਰਨ ਦੇ ਲਈ ਤੁਸੀਂ ਸਿਰ ਜੋੜ ਕੇ ਬੈਠਣਾ ਜੇ ਤੁਹਾਡੀ ਲੜਾਈ ਕਮਿਊਨਿਟੀ ਦੇ ਵਿੱਚ ਆ ਕੇ بڑੂਗੀ ਉਹ ਕਮਿਊਨਿਟੀ ਲਈ ਮਾੜੀ ਹੈ ਤੇ ਤੁਹਾਡਾ ਆਪਸ ਵਿੱਚ ਕੋਈ ਵੀ ਕਿਸੇ ਵੀ ਸੋਸਾਇਟੀ 'ਚ ਇੱਕ ਜਗ੍ਹਾ ਨਹੀਂ ਬਹੁਤਾ ਚ ਕੋਈ ਵੀ ਰੌਲਾ ਪਰ ਬੱਚੇ ਸਾਰਿਆਂ ਦੇ ਸਾਂਝੇ ਨੇ ਉਹਨਾਂ ਲਈ ਆਪਾਂ ਕੰਮ ਕਰੀ ਥੈਂਕ ਯੂ ਜਗਿੰਦਰ ਸਿੰਘ ਜੀ ਇਹਦਾ 파ਟ ਹੋਇਓ ਤੁਸੀਂ ਪਲੀਜ਼ ਮੈਂ ਕੱਲ ਇਸੇ ਦੇ ਵਿੱਚ ਕਰਦਾ ਕੱਲ ਜਿਹੜੀਆਂ ਲਿਬਰਲ ਸਰਕਾਰ ਲੋਕਲ ਦੇ ਬਿਲੀਅਨ ਡਾਲਰ ਦੀ ਗੱਲਬਾਤ ਆਡੀਟਰ ਜਨਰਲ ਨੇ ਦੱਸੀ ਕਿ ਜਿਹੜੀ ਆ ਸਰਕਾਰ ਨੇ ਵੇਚ ਦਿੱਤੀਆਂ ਤੇ ਅਗਲੀਆਂ ਵੇਚਣ ਜਾ ਰਹੀ ਹੈ ਉਹਦੇ ਵਿੱਚ ਹੀ ਸਭੀ ਦੇ ਵਿੱਚ ਯਾਦ ਹੋਏਗਾ ਇੱਕ ਫੋਟੋ ਜੇ ਮੇਰੇ ਯਾਦ ਹੈ ਡਗ ਉਸ ਸਮੇ ਮੇਅਰ ਸਨ ਇੱਕ ਜਗ੍ਹਾ ਟੱਕ ਲਾਉਂਦੇ ਸੀ ਉਹ ਨਵਾਂ ਗੁਰਦੁਆਰਾ ਆਪਣੇ ਨਵਾਂ ਹਸਪਤਾਲ ਬਣਾਉਣ ਦੀ ਗੱਲ ਗੁਰਦਾਰ ਸਾਹਿਬ ਤਾਂ ਪਹਿਲਾਂ ਹੀ ਬਹੁਤ ਨੇ ਹਸਪਤਾਲ ਬਣਾਉਣ ਦੀ ਗੱਲ ਚੱਲ ਰਹੀ ਸੀ ਜ਼ਮੀਨ ਉਸ ਸਮੇ ਐਨਡੀਪੀ ਦੀ ਸਰਕਾਰ ਪਤਾ ਨਹੀਂ ਕਿਹਦੀ ਸੀ ਉਸਨੇ ਖਰੀਦੀ ਸੀ ਜ਼ਮੀਨ ਸੀਰੀਅਲ 152 ਤੇ ਜੰਨੇ ਆ ਹਾਈਵੇ 10 ਤੋਂ ਉਰਲੇ ਬਣੇ ਜਾਂ YMC ਨੂੰ ਕਿੱਦੀ ਸੜਕ ਇੱਕ ਕੇ ਹਾਈਵੇ 10 ਨੂੰ ਚੜਦੀ ਹੈ ਤੇ ਤੇ ਉੱਥੇ ਹੁਣ ਟਾਊਨ ਹਾਊਸਾਂ ਦੀ ਜਿਹੜੀ ਹੈ ਅਪਰੂਵਲ ਦੇ ਲਈ ਸਿਟੀ ਅਫਸਰੀ ਦਾ ਬੋਰਡ ਲੱਗ ਚੁੱਕਿਆ ਗੱਲ ਤੁਹਾਡੇ ਕਿਸੇ ਦੇ ਧਿਆਨ ਗੋਚਰੇ ਨਹੀਂ ਭੁੱਲ ਜਾਨੇ ਆਪਾਂ ਉਹ ਜ਼ਮੀਨ ਤੁਹਾਡੇ ਹਸਪਤਾਲ ਦੇ ਲਈ ਵਾਦਾ ਕੀਤਾ ਗਿਆ ਸੀ ਵੋਟਾਂ ਤੋਂ ਪਹਿਲਾਂ ਤੇ ਸ਼ਬਲਾਂ ਲਈ ਖੜਿਆਂ ਦੀਆਂ ਫੋਟੋਆਂ ਤੁਹਾਨੂੰ ਯਾਦ ਹੋਣੀਆਂ ਨੇ ਮੇਅਰ ਸਨ 12-15 ਸਾਲ ਪਹਿਲੀ ਗੱਲ ਆ ਕਿਤੇ ਸ਼ਾਇਦ ਤੇ ਐਨਡੀਪੀ ਦੀ ਸਰਕਾਰ ਸੀ ਇਹ ਉਹ ਜ਼ਮੀਨ ਖਰੀਦੀ ਗਈ ਸੀ ਸਰਕਾਰ ਵੱਲੋਂ ਸਰੀ ਦੇ ਵਿੱਚ ਨਵਾਂ ਹਸਪਤਾਲ ਬਣਾਉਣ ਲਈ ਉਹ ਵੀ ਜ਼ਮੀਨ ਜਿਹੜੀ ਗਈ ਡਿਵੈਲਪਰਾਂ ਨੂੰ ਇਹ ਆਡੀਟਰ ਜਨਰਲ ਦੀ ਜਿਹੜੀ ਉਸ ਦਿਨ ਦੀ ਰਿਪੋਰਟ ਜਿਹੜੀ ਓਨਾ ਨੂ ਮਿਲੀ ਤੇ ਉਹਦੇ ਵਿੱਚ ਲਿਖਿਆ ਹੋਇਆ ਵੀ 800 ਮਿਲੀਅਨ ਦੀ ਫਲਾਣੀ ਜਗ੍ਹਾ 300 ਮਿਲੀਅਨ ਦੀ ਫਲਾਣੀ ਜਗ੍ਹਾ ਉਹ ਤੋਂ ਬਾਅਦ ਕੰਟਰੈਕਚੁਅਲ ਜਿਹੜੀਆਂ ਆਬਲੀਗੇਸ਼ਨਸ ਨੇ ਬੀਸੀ ਫੈਰੀ ਦੀ ਐਨੀ ਸਕੂਲਾਂ ਦੀ ਮੈਡੀਕਲ ਦੀ ਐਨੀ ਬਿਲੀਅਨ ਡਾਲਰ ਦੀ ਸ਼ਾਇਦ ਬੀਸੀ ਹਾਈਡਰੋ ਦੀ ਹੈ ਕਈ ਵਾਰ ਹੁੰਦਾ ਜਾਂਦੇ ਜਾਂਦੇ ਜਿਵੇਂ ਪੰਜਾਬ ਦੇ ਵਿੱਚ ਖਜ਼ਾਨੇ ਖਾਲੀ ਨੇ 6-6 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਕਈ ਵਾਰ ਇੰਉਂ ਵੀ ਹੁੰਦਾ ਹੈ ਤੇ ਜਾਂਦੇ ਆ ਤੇ ਗੱਲ ਦੇ ਵਿੱਚ ਪਾ ਸਾਰਾ ਸਿਆਪਾ ਜੇ ਆਪਾਂ ਜਾਣ ਲੱਗੇ ਆ ਤੇ ਆਪੇ ਹੀ ਅਗਲੇ ਖੜਜੀ ਜਾਣਗੇ 5-7 ਸਾਲ ਜਾਂ ਹਲੇ ਚਲੋ ਸਿੱਧ ਤਾਂ ਕੋਈ ਨਹੀਂ ਗੱਲ ਕੀਨੇ ਪਰ ਇਹ ਚੀਜ਼ਾਂ ਚੱਲਦੀਆਂ ਉਹ ਜ਼ਮੀਨ ਜਿਹੜੀ ਜਿਹਦੇ ਤੇ ਸੋਡਾ ਹਸਪਤਾਲ ਸ਼ਹਿਰ ਦਾ ਬਣਨਾ ਸੀ ਜਿਹੜਾ ਕਿ ਸਾਡੇ ਲਈ ਬਹੁਤ ਛੋਟਾ ਹਸਪਤਾਲ ਆ ਉਹਦੇ ਚ ਟਾਵਰ ਬਣਾ ਦਿਓ ਜੀ ਉਹਦੇ ਚ ਇਹ ਬਣਾ ਦਿਓ ਬੱਸ ਦੇ ਵਿੱਚ 52 ਸੀਟਾਂ ਦੀ ਜਗ੍ਹਾ 74 ਸੀਟਾਂ ਬਣਾ ਲੋਂਗੇ ਲੋਕ ਵੜਤਾ ਜਾਣਗੇ ਪਰ ਸਾਰਾ ਪਿੰਡ ਨਹੀਂ ਬਹਿਣ ਲੱਗਿਆ ਗੋਡੇ ਫੱਜ ਨਾ ਨਿਕਲ ਹੋਣਾ ਇਉਂ ਹੈਲੀਕਾਪਟਰ ਉਤਰੂ ਜੀ ਇੱਥੋਂ ਐਂ ਇੱਥੋਂ ਐਂ ਬੜੋਂਗੇ 5-5 ਜਾਂ 8 ਡਾਲਰ ਘੰਟੇ ਦੀਆਂ ਦੋ ਅੱਧੇ ਅੱਧੇ ਘੰਟੇ ਦੀਆਂ ਦੋ ਪਾਰਕਿੰਗ ਅੰਦਰ ਬੇਬੇ ਦੇ ਦਰਦ ਹੁੰਦਾ ਉਧਰ ਬਾਹਰ ਪੈਸੇ ਮੁੱਕ ਦਿਆ ਬਾਹਰ ਨੂੰ ਭਜਦਾ ਕਰੇ ਅਰ ਫੋਟੋਆਂ ਵੇਖਦਾ ਅਗਲਾ ਉੱਥੇ ਬੈਠੇ ਜਾਂਦੀਆਂ ਇਹ ਕਮਿਊਨਿਟੀ ਨੇ ਮਿਲੀਅਨਸ ਆਫ ਡਾਲਰ ਆ ਜਗਾ ਲਈ ਦਿੱਤੇ ਨੇ ਤੇ ਇਥੇ ਆ ਹਾਲ ਸਾਡਾ ਅੱਗੇ ਜਿਹੜੀ ਵੱਡੀ ਅੱਜ ਦੀ ਖਬਰ ਐ ਤੁਹਾਨੂੰ ਯਾਦ ਆ ਵੀ ਆਇਲ ਆਫ ਮੈਨ ਦੀ ਇੱਕ ਗੱਲ ਆਪਾਂ ਕਰਦੇ ਰਹੇ ਸੀ ਕੇ ਪੀ ਐਮ ਜੀ ਇੱਕ ਬਹੁਤ ਵੱਡੀ ਕੰਪਨੀ ਐ ਜਿਸ ਦੇ ਵਿੱਚ ਇੱਕ ਵਿਕਟੋਰੀਆ ਦੇ ਪਰਿਵਾਰ ਦਾ ਜਿਹੜਾ ਟੈਕਸ ਕ੍ਰੈਡਿਟ ਲੈ ਰਿਹਾ ਇੱਥੇ ਉਹਨਾਂ ਦੇ ਫੰਡਿੰਗ ਦੀ ਗੱਲ ਸੀਬੀਸੀ ਨੇ ਲੱਭੀ ਉਹਨੋਂ ਸੇ ਹੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਵਾਂ ਲੱਭਿਆ ਵੀ ਕੇਪੀਜੀ ਕੇਮੇ ਲੱਖਾਂ ਡਾਲਰਾਂ ਦੀ ਫੀਸ ਲੈ ਤੇ ਲੈ ਕੇ ਜਾਂਦੀ ਆ ਹਜ਼ਾਰ ਲਈ ਆਡੀਟਰ ਦਰਾਂ ਚ ਆ ਕੇ ਬਹਿਣ ਦਾ ਵੀ ਲਿਆ 5 ਡਾਲਰ ਦੀ ਜਿਹੜੀ ਕਾਫੀ ਪੀਤੇ ਉਹਦੀ ਸੀਟ ਕੱਟ ਨਹੀਂ ਤਾਂ ਮੈਂ ਇਹਦੇ ਚ ਕੱਢਦਾ ਆ ਗਿਆ ਫੋਨ ਕਰੇ ਕਿਸੇ ਦਾ ਆਡਿਟ ਕਰੇ ਕਿਸੇ ਦਾ ਇੱਕ ਘਰ ਦੋ ਘਰ ਬਣਾਉਣ ਵਾਲਿਆਂ ਦੀਆਂ ਜਿਹੜੀਆਂ ਉਹਨਾਂ ਦੀ ਬਸ ਕਰਾਈ ਪਈ ਐ ਤੇ ਜਿਹੜੇ ਆ ਬਿਲੀਅਨਸ ਆਫ ਡਾਲਰ ਬਾਹਰ ਨੇ ਬਾਰੇ ਫਿਰ ਇਹੀ ਰੈਵਨਿਊ ਕੈਨੇਡਾ ਦੇ ਦਿੰਨੇ ਆ ਤੁਹਾਨੂੰ ਨੇ ਨਾ ਫਰਕ ਨਹੀਂ ਪੈਣਾ ਰੈਵਨਿਊ ਕੈਨੇਡਾ ਲੱਖ ਡਾਲਰ ਲੈ ਕੇ ਇਹ ਬਿਲੀਨੀਅਰ ਲੋਕਾਂ ਦੀ ਜਿਹਦੀ ਮਿਨੀਮਮ ਇਨਵੈਸਟਮੈਂਟ 5 ਮਿਲੀਅਨ ਐ ਆਫਸ਼ੋਰ ਕੰਪਨੀ ਸਟਰਕਚਰ ਜਿਹੜੀ ਬਣਦੀ ਆ ਉਹਦੇ ਵਿੱਚ ਅੰਟਾਇਰ ਯੂ ਦੈਟ ਬਿਲੀਨਰ ਆ ਵਿਕ ਉਸਦੀ ਕੰਪਨੀ ਐ ਐਸਕੇਐਚ ਉਸ ਤੋਂ ਬਾਅਦ ਅਲੱਗ ਅਲੱਗ ਕੰਪਨੀ ਐ ਜਿਹੜੀਆਂ ਇਹਦੇ ਵਿੱਚ ਹੀ ਗੈਸ ਇਨਵੈਸਟਮੈਂਟ ਐ ਜਿਹਦੇ ਹੋਰ ਨਿਊਰੋਲੋਜਿਸਟ ਡੇਵਿਡ ਉਸਦੀ ਇੱਕ ਕੰਪਨੀ ਬਿਊਰਮ ਲਿਮਟਿਡ ਐ ਤੇ ਜਿਹੜੀ ਬਰਡ ਫੈਮਲੀ ਦੀ ਆ ਜਿਹੜੀ ਕੈਂਡੀ ਕੰਪਨੀਆਂ ਵੀ ਨਹੀਂ ਪੈਕ ਦੇ ਵਿੱਚ ਇਸ ਤਰ੍ਹਾਂ 7-8 ਕੰਪਨੀਆਂ 10 ਗੱਡੀਆਂ ਇੱਕ ਗੈਫਰ 40 ਗੈਫਰ 40 ਲਿਮਟਿਡ ਜਿਹਦੇ ਵਿੱਚ ਸਰੀਦਾ ਬਿਜਨਸਮੈਨ ਲਿਓਨਾਰਡ ਮੈਟਕੈਫ ਉਹਦਾ ਡਾਇਰੈਕਟਰ ਹੈ ਤੇ ਇਸ ਤਰ੍ਹਾਂ ਹੀ ਇਸ ਗੱਦੇ ਇਹ ਕੇਪੀਐਮਜੀ ਨੇ ਸੈੱਟ ਕੀਤੇ ਉਹਨੇ ਅਕਾਊਂਟ ਲੱਖਾਂ ਡਾਲਰ ਉਹ ਫੀਸ ਲੈਂਦੇ ਆ ਤੇ ਬੈਠੇ ਰਹੋ ਉਥੋਂ ਹੌਲੀ ਹੌਲੀ ਲਿਆ ਕੇ ਭੋਰ-ਪੋਰ ਖਾਈ ਚੱਲੋ ਨਾ ਟੈਕਸ ਨਾ ਕਹਾਣੀ ਨਾ ਕੋਈ ਬਹੁਤ ਵੱਡੀ ਇਨਕੁਆਰੀ ਦੀ ਬਹੁਤ ਵੱਡੀ ਇਨਵੈਸਟੀਗੇਸ਼ਨ ਦੀ ਤੇ ਜ਼ਰੂਰਤ ਹੈ ਸੀਬੀਸੀ ਨੇ ਆਪਣਾ ਕੰਮ ਕਰ ਦਿੱਤਾ ਹੈ ਰੈਵਨਿਊ ਕੈਨੇਡਾ ਹੁਣ ਕਰੇਗਾ ਇਹ ਵਕਤ ਦੱਸੂਗਾ ਇਹ ਖਾਸ ਗੱਲ ਇਹ ਜਿਹੜਾ ਪਹਿਲਾ ਨੌਏ ਬਿਲੀਨਰ ਹਨ ਟੈਰੀਓ ਦਾ ਟੈਰੀਓ ਅਵਾਰਡ ਵੀ ਮਿਲਿਆ ਹੈ ਬਿਜ਼ਨਸ ਦੇ ਵਿੱਚ ਇਹ ਕੈਨੇਡਾ ਜਿਹੜੀ ਰੈਵਨਿਊ ਹੈ ਉਹ ਮਿਨਿਸਟਰੀ ਦੀ ਵੀ ਗੱਲ 2012 ਦੇ ਵਿੱਚ ਜਦੋਂ ਇਹ ਗੱਲ ਚੱਲੀ ਸੀ ਚੱਲਦੀ ਸੀ ਕਿ ਅਸੀਂ ਕਲਾਇੰਟਸ ਨੂੰ APM جی ਜੀ وڈی فرم ہے تے بہت تکڑے ا دے کول وکیل نے اے فڑی دے نہیں او کہہ دے وی اسی انہاں نوں معافی دے دنے تے جڑا قصاڈا بندا جننا وی بندا اوناں کے دے دیو آ گل ہے سب اے الگ ਤੇ ਆਈਲੋ ਮੈਂ ਨੇ ਕੋ ਉਥੇ ਕੱਖ ਨਹੀਂ ਸਕਾਟਿਸ਼ ਆਈਲੈਂਡ ਛੋਟੀ ਜੀ ਤੇ ਉਥੇ ਰੱਖ ਕੇ ਪੈਸੇ ਤੇ ਉਥੋਂ ਫਿਰ ਵਾਪਸ ਹੌਲੀ ਹੌਲੀ ਹੌਲੀ ਹੌਲੀ ਆਪਣਾ ਜਿੰਨੀ ਜ਼ਰੂਰਤ ਆ ਉਥੋਂ ਟ੍ਰਾਂਸਫਰ ਕਰੀ ਜਾਂਦੇ ਆ ਨੇ ਬਹੁਤ ਪੈਸਾ ਢੇਲਾ ਵੇਖਣ ਵਾਲੇ ਨੇ ਤੇ ਇੱਥੇ ਆਮ ਕਨੇਡੀਅਨ ਵੀ 50 ਹਜ਼ਾਰ ਲੱਖ ਕਮਾਉਣ ਵਾਲਿਆਂ ਦੇ ਪਿੱਛੇ ਉਤਰੇ ਫਿਰਦੇ ਆ ਕੱਢ ਆਡਿਟ ਲਿਆ ਤੇਰੀ ਟ੍ਰਾਂਸਪੋਰਟ ਕੰਪਨੀ ਚ ਬੈਠਾਂਗੇ ਹੁਣ 5 ਮਹੀਨੇ ਆਹ ਲਿਆ ਰਸੀਦ ਆਹ ਲਿਆ ਰਸੀਦ ਤੇ ਮੁੜ ਕੇ ਲੋਕ ਨੇ ਪਰ ਇਹ ਵੱਡੇ ਜਿਹੜੇ ਆ ਨੂੰ ਖਾ ਰਹੇ ਨੇ ਇਹ ਆਪਣੇ ਪੈਸੇ ਲੈ ਕੇ ਕੱਢ ਕੇ ਲੈ ਜਾਂਦੇ ਆ ਤੇ ਕੋਈ ਨਹੀਂ ਉੱਥੇ ਪੁੱਛਦਾ ਰਸ਼ੀਆ ਦੇ ਨਾਲ ਸਬੰਧਾਂ ਨੂੰ ਲੈ ਕੇ ਡੋਨਲਡ ਟਰੰਪ ਦੀ ਕੈਬਨਿਟ ਦੇ ਵਿੱਚੋਂ ਬੰਦੇ ਜਿਹੜੇ ਨੇ ਉਹ ਫਸਲੇ ਨੇ ਟਾਉਨੀ ਜਨਰਲ ਸੈਸ਼ਨ ਤੇ ਹੁਣ ਬੜਾ ਕੀੜਾ ਚੜਿਆ ਹੋਇਆ ਪਰ ਪਿੱਠ ਤੇ ਆ ਕੇ ਦੋਨੇ ਟਰੰਪ ਖੜ ਗਿਆ ਉਹ ਕਹਿੰਦਾ ਨਾ ਕੋਈ ਗੱਲ ਨਹੀਂ ਹੋਈ ਜਦ ਸੈਸ਼ਨ ਨੇ ਜਦ ਕਨਫਰਮੇਸ਼ਨ ਕਮੇਟੀ ਦੇ ਅੱਗੇ ਪੇਸ਼ ਹੋਏ ਤਾਂ ਉੱਥੇ ਸੌਂ ਖਾ ਕੇ ਬਿਆਨ ਦਿੱਤਾ ਕਿ ਮੇਰੀ ਰਸ਼ੀਅਨ ਬੰਦਿਆਂ ਨਾਲ ਕਿਸੇ ਨਾਲ ਗੱਲ ਨਹੀਂ ਹੋਈ ਤੇ ਉਹ ਗੱਲਾਂ ਸਾਹਮਣੇ ਆ ਰਹੀਆਂ ਕਿ ਐਮਬੈਸਡਰ ਰਸ਼ੀਅਨ ਐਮਬੈਸਡਰ ਨੂੰ ਮਿਲਦਾ ਰਿਹਾ ਉਸੇ ਸਮੇਂ ਦੇ ਵਿੱਚ ਜਦ ਕੈਂਪੇਨ ਚੱਲ ਰਹੀ ਸੀ ਤੇ ਹੁਣ ਉਸ ਕੈਂਪੇਨ ਦੇ ਵਿੱਚ ਰਸ਼ੀਅਨ ਬੰਦਿਆਂ ਦਾ ਕੀ ਲੈਣਾ ਦੇਣਾ ਸੀ ਤੇ ਕੀ ਕਰਨੀ ਦੇ ਵਿੱਚ ਇਹ ਚੀਜ਼ਾਂ ਤਾਂ ਨਹੀਂ ਹੋਈਆਂ ਪਰ ਇਹ ਗੱਲ ਦੇਸ਼ ਭਗਤੀ ਦੇ ਤੌਰ ਤੇ ਰਿਪਬਲਿਕਨ ਵੀ ਕੋ ਸੈਨੇਟਰ ਡੈਮੋਕ੍ਰੇਟਸ ਦੇ ਨਾਲ ਰਲ ਗਏ ਵੀ ਇਹ ਤਾਂ ਗੱਲ ਮਾੜੀ ਹੈ ਰਸ਼ੀਆ ਨਾਲ ਸਾਡਾ ਕੀ ਸੰਬੰਧ ਹੈ ਤੇ ਰਸ਼ੀਆ ਦੇ ਨੇੜੇ ਇਹ ਬੰਦੇ ਕਿਉਂ ਨੇ ਹੁਣ ਵੇਖਦੇ ਆ ਇਹ ਉਹਦੀ ਇਨਕੁਆਰੀ ਚੱਲਣੀ ਹੈ ਇਨਕੁਆਰੀ ਕਰਨੀ ਹੈ ਜਸਟਿਸ ਡਿਪਾਰਟਮੈਂਟ ਨੇ ਜਸਟਿਸ ਡਿਪਾਰਟਮੈਂਟ ਕਿਹਦੇ ਅੰਡਰ ਹੈ اٹਾਰਨੀ ਤੇ ਐਫਬੀਆਈ ਇਹਦੇ ਵਿੱਚ ਐਫਬੀਆਈ ਪਾਰਸ਼ਲੀ ਜਸਟਿਸ ਡਿਪਾਰਟਮੈਂਟ ਦੇਥੋਂ ਨੇ ਅਵੈਂਚੂਅਲੀ ਨੇ ਜਾਂ ਫਾਈਲ ਕਿਸੇ ਨੂੰ ਚਾਰਜ ਕਰਨਾ ਤਾਂ ਹੀ ਗੱਲਾਂ ਉੱਥੇ ਅਦਾਲਤ 'ਚੋਂ ਗੱਲਾਂ ਚੱਲਣੀ ਹੁਣ ਉਹ ਸਾਈਡ ਹੁੰਦੇ ਆ ਜਾਂ ਨਹੀਂ ਇਹ ਹਾਲੇ ਨਹੀਂ ਪਤਾ ਲੱਗਿਆ ਲੋਕਲ ਖਬਰਾਂ ਵਰ ਫੇਰ ਆਈ ਹੈ ਜੱਜ ਦਾ ਬਹੁਤ ਕਚੀਰਾ ਹੋ ਰਿਹਾ ਹੈ ਜਿਹੜੇ ਹੈਲੀਫੈਕਸ ਦੇ ਜੱਜ ਨੇ ਅਲਰਾਵੀ ਛੱਡਿਆ ਸ਼ਰਾਬ ਪੀਤੀ ਹੋਈ ਦੇ ਵਿੱਚ ਸਹਿਮਤੀ ਉਸ ਸਤਰੀ ਕਹਿੰਦੇ ਦੇ ਸਕਦੀ ਜਿਹਨੂੰ ਗੱਡੀ 'ਚ ਬੈਠਣ ਦਾ ਪਤਾ ਹੀ ਨਹੀਂ ਨਾ ਉਹਨੂੰ ਉਤਰਨ ਦਾ ਪਤਾ ਤੇ ਉਹਦੀ ਸ਼ਰਾਬ ਐਨੀ ਪੀਤੀ ਸੀ ਅਲਰਾਵੀ ਨੇ ਬਿਨਾ ਉਸਦੀ ਮਨਜ਼ੂਰੀ ਤੋਂ ਉਹਦੇ ਨਾਲ ਧੱਕਾ ਕੀਤਾ ਪੁਲਿਸ ਨੇ ਉਸਨੂੰ ਫੜਿਆ ਰੰਗੇ ਹੱਥੀ ਫੜਿਆ ਤੇ ਉਹਦੇ ਬਾਅਦ ਵੀ ਬੰਦਾ ਛੁੱਟ ਗਿਆ ਜਦ ਜੇ ਇਸ ਗੱਲ ਤੇ ਆ ਗਿਆ ਵੀ दारू ਪੀਤੀ ਤੇ ਵੀ ਹਾਂ ਹੋ ਸਕਦੀ ਉਹਦੀ ਸਹਿਮਤੀ ਨਾਲ ਇਹ ਕੁਝ ਹੋਇਆ ਸਕਦਾ ਤੇ ਬੜੀ ਉਹਦੇ ਵਿੱਚ ਫਾਈਨ ਲਾਈਨ ਹੈ ਲਿਖਤਾ ਹੈ ਘੁਮਾ ਵਕੀਲ ਚੀਜ਼ਾਂ ਕੱਢ ਲੈਂਦੇ ਨੇ ਵੀ ਇਹਦਾ ਆ ਮਤਲਬ ਨਹੀਂ ਆ ਮਤਲਬ ਹੈ ਉਸ ਤੇ ਹੁੰਦੀ ਹੈ ਪੂਰੇ ਕਨਵਿਟ ਹੋਏ ਅਖੀਰ ਦੇ ਵਿੱਚ ਜਾ ਕੇ ਸਜ਼ਾਾਂ ਬਹੁਤ ਥੋੜੀਆਂ ਜਾਵੇ ਹੁਣ ਇਹਦੇ ਸਜਜ ਨੇ ਅਲਰਾਵੀ ਨੂੰ ਇਹ ਛੱਡਿਆ ਇਸ ਵਿਨਾ ਦੇ ਨਾਲ दारू ਪੀਤੀ ਹੋਈ ਦੇ ਵਿੱਚ ਧੱਕਾ ਕੀਤਾ ਹੋ ਸਹਿਮਤੀ ਦਿੱਤੀ ਹੋਉ ਉਹਨੂੰ ਅਲੋਅਰ ਕੀਤਾ ਹੋ ਇਸ ਤੋਂ ਅੱਗੇ ਫਰਦਰ ਇਨਵੋਲਵ ਫਰਦਰ ਇਨਵੋਲਵ ਹੋ ਗਏ ਤੇ ਪੁਲਿਸ ਨੇ ਰੰਗੇ ਹੱਤੀ ਫੜ ਲਏ ਤੇ ਬੰਦਾ ਛੁੱਟ ਗਿਆ ਸੈਕਸ਼ੂਅਲ ਸੌਲਟ ਕਿਉਂਕਿ 26 ਸਾਲ ਦੀ ਉਹ ਸੀ ਤੇ ਉਸ ਦੀ ਸਿਰਫ ਕੌਨਸੈਂਟ ਤੇ ਗੱਲ ਖੜੀ ਹੈ ਜੱਜ ਨੇ ਸ਼ੱਕ ਵੀ ਬਿਨਾ ਤੇ ਬੰਦਾ ਸ਼ਰਤਾਂ ਵੀ ਹਾਂ ਐਡਾ ਵੱਡਾ ਕੰਮ ਨਹੀਂ ਕਰ ਸਕਦਾ ਉਸ ਲੇਡੀ ਨੇ ਹਾਂ ਕੀਤੀ ਹੋ ਪਰ ਇਸ ਖਾਲ ਕੋਡ ਆਫ ਸਾਡਾ ਟੈਕਸੀ ਚਲਾਉਣ ਵਾਲੇ ਲੋਕਾਂ ਨੂੰ ਸਰਵਿਸ ਦੇਣ ਵਾਲੇ ਲੋਕਾਂ ਦੇ ਵਿੱਚ ਇਹ ਗੱਲਾਂ ਅਕਸਰ ਹੁੰਦੀਆਂ ਜਿਹੜੇ ਡਾਊਨ Town ਸ਼ਰਾਬੀ ਲੜਕੇ ਲੜਕੀਆਂ ਗੱਡੀਆਂ ਤੇ ਦੂਜੀ ਜਗ੍ਹਾ ਛੜਨਾ ਵਿਚਲੀਆਂ ਗੱਲਾਂ ਦਾ ਕੋਈ ਮਤਲਬ ਨਹੀਂ। ਹਾਲ ਰਾ ਵੀ ਹੋਣੀ ਦੇ ਵਿੱਚ ਫੜੇ ਗਏ ਤੇ ਫਿਰ ਛੜਤੇ ਜੱਜ ਦੇ ਖਿਲਾਫ ਅੱਜ ਬਹੁਤ ਗੱਲਾਂ ਹੋ ਰਹੀਆਂ ਸੋਸ਼ਲ ਮੀਡੀਆ ਤੇ ਵਪਾਰਕ ਸੰਦੇਸ਼ ਜੇ ਆਪ ਬਾਰਡਰ ਜਾਂ ਬਾਕਸ ਕੈਨੇਡਾ ਚਾਉਂਦੇ ਹੋ ਆਪਣਾ ਸੈੱਲ ਫੋਨ ਹੈ ਜਿਹੜਾ ਉਸ ਦਾ ਖਿਆਲ ਰੱਖੋ ਜਾਣ ਵੇਲੇ ਵੀ ਜਦ ਅਮਰੀਕਾ ਵਾਲੇ ਪਾਸੇ ਹੋ ਜੇ ਤੁਹਾਡੇ ਅਜਿਹਾ ਕੋਈ ਹੈ ਜਿਹੜਾ ਫੋਨ ਤੇ ਜੇ ਉਹਨਾਂ ਨੂੰ ਡਾਊਨਲੋਡ ਕਰ ਲੈਂਦੇ ਨੇ ਤੇ ਤੁਹਾਡੇ ਬਹੁਤ ਜ਼ਿਆਦਾ ਅਜਿਹਾ ਸਟੋਰੇਜ ਆ ਤੁਹਾਡੇ ਫੋਨ ਤੇ ਜਿਹਦੇ ਵਿੱਚ ਤੁਹਾਡੀ ਬੈਂਕ ਦੀ ਇਹ ਜਿਹੜੀਆਂ ਸਟੇਟਮੈਂਟਸ ਨੇ ਜਾਂ ਕੁਝ ਵੀ ਜਾਂ ਕੋਈ ਜਿਹੜਾ ਤੁਹਾਡਾ ਆਪਣਾ ਨਿੱਜੀ ਹੈ ਔਰ ਤੁਸੀਂ ਉਹਨਾਂ ਨੂੰ ਨਾ ਨਹੀਂ ਕਰ ਸਕਦੇ ਕੈਨੇਡਾ ਵਾਲੇ ਪਾਸੇ ਨੂੰ ਵੀ ਬਾਰਡਰ ਦਾ ਜਿਹੜਾ ਏਜੰਟ ਹੈ ਬਾਰਡਰ ਤੇ ਉਹ ਤੁਹਾਡਾ ਫੋਨ ਹੈ ਜਿਹੜਾ ਉਹ ਮੰਗ ਸਕਦਾ ਤੁਹਾਨੂੰ ਅਨਲੌਕ ਕਰਕੇ ਫੋਨ ਉਸੇ ਸਮੇਂ ਦੇਣਾ ਪੈਣਾ ਤੁਸੀਂ ਨੋ ਨਹੀਂ ਕਰ ਸਕਦੇ ਅੱਗੇ ਵੀ ਆਪਾਂ ਬਹੁਤ ਵਾਰ ਗੱਲ ਉਹ ਮੰਗ ਸਕਦਾ ਤੁਹਾਨੂੰ ਅਨਲੌਕ ਕਰਕੇ ਫੋਨ ਉਸੇ ਸਮੇਂ ਦੇਣਾ ਪੈਣਾ ਤੁਸੀਂ ਕਰ ਸਕਦੇ ਅੱਗੇ ਵੀ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਕਿ WhatsApp ਤੇ ਆਈਆਂ ਫਿਲਮਾਂ ਉਹਨਾਂ ਨੂੰ ਡਲੀਟ ਕਰੋ ਜਦ ਹੀ ਅਬਲਾ ਖੋਲੋ ਹੀ ਨਾ ਜੇ ਤੁਹਾਡਾ ਜਾਣ ਦੇ ਕਿਸੇ ਬੰਦੇ ਨੇ ਨਹੀਂ ਭੇਜੀ ਔਰ ਗਲਤੀ ਜੇ ਹਾਂ ਨਾ ਕਰ ਸਕੋ ਤੇ ਉਹਨੂੰ ਬਾਰਡਰ ਤੇ ਤੁਹਾਨੂੰ ਪ੍ਰੂਵ ਕਰਨਾ ਬਹੁਤ ਔਖਾ ਹੈ ਕਿ ਇਹ ਮੇਰੀ ਨਹੀਂ ਇਹ ਮੈਂ ਨਹੀਂ ਕ੍ਰੀਏਟ ਕੀਤੀ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਕੋਲ ਫੋਨ ਤੇ ਉਹਦੇ ਫੋਨ ਦੇ ਵਿੱਚ ਜਿਹਦੇ ਕਰਕੇ ਤੁਸੀਂ ਸ਼ੱਕ ਦੇ ਘੇਰੇ 'ਚੋਂ ਉਸ ਨੂੰ ਤੁਸੀਂ ਨਾ ਨਹੀਂ ਕਹਿ ਸਕਦੇ ਸੇਮ ਟੋਕਨ ਤੁਸੀਂ ਕੋਈ ਗਨ ਲੈ ਕੇ 에어ਪੋਰਟ ਤੇ ਚਲੇ ਜਾਓ ਤੁਸੀਂ ਕਹੋ ਜੀ ਇਹ ਗਨ ਮੇਰੀ ਨਹੀਂ ਹੈ ਤਾਂ ਕਿਸੇ ਨੇ ਰੱਖਤੀ ਗੱਡੀ 'ਚ ਕਿਸੇ ਨੇ ਨਹੀਂ ਸੁਣਨਾ ਗੰਢੀ ਤੁਹਾਨੂੰ ਆਪਣੀ ਚੈੱਕ ਕਰਨੀ ਪੈਣੀ ਆ ਜਾਣ ਤੋਂ ਪਹਿਲਾਂ ਜੇਬਾਂ ਆਪਣੀਆਂ ਵਾਲਟ ਆਪਣਾ ਕੁਝ ਵੀ ਜੇਹਾ ਨਾ ਹੋਵੇ ਜਿਹੜਾ ਤੁਸੀਂ ਸ਼ੱਕ ਦੇ ਘੇਰੇ ਚਾਹਮਤ ਤੁਹਾਨੂੰ ਖਾਲ ਲੈਣੋ ਖਾਸ ਤੌਰ ਫੋਨ ਇਹ ਕੈਨੇਡਾ ਵਾਲੇ ਪਾਸੇ ਨੂੰ ਵੀ ਕੈਨੇਡੀਅਨ ਜਿਹੜੇ ਦੇ ਸਾਡੇ ਏਜੰਟ ਹੈ ਉਹ ਵੀ ਤੁਹਾਡਾ ਫੋਨ ਹੁਣ ਅਮਰੀਕਾ ਵਾਲੇ ਪਾਸਿਓਂ ਆਉਂਦੇ ਸੋ ਲੈ ਲੈਂਦੇ ਆ ਵੀ 10 ਕੀ ਹੈ ਫੋਰਨਰਸ ਨੂੰ ਜਿਨ੍ਹਾਂ ਨੇ ਆ ਕੇ ਵੀਜ਼ਾ ਲੈਣਾ ਉਹ ਤਾਂ ਤੁਸੀਂ ਦੇਖਦੇ ਰਹਿੰਦੇ ਹੋ ਉਹਨਾਂ ਦਾ ਦੇ ਫੋਨ ਵੀ ਉਹ ਮੰਗ ਸਕਦੇ ਅੱਜ ਇਹ ਵੱਡੀ ਖਬਰ ਹੈ ਇੱਕ ਜੇ ਤੁਸੀਂ ਯੂ ਐਸ ਵਾਲੇ ਪਾਸੇ ਜਾਂਦੇ ਹੋ ਤੇ ਇੱਧਰ ਨੂੰ ਆਉਂਦੇ ਫੋਨ ਤੁਹਾਡੇ ਚੈੱਕ ਕੀਤੇ ਜਾ ਸਕਦੇ ਆ ਨਾਲ ਸੰਬੰਧਤ ਕੋਈ ਵੀ ਜੇ ਜਿਹੜੀ ਮੁਸ਼ਕਲ ਜਿਹੜੀ ਉਹਨਾਂ ਦੇ ਕਾਨੂੰਨ ਦੇ ਥੱਲੇ ਤੁਹਾਨੂੰ ਦੇਸ਼ ਦੇ ਵਿੱਚ ਆਉਣ ਤੋਂ ਵਰਜ ਸਕਦੀ ਹੈ ਜਾਂ ਤੁਹਾਡੇ ਤੇ ਚਾਰਜਸ ਲੱਗ ਸਕਦੇ ਨੇ ਉਹ ਤੁਹਾਨੂੰ ਕਰ ਸਕਦੇ ਆ ਦੇਸ਼ ਚ ਵੈਪਨ ਤੋਂ ਵੀ ਡੇਂਜਰਸ ਫੋਨ ਹੈ ਇਸ ਨੂੰ ਕਰਿਆ ਕਰੋ ਤੇ ਇਹਨੂੰ ਕਲੀਨ ਰੱਖਿਆ ਕਰੋ ਤੇ ਹਰ ਇੱਕ WhatsApp ਖੋਲਣ ਦੀ ਲੋੜ ਨਹੀਂ ਜਿਹੜਾ ਅਨਨੋਨ ਬੰਦੇ ਤੋਂ ਆਇਆ ਤੁਹਾਡੇ ਵਿੱਚ ਹੈ ਐਡਰੈਸ ਬੁੱਕ ਦੇ ਹਰੀ ਉਹਨੂੰ ਪਹਿਲਾਂ ਡਿਲੀਟ ਕਰੋ ਉਹਨੂੰ ਫੋਨ ਨੂੰ ਤੁਸੀਂ ਡਾਊਨਲੋਡ ਕਰੋਗੇ ਤੇ ਫਿਰ ਉਹਨੂੰ ਗੈਲਰੀ ਜਾ ਕੇ ਸਾਫ਼ ਲੈ ਲਓ ਤੇ ਆਪਣਾ ਕਰੋ ਰੇਟ ਪਰ ਵਧੀਆ ਲੈ ਲਿਓ ਕੱਲ ਮੈਂ ਤੁਹਾਨੂੰ ਕਿਹਾ ਸੀ ਵਧੀਆ ਤੁਹਾਡੇ ਦੋਸਤਾਂ ਲੱਗਣੇ ਆਗਲੇ ਹੁਣ ਸੈੱਟ ਕਰੋ ਆਪਣੇ ਰੇਟ ਵਧੀਆ ਪੈਸੇ ਲਓ ਤੇ ਵਧੀਆ ਪੈਸੇ ਕਮਾਓ ਜਿਵੇਂ ਆ ਝੜੀ ਲੱਗੀ ਹੋਈ ਆ ਨਾ ਪੰਜਾਬ ਦੇ ਪਿੰਡਾਂ ਚ ਆ ਮਹੀਨਿਆਂ ਚ ਜਦ ਬਲਦ ਭਜਦੇ ਸੀ ਹੁਣ ਪੂਰ ਖਤਮ ਹੋ ਗਿਆ ਹੁਣ ਤਾਂ ਛੋਟੇ ਛੋਟੇ ਛੋਟੇ ਬਲਦ ਦੁੜਾਕ ਆਗੇ ਤੇ ਪੁਰਾਣੇ ਸਮੇਂ ਦੇ ਵਿੱਚ ਵੱਡੇ ਪਰਿਵਾਰ ਖਤਮ ਹੋ ਗਏ ਖਤਮ ਕੀ ਹੋ ਗਏ ਬਲਦ ਭਜਾਣੋਂ ਹਟ ਕੇ ਵੱਡੇ ਬਲਦ ਸੀ ਉਹ ਵੇਖਣ ਵਾਲੇ ਨੌ ਨੌ ਕਿੱਲੇ ਦੀ ਬਾੜ 320 ਕਰਮਾ 340 ਸਖਾੜੇ ਦੇ ਸਮਰਾਟ ਸੀ ਜਿਹੜੇ ਬਲਦ ਪੁਰਾਣੇ ਛਪਾਰੀਏ ਤੋਂ ਲੈ ਕੇ ਬੂਲੇ ਉਰੀਏ ਤੋਂ ਲੈ ਕੇ ਖਰਾਬੇ ਤੋਂ ਲੈ ਕੇ ਪੈਣੀ ਬੜੇ ਗਲਤੋਂ ਤੋਂ ਤੋਂ ਲੈ ਕੇ ਜਸਰ ਸਰਪੰਚ ਤੇ ਢੰਡਾਰੀ ਵਾਲਿਆਂ ਤੋਂ ਲੈ ਕੇ ਸਿਰੇ ਦੇ ਬਲਦ ਸੀ ਬਹੁਤ ਤਕੜੇ ਬਲਦ ਇਉਂ ਦੁਆਬੇ ਤੋਂ ਆਉਂਦੇ ਦੇ ਬਲਦ ਆ ਕੇ ਦੂਰੀ ਪਹਾੜ ਭੱਜਣ ਵਾਲੇ ਬਹੁਤ ਬਹੁਤ ਤਿਆਰ ਦਵਾਵੀਆਂ ਦੇ ਬਲਦ ਹੁੰਦੇ ਤੇ ਇਧਰ ਮਾਲਵੇ ਚੋਂ ਭਜਾਉਣ ਆਉਂਦੇ ਭੋਰਾ ਜਮਾ ਹੀ ਪਿੱਠ ਤੇ ਜਾਣਾ ਅਹ ਜੇ ਮੀ ਪੈਂਦੇ ਚ 11-12 ਵਜੇ ਦੇ ਨੂੰ ਜਾ ਵਰਦੇ ਇੱਕ ਚੋਥੇ ਖਾੜੇ ਚ ਫਿਰ ਐ ਜੱਟ ਬੈਠੇ ਹੁੰਦੇ ਹੈ ਬਈ ਕਿਵੇਂ ਆ ਫਿਰ ਗੱਲ ਅੱਜ ਕਿਵੇਂ ਬੜਉ ਕਣੀ ਕਾਮਣੀ ਚ ਬਲਦਾਂ ਨੂੰ ਸਾਂਭਿਆ ਜਾਂਦਾ ਬਲਦ ਵਧੀਆ ਉਹਨਾਂ ਤੇ ਝੁੱਲ ਦਿੱਤੇ ਜਾਂਦੇ ਕੰਬਲ ਪੁੱਤਾਂ ਸਾਂਭ ਕੇ ਗੱਲਿਆਂ ਦੇ ਵਿੱਚ ਕੜਛੀਆਂ ਪਾ ਪਾ ਕੇ ਬਦਾਮ ਰੋਗ ਨੇ ਜਿਹਨੂੰ ਇੱਕ ਚਮਚਾ ਜਵਾਕ ਮੂੰਹ ਚ ਨਾ ਪਾਉਂਦੇ ਬਲਦ ਨੂੰ ਦਿੰਦੇ ਹੱਥ ਨਾਲ ਲੱਗਦਾ ਬਲਦ ਤਿਆਰੀ ਕੀਤੀ ਜਾਂਦੀ ਸਰੀਰ ਖੋਲ ਦਿੰਦੇ ਉਹਦਾ ਹੁਣ ਤਾਂ ਜਿਵੇਂ ਪਲੇਅਰ ਟੀਕਿਆਂ ਤੇ ਲੱਗੇ ਇਸ ਤਰ੍ਹਾਂ ਬਲਦ ਪੰਜਾਬ 'ਚ ਟੀਕਿਆਂ ਹੁਣ ਤਾਂ ਭਜਾਉਣਾ ਹੀ ਬੰਦ ਕਰਤੇ ਪਤਾ ਲੱਗਦਾ ਜਦ ਬਲਦ ਲੈ ਕੇ ਆਉਂਦੇ ਫੜੇ ਹੁੰਦੇ ਦੋਨਾਂ ਪਾਸਿਓਂ ਜੱਟ ਦਾ ਮਾਣ ਨਾ ਲਿਆ ਜਾਂਦਾ ਜਦ ਸਟਾਰਟਿੰਗ ਲਾਈਨ ਤੇ ਉਹ ਲੈ ਕੇ ਜਾਂਦਾ ਉਹੀ ਮੁੱਲ ਹੁੰਦਾ। ਤਖੋ ਟਖ ਭਰੇ ਹੋਏ ਖਾੜੇ ਸਿਰੇ ਦੇ ਚਾਬਕ ਜਿਹੜੇ ਲਲਕਰੇ ਮਾਰਦੇ ਬਹੁਤ ਦੇਖ ਜਾਂਦਾ ਚਾਬਕ। ਗੁਜਰਾਲੀਏ ਛੋਟੇ ਤੋਂ ਤਲਮੰਡੀ ਵਾਲੇ ਚਾਬਕ ਤੋਂ ਬੂਲੇਪੁਰੀਏ ਤੋਂ ਤੋਂ ਵੱਡੇ ਪੱਟੇ ਜਿਹੜੇ ਦੜਾਕ ਦੇ ਹੁੰਦੇ ਉਤੋਂ ਚਰਤੇ ਲੋ। ਵਲਦ ਦਰਤੇ ਜਦੋਂ ਉਹ ਅੰਦਰ ਜਾ ਕੇ ਬੋਲ ਦਿੰਦਾ ਬਹੁਤ ਖੜੇ ਹੋ ਜਾਂਦੇ ਬਸ ਉਹਨਾਂ ਨੂੰ ਜੋੜਨ ਤੱਕ ਉਹਦੇ ਜਿਹੜੇ ਅਛਣੇ ਮਾਲਕ ਦੇ ਹੱਥ ਹੁੰਦੇ ਫਿਰ ਆ ਕੇ ਉਹੀ ਵਲਦ ਨੂੰ ਫੜਨਾ ਚੜਾਉਣਾ ਘਰੇ ਲਿਜਾਣਾ ਸਾਂਭਣਾ ਦੂਜੇ ਦਿਨ ਫੇਰ ਉਹਨੂੰ ਖੇਲ ਤੇ ਲੈ ਕੇ ਆਉਣਾ ਪਰ ਜਦ ਤੱਕ ਸਟਾਰਟਿੰਗ ਲਾਈਨ ਤੇ ਲੈ ਕੇ ਨਾ ਜਾਣਾ ਉਹ ਉਹਦਾ ਮੁੱਲ ਨਾ ਹੋਣਾ ਜਿਵੇਂ ਲਾਮਾ ਤੋਂ ਪਹਿਲਾ ਪਹਿਲਾ ਘਰ ਵਾਲੇ ਬੰਦੇ ਦਾ ਮਰਦ ਦਾ ਮੁੱਲ ਆ ਵੀ ਪਾਲਾ ਆ ਵੀ ਪਾਲਾ ਫਿਰਦਾ ਇੱਕੋ ਜਿਹਾ ਬਾਈਸੇ ਕੰਮ ਹੋਣਾ ਅਛਨੇ ਪਛਨੇ ਕਰਲਾ ਜਿਹੜੇ ਕਰਨਲ ਜਿਹੜੀਆਂ ਸਾਲੀਆਂ ਨੂੰ ਚਿੱਗ ਤਾਂ ਕਰਦਾ ਹੈ ਤੇ ਇਹ ਆ ਫਜੀਤਲਵੰਡੀ ਉਹਦਾ ਸੀ ਪੰਡਿਕ ਖੋੜ ਦਾ ਬੰਦਾ ਸੀ ਸਿਰੇ ਲਾਜੰਦ ਤੇ ਦਿਨਾਂ ਦੇ ਵਿੱਚ ਆ ਮਹੀਨੇ ਦੇ ਵਿੱਚ ਬਲਦਾਂ ਸਾਮ ਲੈਣੇ ਘੱਟੋ ਘੱਟ 70 80 ਬਲਦਾਂ ਦੀਆਂ ਜੋੜੀਆਂ ਹੋਣੀਆਂ ਦੇਰ ਤੋਂ ਬਲਤੇ 10000 ਬੰਦਾ ਕੋਈ ਕਣ ਕਵੇ ਕਿਤੇ ਬੱਟ ਤੇ ਬੈਠਾ ਕੋਈ ਕਿਤੇ ਬੈਠਾ ਕੋਈ ਮੋਟਰ ਤੇ ਬੈਠਾ ਕੋਈ ਮੋਬਲ ਔਇਲ ਦਾ ਜਿਹੜਾ ਲੀਟਰ ਵੱਢਿਆ ਉਹਦੇ ਚ ਪਾਣੀ ਚੱਕੀ ਫਿਰਦਾ ਕੋਈ ਖਾਲੀ ਬੋਤਲਾਂ ਦੇ ਵਿੱਚ ਬੂਟੀਆਂ ਵਾਲਾ ਜਿਹੜਾ ਕੱਢਿਆ ਹੋਇਆ ਬੇਬੇ ਦਾ ਝੋਲਾ ਉਹ ਨਵੇਂ ਮੁੰਡੇ ਦੇ ਕਿਸੇ ਦੇ ਮੋਢੇ ਪਾਇਓ ਚ ਚਾਹ ਵਾਲੀਆਂ ਬੋਤਲਾਂ ਜਿਹੜੀਆਂ ਵੱਲ ਨੂੰ ਦੇਣੀ ਇੰਨਾ ਕੌਣ ਸਾਹਬ ਨੂੰ ਜਿਨ੍ਹਾਂ ਨੇ ਨੇੜਿਓਂ ਵੇਖੇ ਸਾਹਵੇਂ ਇੰਨਾ ਨਹੀਂ ਧੀ ਪੁੱਤ ਦਾ ਨਹੀਂ ਉਨੀ ਸੰਭਾਲ ਜਿੰਨੀ ਬਲਦੀ ਸੰਭਾਲ ਕਰਦੇ ਪਰ ਨਾਲ ਜੁੜਿਆ ਸੀ ਖੇਤੀ ਨਾਲ ਜੁੜਿਆ ਸੀ ਉਹੀ ਹਲ ਬੋਂਦੇ ਬਲਦ ਰਥਾਂ ਤੇ ਉਹਨਾਂ ਤੇ ਪੁਰਾਣਾ ਸਮੇਂ ਰਥਾਂ ਤੇ ਜਾਦ ਜੰਨਾ ਜਾਂਦੀਆਂ ਰਥਾਂ ਤੇ ਬਲਦਾਂ ਨੂੰ ਪਕੜੇ ਰੋੜ ਜਾਂਦੇ ਹੋਵੇ ਜ਼ਮੀਨ ਹੁੰਦੀ ਤੇ ਰਥ ਭਾਰੀ ਹੁੰਦੇ ਉਹਦੇ ਵਿੱਚ ਬੇਬਿਆਂ ਪ੍ਰਾਣੀਆਂ ਸੱਗੀ ਫੁੱਲ ਘੜੀ ਚੂੜੀਆਂ ਪਾ ਕੇ ਫਿਰ ਫਲਕਾਰੀਆਂ ਲੈ ਕੇ ਬਹਿਂਦੀਆਂ ਤੇ ਨਾਲ ਘੋੜੀ ਤੇ ਸਰਦਾਰ ਚੜਿਆ ਹੁੰਦਾ ਜਿਹੜਾ ਵਿਆਹ ਤੇ ਦੇ ਵਿੱਚੋਂ ਦੇ ਵਿੱਚੋਂ ਹੀ ਫਿਰ ਗਾਹਾਂ ਜਿਹੜੇ ਰਥ ਭੱਜਣੇ ਪਏ ਰਥਾਂ ਦੇ ਹਿੱਸੇ ਵਾਲੀਆਂ ਠੋਕਰਾਂ ਉਹ ਤੋਂ ਬਾਅਦ ਸੜ ਠੋਕਰਾਂ ਠੋਕਰਾਂ ਤੋਂ ਬਾਅਦ ਫਿਰ ਟੈਰਾਂ ਵਾਲੀਆਂ ਬੜਾ ਬਹੁਤ ਕੁਝ ਵੇਖਿਆ 25 25 ਦਿਨ 30 30 ਦਿਨ ਬਾਹਰਲੀਆ ਮੰਡੀਆਂ ਤੋਂ ਲੋਕ ਬਲਦ ਲੈਣ ਜਾਂਦੇ ਜ਼ਿਮੀਂਦਾਰ ਇਕੱਠੇ ਕਹਿੰਦੇ ਡੱਬਾ ਚੜਨਾ ਡਾਕ ਡਾਕ ਕਹਿੰਦੇ ਐਸ ਗੜ ਮੰਡੀ ਡਾਕ ਚੜਨੀ ਆ ਹਸਾਰ ਹੰਸਾਰ ਹੀ ਕਹਿੰਦੇ ਹੋ। ਢੀਲ ਲੋਆਣਾ ਨਗੌਰ ਕਰੋთა ਉਥੋਂ ਬਰਦ ਲੈ ਕੇ ਆਉਂਦੇ। ਨਾਲ ਘੋੜੀਆਂ ਚੜਦੀਆਂ ਨਾਲ ਗਾਂਹਾਰੀ ਵੱਢਣੀ ਹਾੜੀ ਵੱਟਣ ਦਾ ਸਮਾਨ ਲੈ ਆਉਂਦੇ ਨਾਲ। ਕਈ ਵਾਰ ਬਾਂਗਰੋਂ ਆ ਵੀ ਚੜਾ ਲੈਂਦੇ ਨਾਲ। ਤੂੰ ਵੀ ਚੱਲ ਨਾਲ ਹੀ ਉੱਥੇ ਰੋਟੀਆਂ ਲਾ ਲਈ ਚਾਰ ਉੱਥੇ ਬੈਠੀਆਂ ਤੂੰ ਵੀ ਵਿੱਚੇ ਬਹਿ ਜੀ। ਘੁੰਗਰੂ ਕਈ ਵਾਰ ਘਰਿਆਂ ਤੇ ਛਣਕਾ ਦਿੰਦੇ। ਆਜੋ ਦਿਨ ਉਹ ਵਕਤ ਜਿਹੜਾ 22 ਸਾਲ ਪਹਿਲਾਂ ਵੇਖਿਆ ਉਹ ਖਾੜੇ ਨੂੰ ਯਾਦ ਆ ਗਿਆ ਗੀਤ ਤੇ ਫੇਰ ਤੋੜਦਾ ਮੇਰਾ ਪਿੰਡ ਮੇਰੇ ਖੇਤ ਨੂੰ ਬਰਦਾਸ਼ਤ ਦੀ ਗੱਲ ਕੀਤੀ ਹੈ ਕੋਈ ਗੱਲਬਾਤ ਕਰਨੀ ਚਾਹੁੰਦਾ ਹਰਦੀਪ ਸਿੰਘ ਲਾਈਨ ਨੰਬਰ 3 ਹਲੋ ਹਾਂਜੀ ਭਾਈ ਜੀ ਜਿਲ੍ਹ ਸਾਹਿਬ ਗੱਲ ਇਹ ਆ ਵੀ ਗੱਲ ਤਾਂ ਤੁਸੀਂ ਕੀਤੀ ਬਹੁਤ ਵਧੀਆ ਪਰ ਇਸ ਨੇ ਨਾ ਯਾਦਾਂ ਨੇ ਕੋਈ ਇਹਦੇ ਚ ਅਟਕਸਣੀ ਨਹੀਂ ਹੈਗੀ ਪਰ ਗੱਲ ਇਸ ਚੀਜ਼ ਦੀ ਆ ਵੀ ਜਿਵੇਂ ਕਹਿੰਦੇ ਨਾ ਵੀ ਉਹ ਮੌਜਾਂ ਭੁੱਲਣੀਆਂ ਜਿਹੜੀਆਂ ਨਹੀਂ ਜਿਹੜੀਆਂ ਬਾਪੂ ਦੇ ਸਿਰ ਤੇ ਕਰੀਆਂ ਉਸ ਟਾਈਮ ਤੇ ਬਾਪੂ ਜਿਹੜਾ ਹੁੰਦਾ ਸੀ ਨਾ ਬਾਪੂ ਆਪਣਾ ਬਾਪੂ ਤੇ ਬਾਪੂ ਹੀ ਆ ਮੇਰੇ ਕੋਈ ਡਾਊਟ ਪਰ ਇੱਕ ਸਰਕਾਰ ਵੀ ਬਾਪੂ ਹੁੰਦੀ ਆ ਮੈਂ ਕਿਸੇ ਕੋਈ ਸਰਕਾਰ ਦੇ ਖਿਲਾਫ ਜਾਂ ਪੰਜਾਬ ਸਰਕਾਰ ਦੇ ਜਾਂ ਕਿਸੇ ਦੇ ਕਿਸੇ ਪਾਰਟੀ ਦੇ ਕੋਈ ਉਹ ਨਹੀਂ ਮੇਰਾ ਮਕਸਦ ਹੈਗਾ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਆਲ ਓਵਰ ਇੰਡੀਆ ਦੀ ਤੇ ਉਸ ਟਾਈਮ ਦੇ ਉੱਤੇ ਜਦੋਂ ਇਹ ਬਲਦਾਂ ਦੇ ਸ਼ੌਕ ਹੈ ਤਾਂ ਚਲੋ ਸਦੀਆਂ ਪੁਰਾਣੇ ਆ ਪਰ ਜਦੋਂ ਆਪਾਂ ਬਹੁਤਾ ਦਾ ਰੂਪ ਧਾਰਿਆ ਸਰਕਾਰੀ ਦਖਲਅੰਦਾਜ਼ੀ ਹੋਈ ਪੁਲਿਸ ਨੇ ਪ੍ਰੋਟੈਕਸ਼ਨਾਂ ਦਿੱਤੀ ਇਹ ਅੰਗਰੇਜ਼ ਰਾਜ ਤੋਂ ਆ ਅੰਗਰੇਜ਼ ਦੇ ਰਾਜ ਦੇ ਵਿੱਚ ਬਲਦ ਦੀ ਕੀ ਕੀਮਤ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਜਦੋਂ ਕਿਸੇ ਜ਼ਿੰਮੇਦਾਰ ਦੇ ਕੋਲੋਂ ਕੋਈ ਤਕਾਵੀ ਉਦੋਂ ਜਿਹੜਾ ਕਰਜ਼ਾ ਆਪਾਂ ਕਰਾਪ ਲਉਣ ਤੇ ਉਹਦੀ ਗਿੱਲ ਸਾਹਿਬ ਉਹ ਕਹਿੰਦੇ ਹੁੰਦੇ ਦੇ ਤੇ কুরਕੀ ਉਹਦੀ ਮੱਝ ਜਾਂ ਗਾਂ কুরਖ ਕਰ ਦਿੰਦੇ ਸੀ ਉਹਦਾ ਢੱਗਾ ਜਾਂ ਝੋਟਾ ਸੰਢਾ ਜਿਹਨੂੰ ਸਾਡੇ ਬੰਨੇ ਕਹਿੰਦੇ ਆ ਉਹ কুরਖ ਨਹੀਂ ਸੀ ਕਰਦੇ ਤੇ ਕਿਸੇ ਨੇ ਕਿਹਾ ਵੀ ਮੱਝ ਮਤਲਬ ਤੁਸੀਂ কুরਖ ਕਰਤੀ ਆ ਤੇ ਇਹ ਕਿਉਂ ਨਹੀਂ ਕੀਤੇ ਉਹ ਕਹਿੰਦਾ ਜੇ ਮੱਝ ਕੁਰਕ ਕਰ ਤੇ ਦੁੱਧ ਪਾਈਆ ਮੁੱਲ ਲਾ ਲੂਗਾ ਤੇ ਤੇ ਹੋਰ ਮੱਝਾਂ ਖਰੀਦ ਲਊਗਾ ਤੇ ਜੇ ਅਸਾਂ ਖੇਤੀ ਇਹਦਾ ਕੁਰਕ ਕਰਕੇ ਨਲਾਮ ਕਰ ਦਿੱਤਾ ਛੋਟਾ ਜਿਹਾ ਢੱਗਾ ਤੇ ਇਹ ਵਾਈ ਕਰਦਣਾ ਕਰੂਗਾ ਇਹ ਮੰਗਤਾ ਬਣ ਜਾਊਗਾ ਵੇਖੋ ਮੱਝ ਨੂੰ ਢੱਗਿਆਂ ਨੂੰ ਬਲਦਾਂ ਨੂੰ ਪਾਲਣ ਵਾਲਿਆਂ ਦੀ ਇੰਨੀ ਫਿਕਰ ਸੀ ਉਸ ਗੈਰ ਸਰਕਾਰ ਨੂੰ ਤੇ ਅੱਜ ਦੀ ਡੇਟ ਤੇ ਗਿਲਸਾਹਬ ਦਿਲ ਬਲਦ ਤੇ ਨੇ ਕੀ ਆ ਕੇ ਮਰ ਗਿਆ ਕੇ ਮਰ ਗਿਆ ਕੋਈ ਖੰਭੇ ਨਾਲ ਲਟਕੇ ਮਰ ਗਿਆ ਅੱਜ ਕੱਲ ਦੇ ਆਪ ਹੀ ਨਹੀਂ ਸਾਹਮਣੇ ਜਾਂਦੇ ਸੋ ਬਾਪੂ ਮਾਰਾ ਹੋਵੇ ਤੇ ਇਹ ਮੌਜਾਂ ਵੀ ਨਹੀਂ ਹੁੰਦੀਆਂ ਮੌਜਾਂ ਬਾਪੂ ਦੇ ਸਿਰ ਤੇ ਹੁੰਦੀਆਂ ਮੈਂ ਤਾਂ ਬਸ ਇੰਨਾ ਹੀ ਕਹਿ ਸਕਦਾ ਧੰਨਵਾਦ ਤੁਹਾਡਾ ਧੰਨਵਾਦ ਬਾਈ ਜੀ ਇਹ ਬਹੁਤ ਅਵੱਲਾ ਸ਼ੌਕ ਹੈ ਇਹ ਜੇਤੇ ਬਹੁਤ ਫੋਨ ਆ ਗਏ ਦੇ ਕੱਖ ਨਹੀਂ ਸੀ ਟੂਰਨਾਮੈਂਟ ਹੁੰਦੇ ਹਰ ਪਿੰਡ 'ਚ ਬਲਦ ਭਜਦੇ ਮਾਲਵੇ 'ਚ ਬਹੁਤ ਤੇ ਦੁਆਬੇ 'ਚ ਬਹੁਤ ਜਗਤਪੁਰੀਆਂ ਦੇ ਬਲਦ ਬਹੁਤ ਮਸ਼ਹੂਰ ਹੁੰਦੇ ਦੂਰੀ ਭਾਜ ਭਜਦੇ ਤੇ ਪਹਿਲਾਂ ਹਲਟ ਵੀ ਭਜਦੇ ਜਿਹੜੇ ਦੁਆਬੇ ਦੇ ਵਿੱਚ ਰਹਿ ਗਏ ਤੇ ਮਾਲਵੇ ਦੇ ਵਿੱਚੋਂ ਹਲੋਪ ਹੋ ਗਏ ਖੂ ਖਤਮ ਹੋ ਗਏ ਪਰ ਬਹੁਤ ਵੱਡਾ ਇਹ ਸ਼ੌਕ ਹੈ ਤੇ ਬਹੁਤ ਵਨਸਿਨ ਮਿਲੀਅਨ ਵਾਲੀ ਗੱਲ ਹੈ ਜਿਵੇਂ ਆ ਜਿਹੜੀ ਉਹ ਮਸਾ ਹੀ ਇੱਕ ਨੂੰ ਨਿਕਲ ਨਹੀਂ ਆ ਈਉਂ ਹੀ ਬਲਦਾਂ ਦੀਆਂ ਲਿਉਂਦਿਆਂ ਦੀਆਂ ਨਿਕਲ ਜਾਂਦੀਆਂ ਤੋਂ ਹਸਾਰ ਤੋਂ ਕਰੋਟੇ ਤੇ ਪਰ ਮੀਟਾ ਸਿਟੀ ਤੋਂ ਬਲਦ ਨਾ ਨਿਕਲਣੇ ਹਰੇਕ ਵਾਰ ਬਾਂਗਰੂਆਂ ਨੇ ਜਾਣਾ ਪੰਜ ਪੰਜ 10 10 ਲੈਉਣੇ ਦਸਾਂ ਚ ਕੋਈ ਨਿਕਲ ਨਾ ਖੁਰ ਦੇਖੇ ਨੱਕ ਦੇਖੇ ਦੀ ਦੇਖ ਰਲ ਬਹੁਤ ਕੁਛ ਨੂੰ ਵੇਖ ਕੇ ਲਿਉਣਾ ਪਰ ਉਹਨਾ ਆ ਭੱਜਣਾ ਫਿਰ ਕੁਝ ਜਿਹੜੇ ਅਮੀਰ ਪਰਿਵਾਰ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਸ਼ਹਿਰਾਂ ਚ ਆ ਗਈਆਂ ਚੌਧਰੀ ਖੰਨੇ ਵਰਗੇ ਤੜਾਰੀ ਵਾਲੇ ਵਰਗੇ ਤੇ ਚਰਨ ਗਿੱਲ ਵਰਗੇ ਜਸਟਰ ਸਰਪੰਚ ਵਰਗੇ ਜਿਹੜੇ ਅਮੀਰ ਜੱਟ ਸੀ ਉਹ ਫਿਰ ਬਲਦ ਖਰੀਦਣ ਲੱਗ ਗਏ ਇਜਾਦ 90 ਮਿਆਂ ਦੇ ਵਿੱਚ ਗੱਲ 99 90 ਦੇ ਵਿੱਚ ਗੱਲ ਹੋਈ ਲੱਖ ਰੁਪਈਆ 70 80 ਹਜ਼ਾਰ ਰੁਪਈਏ ਦੇ ਬਲਦ ਵਿਕਣ ਲੱਗੇ ਤਾਂ ਹਾਹਾਕਾਰ ਮੱਚ ਗਈ ਪੰਜਾਬ ਚੋ 70 80 ਹਜ਼ਾਰ ਰੁਪਈਆ ਖਰਚਤਾ ਉਹ ਇੰਨੇ ਪੈਸੇ ਮੁਰਕੇ ਬਲਦ 10 10 ਲੱਖ ਦੇ ਚੌਧਰੀ ਨੇ ਖਰੀਦ ਕੇ ਕੀਲੇ ਬੰਨ ਲਏ ਕਿਉਂ ਹੀ ਖਿਡਾਰੀ ਵਾਲਿਆਂ ਦੇ ਪਰਿਵਾਰ ਨੇ ਲਤੋਂ ਵਾਲੇ ਦੇ ਗੈਰੀ ਗਰੇਵਾਲ ਉਹਨਾਂ ਦੇ ਬਹੁਤ ਜਿਹੜੇ ਨੇ ਭੱਜਦੇ ਨਾ ਕੋਈ ਮਾਣ ਹੀ ਨਾ ਹੁੰਦਾ ਜਦ ਲੋਕ ਮਿੱਟੀ ਪੱਟੀ ਹੋਈ ਜਿਹੜੀ ਬਹੁਤ ਕਿਤੇ ਹੁੰਦੇ ਤੇ ਡਿਗਦੀ ਕਿਤੇ ਪਤਾ ਲੱਗ ਜਾਂਦਾ ਤੁਰੇ ਜਾਂਦੇ ਪਿੱਛੇ ਕਿਤੇ ਪਤਾ ਲੱਗ ਜਾਂਦਾ ਤੁਰੇ ਜਾਂਦੇ ਪਿੱਛੇ ਜਾਂਦੇ ਗੱਲੇ ਮਖਣੀਆਂ ਦੇ ਤੇ ਬਦਾਮ ਰੋਗੰਦੇ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਬਹੁਤਾਂ ਨੂੰ ਮਾਲ ਪੰਜ ਸੱਤ ਪਿੰਡ ਦੇ ਜਿਹੜਾ ਠੇਗੜੂ ਲਾਣਾ ਹੁੰਦਾ ਛੜੇ ਹੁੰਦੇ ਅਮਲੀ ਹੁੰਦੇ ਉਹ ਬਲਦਾਂ ਵਾਲਿਆਂ ਦੇ ਘਰੇ ਹੀ ਰਹਿੰਦੇ ਉੱਥੇ ਇੱਕ ਬੰਨੇ ਕੁੱਟ ਗੁੱਠੇ ਜੇ ਲਾ ਕੇ ਸੌ ਜਾਂਦੇ ਮਾਰਦੇ ਨਾਲ ਸੁੱਕ ਬਿਚਾ ਕੇ ਬੰਨੇ ਬਲਦ ਨੇ ਰਾਤ ਨੂੰ ਜਦ ਪਿਸ਼ਾਬ ਕਰਨਾ ਤਾਂ ਪੁੰਜੇ ਨਾ ਗਰਦੰਦੇ ਲੀਟਰ ਲੈ ਕੇ ਪਿੱਛੇ ਨੂੰ ਪਾਜਦੇ ਬਲਦ ਗਿੱਲੇ ਚ ਨਾ ਬਹਿ ਜਾਏ ਇਨਸਟਰਕਸ਼ਨਾਂ ਹੁੰਦੀਆਂ ਇਹ ਬਹੁਤ ਔਖਾ ਸ਼ੌਕ ਹੈ ਇਹਦੀਆਂ ਗੱਲਾਂ ਕਰਨੀਆਂ ਜਿੰਨੀਆਂ ਸੌਖੀਆਂ ਲੱਗਦੀਆਂ ਬਹੁਤ ਜ਼ਿਆਦਾ ਔਖਾ ਸ਼ੌਕਰ ਜੱਟ ਕੰਗਾਲ ਕਰਤੇ ਇਸ ਸ਼ੌਕ ਨੇ ਲੱਖੋਂ ਕੱਖ ਦੇ ਹੋ ਕੇ ਜਿਹੜਾ ਸਿਆਣਾ ਟੱਬਰ ਸੀ ਜਿਹਦੇ ਟੱਬਰ ਦਾ ਕੋਈ ਜੀ ਬਾਹਰ ਆ ਗਿਆ ਸੀ ਕੋਲ 4 ਪੈਸੇ ਸੀ ਉਹਨਾਂ ਨੇ ਬੋਲਦ ਪੁਝਾਇਆ ਕਿਉਂਕਿ ਬੰਦੇ ਨਾਲ ਨੇ ਟਰੱਕ ਨਾਲ ਆਏ 5 ਲੱਖ ਦਾ ਬੋਲਦ ਚਾੜਿਆ ਆਥਣ ਦਾ 10000 5000 8000 ਦਾ ਖਰਚਾ ਹੈ ਨਾਮ ਪੁੱਛਦੇ ਸੀ ਸ਼ੌਕ ਦਾ ਮੁੱਲੇ ਕੋਈ ਨਹੀਂ। ਸ਼ਨੀ ਉਹਦੇ ਚੁੱਲ੍ਹ ਪਤਲਾ ਥੱਲੇ ਉੱਪਰ ਵੀ ਸਰੇ ਦਾ ਕੰਬੜਾ ਮੋਟਾ ਜਿਹੜਾ ਉੱਪਰ ਦੀ ਬਲ ਨੂੰ ਦਿੱਤਾ ਦਮਾਲੇ ਬਲਨਾਂ ਦੇ ਬੰਨੇ ਨੇ ਟੋਪੀਆਂ ਚਾੜੀਆਂ ਨੇ ਰਸੇ ਘਰ ਵਾਲੇ ਹੋਰ ਨੇ ਨੇ ਚਾਬਕ ਨੂੰ ਕਹਿਣਾ ਮਾਰਦੀ ਘੂਰੀ ਨਾ ਕਈ ਐਨੇ ਅੜਵਾੜੇ ਬਲਦ ਹੁੰਦੇ ਸਾਰੇ ਟੱਬਰਾਂ ਦੇ ਉਹਨਾਂ ਨੇ ਗੁੱਟ ਪੰਨੇ ਹੁੰਦੇ ਪੈਣੀ ਬੜੰਗ ਆ ਗਏ ਸਾਰੇ ਬਲਦ ਐਡੇ ਬੈਲੀ ਬਲਦ ਹੁੰਦੇ ਸਰਾਬੇ ਅਰਗਾ ਬਲਦ ਜਿਹੜਾ ਤਵਾ ਤਵਾ ਤਵਾ ਦੋਡਿਆਂ ਦਾ ਪੀ ਜਾਂਦਾ ਲੀਚੀ ਮਾਰ ਕੇ ਹੋ ਉੱਥੇ ਜਾ ਕੇ ਜਦ ਦਾ ਪਤਾ ਹੀ ਨਹੀਂ ਲੱਗਦਾ ਦੇ ਤੇ ਬੁੱਲ ਸੱਨ ਦੇ ਵਿੱਚ ਨੂੰ ਪੈਂਦੇ ਬੁੱਲ ਇੰਨੇ ਕਿਹੜੇ ਹੁੰਦੇ ਮਲ ਉਸ ਖੇਡਾਂ ਦੇ ਸੀ ਜਿਉਂ ਨਵੀਂ ਜਵਾਨੀ ਉੱਥੇ ਆ ਗਈ ਪੂਰ 5 ਫੁੱਟ 6 ਇੰਚ ਰਹਿ ਗਏ ਉਹਨੇ ਇੱਕ ਬੱਚੇ ਰਹਿ ਗਏ ਉੱਥੇ ਪੀਕਿਆਂ ਤੇ ਲਾਲੇ ਪਤਾ ਹੀ ਨਹੀਂ ਕੀ ਕੁਛ ਦੇਣ ਲੱਗੇ ਚਾਹ ਸੁੱਕੀ ਬਲਦ ਨੂੰ ਤੇ ਬਲਦ ਭੱਜਦੇ ਇੰਨੀ ਗਿਆਨ ਨਹੀਂ ਤੇ ਪਿੰਡਾਂ 'ਚ ਗੱਲਾਂ ਹੁੰਦੀਆਂ दारू ਦਿੰਦੇ दारू ਨਾਲ ਬਲਦ ਨਹੀਂ ਕਦੇ ਵੀ ਭੱਜ ਸਕਦਾ ਹਾਂ ਕਈਆਂ ਨੇ ਲਾਏ ਹੁੰਦੇ ਗੋਲੇ ਅਰਗੇ ਜਿਹੜੇ ਨੇ ਉਹ ਨਮੀ ਸਲਾਮ ਸਿੰਘ ਹੋਣੀ ਜਰਗਾ ਵਾਲੇ ਤੇ ਗੋਲੇ ਹੋਣੀ ਉਹਨਾਂ ਦਾ ਬੇਟਾ ਵੀ ਹੋਣੀ ਇੱਥੇ ਵੱਸਦੇ ਆ ਉਹ ਅਲੱਗ ਕਿਸਮ ਦੀ ਟ੍ਰੇਨਿੰਗ ਕਰਦੇ ਬਲਦਾਂ ਇਹਨੇ ਸੋਨੇ ਬੋਲਦ ਲਿਆ ਲਿਆ ਕਿ ਇਹ ਸਾਰੇ ਵੱਡੇ ਨਾਂਣਿਆਂ ਦੀ ਖੇਤੀ ਚੋਂ ਹੀ ਇਹ ਗਾਹਾਂ ਬੋਲਦ ਭਜਾਉਣ ਦੀ ਰੀਤ ਚੱਲੀ। ਕਈ ਵਪਾਰੀ ਬਹੁਤ ਵਧੀਆ ਹੁੰਦੇ ਵੱਧ ਪੈਸੇ ਵਟ ਲੈਣ। ਚੌਧਰੀ ਨੂੰ ਥਾਪੀ ਦੇ ਨੂੰ ਥਾਪੀ ਦੇ ਦਿੰਦੇ ਉੱਲ ਜਾ ਕੇ ਕਿੱਲੇ ਬੰਦ ਹੁੰਦਾ। ਉੱਥੇ ਲੋਕਾਂ ਚ ਖੜ ਕੇ ਗੱਲ ਖੇਲਤੇ ਹੁੰਦੀ ਜਾਂ ਟਰੱਕ ਚੜਾ ਦੇ, ਜਾਂ ਟਰੱਕੋਂ ਲਾ ਲਾ, ਐਉਂ ਗੱਲਾਂ ਚੱਲਦੀ। ਚੌਧਰੀ ਦੀ ਪੀਲੀ ਫੀਅਟ ਅੱਜ ਤੋਂ 35 ਸਾਲ ਪਹਿਲਾਂ ਕੱਚੀਆਂ ਰਾਹਾਂ ਤੇ ਜਾਂਦੀ। ਖਸ਼ਾਲਪੁਰ ਦਾ ਸੀ ਉਹ ਬੰਦਾ ਖੰਨੇ ਰਹਿੰਦਾ ਸੀ ਚੌਧਰੀ ਜਨਕਰਾਜ ਉਹਦਾ ਨਾਮ ਸੀ ਨਾ ਉਹਨਾਂ ਦੇ ਬੱਚੇ ਹੋਏ ਨੇ ਜਿਹੜੇ ਬੱਚਿਆਂ ਤੋਂ ਕੰਮ ਨਹੀਂ ਸਾਂਭੇਗਾ ਪਰ ਚੌਧਰੀ ਨੇ ਬਾਹਰ ਲੀ ਕਿਚੀ ਚ ਸਿਲਟ ਲਾਉਣੀ ਜਦ ਕੋਈ ਜ਼ਿੰਮੇਦਾਰ ਜੱਟ ਸਰਦਾਰ ਕੋਲੋਂ ਕਦੇ ਸਿਲਟ ਨਹੀਂ ਸੀ ਪੀਂਦਾ ਘੱਟੋ ਘੱਟ 8 ਕੀਲੇ ਉਹਨੇ ਪਹਿਲੇ ਤੋਂ ਹਟ ਕੇ ਬਹਿਣਾ ਜਿੱਥੋਂ ਬੁੱਲਦ ਭਜਨੇ ਰੋ ਭੱਜੇ ਬੁੱਲਦਾਂ ਤੇ ਦੇਸ਼ ਕੀ ਕਹਿਣਾ ਹੁਣ ਗੱਲ ਬਾਤ ਆਖਰੀ 2 ਕੀਲੇ ਜਿਹੜੇ ਬੁੱਲਦ ਭੱਜਦੇ ਉਹ ਜਿੱਤਦੇ ਪਹਿਲੇ 5-4 ਕੀਲੇ ਤਾਂ ਸਾਰੇ ਭੱਜਦੇ ਉਹ ਬਹੁਤ ਬਹਿਲ ਪਣਾ ਉਹਦੇ ਚ ਅਖੜ ਪਣਾ ਇਹ ਬਹੁਤ ਔਖਾ ਕੰਮ ਸੀ ਲੜਾਈਆਂ ਪ੍ਰਾਣੀਆਂ ਡਾਂਗਾ ਬਰਲੀਆਂ ਬਹੁਤ ਜੁੜਨ ਤੋਂ ਰੁਕ ਜਾਣੇ ਕਿਸੇ ਕਰਕੇ ਕਿਸ ਨਾਲ ਜੋੜ ਦੇਣਾ ਬਸ ਪੁੱਛਣਾ ਤੋਂ ਕੁਛ ਨਾ ਮਾ ਜਿਹੜਾ ਕੋਈ ਖਲਾਟੀਆਂ ਹੁੰਦਾ ਵੱਡੇ ਜਿਹੜੇ ਪੁਰਾਣੇ ਖਲਾਟੀਆਂ ਉਹਨੂੰ ਬਣ ਦਿੰਦੇ ਬਹੁਤ ਕੀਦੇ ਤੇ ਖੜਾ ਰਹਿ ਜਾਂਦਾ ਜੁੜਨ ਨਾ ਦਿੰਦੇ ਪਰ ਨੌ ਨੇ ਨੇ ਛਪੀਆਂ ਲੋਕ ਫੜੀ ਖੜੇ ਐ ਬਸ ਉਹੀ ਮੁੱਲ ਔਰ ਕਬੂਤਰ ਕਿਹੜਾ ਆਪਾਂ ਹਲਾ ਨੂ ਜੋੜਦੇ ਆ ਉਹਨਾਂ ਲਈ ਦਿਨ ਰਾਤ ਸੋਨੇ ਦੀਆਂ ਝਾਂਜਰਾ ਆ ਪਾਓ ਪਾ ਵਿੱਚ ਬੈਠੇ ਰਹਿੰਦੇ ਆ ਬੰਦੇ ਕਿਹੜਾ ਕਿਵੇਂ ਗੁਟਕਦਾ ਕਿਹਨੇ ਅੰਡੇ ਦਿੱਤੇ ਕਿਹਨੇ ਹੁੰਦਾ ਬਲਦਾਂ ਦਾ ਬਹੁਤ ਵੱਡਾ ਸ਼ੌਕ ਹੈ ਵੱਡੇ ਪਰਿਵਾਰ ਨੇ ਪਰ ਹੁਣੇ ਬੰਦ ਜਿਉ ਮੇਨਕਾ ਨੇ ਗੇਮ ਕਮਾਈ ਬਲਦਾਂ ਦਾ ਬਹੁਤ ਵੱਡਾ ਸ਼ੌਕ ਹੈ ਏ ਵੱਡੇ ਪਰਿਵਾਰ ਨੇ ਪਰ ਹੁਣੇ ਨੇ ਗੇਮ ਕਮਭਾਈ ਉਹ ਬੰਦ ਕਰ ਤੇ ਜੀ ਆਰਾਮ ਮਾਰਦਿਆ ਉਹ ਇਹ ਮਾਰਦਿਆ ਉਹ ਮਾਰਦਿਆ ਕਾਹ ਨੂੰ ਜਿਹੜੇ ਭੱਜਣ ਲੈ ਆਰਾ ਤਾਂ ਉਹਨਾਂ ਦੀ ਪਿੰਦੀ ਦਾ ਨਾ ਦੰਦੇ ਡਾ ਇਨੀ ਜਾਨ ਹੁੰਦੀ ਬੰਦਾਂ ਨੂੰ ਪਤਾ ਹੁੰਦਾ ਵੀ ਆਹ ਸਪੀਕਰ ਇਧਰੋਂ ਬੋਲਦਾ ਐਧਰੋਂ ਜਾਣਾ ਤੇ ਉਹਦੀ ਚਾਲ ਨਾ ਲਈ ਜਾਂਦੀ ਜਿਹੜੇ ਖੜਕ ਦੇ ਖੁਰੀਆਂ ਲਾਉਣ ਵਾਲੇ ਅੱਡ ਸਪੈਸ਼ਲ ਨੌ ਬਣਾਉਣ ਵਾਲੇ ਅੱਡ ਆਉਂਦੇ ਬਾਗਰੂ ਸਾਡੇ ਬਲਦ ਬਹੁਤ ਵਧੀਆ ਖੜੇ ਨੇ ਉਹੀ ਏਰੀਆ ਦੇ ਵਿੱਚ ਜਾ ਕੇ ਖਾਸ ਰਵੇ ਦੇ ਖਾਸ ਸਾਂ ਦੇ ਖਾਸ ਬੈੜੀਆਂ ਦੇ ਉਹ ਬੱਚੇ ਲੈ ਕੇ ਆਉਂਦੇ ਭੱਜਦੇ ਕਈ ਤਾਂ ਲੱਖਾਂ ਕਮਾ ਗਏ ਕਈ ਲੱਖਾਂ ਗਵਾ ਗਏ ਇੱਥੇ